ARP 1550 AM ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਜਿੱਲ 11:13 ਹੋਏ ਨੇ 2 ਫਰਵਰੀ ਦਾ ਦਿਨ ਹੈ ਬਰਾ 2017 ਦਾ ਵੀਰਵਾਰ ਆ ਬੀ ਮਾਗ ਨਾਨਕ ਸ਼ਹੀਦ ਸੰਬਤ 548 ਨਿੱਗਾ ਹਾਰਦਿਕ ਸਵਾਗਤ ਹੈ ਇੱਕ ਲੱਤ ਤੇ ਪੰਗੜਾ ਪੈਂਦਾ ਸਬ ਡਿਵੀਜ਼ਨਾਂ ਚ ਹੋਣਾ ਅੱਜ ਵੀ ਲੋਕ ਸਭ ਦੇ ਵਿੱਚ ਐਸੋ ਘਟਨਾਵਾਂ ਗੱਲਾਂ ਬਾਤਾਂ ਕੀ ਸੰਗੀਤ ਸੁਰਖ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਖਬਰਾਂ ਸੁਣਾਉਣਾ ਖਬਰਾਂ ਤੋਂ ਬਾਅਦ ਦੂਸਰੇ ਹਿੱਸੇ ਵਿੱਚ ਤੁਹਾਡੀ ਸਿਹਤ ਦੇ ਬਾਰੇ ਇੱਕ ਬਹੁਤ ਉੱਗੇ ਵੈਦ ਜੀ ਨਾਲ ਗੱਲਬਾਤ ਕਰਨੀ ਹੈ ਕਿ ਆਯੁਰਵੇਦ ਦੇ ਵਿੱਚ ਤੁਹਾਡੇ ਇਲਾਜ ਕਿਸ ਤਰ੍ਹਾਂ ਹੋ ਸਕਦੇ ਆ ਇੱਕ ਤੋਂ 2 ਵਜੇ ਤੱਕ ਖਾਸ ਗੱਲ ਇੰਗਲੈਂਡ ਤੋਂ ਗੁਰਿੰਦਰ ਸਿੰਘ ਘਾਲੀ ਉਹਨਾਂ ਨਾਲ ਕਰਨੀ ਹੈ ਜਿਨ੍ਹਾਂ ਦੇ ਬਾਰੇ ਜਿਨ੍ਹਾਂ ਦੀ ਕੋਠੀ ਦਾ ਬੜਾ ਅੱਜ ਰੌਲਾ ਪਿਆ ਪੰਜਾਬ 'ਚ ਜ਼ਿੰਦਗੀ ਉਹਨਾਂ ਦੇ ਕੇਸ ਹੁਣ ਕਿਵੇਂ ਖਾਰਜ ਹੋਏ ਉਹ ਕੋਠੀ 'ਚ ਕੌਣ ਰਹਿੰਦਾ ਹੈ ਤੇ ਰੌਲਾ ਕਿੱਥੋਂ ਪਿਆ ਇਹ ਤਾਂ ਪਹਿਲਾਂ ਕੋਈ ਜਾਣਦਾ ਨਹੀਂ ਸੀ ਹੁਣ ਸਾਰੇ ਘਾਲੀ ਘਾਲੀ ਕਰਕੇ ਲੋਕ ਜਾਣਣ ਲੱਗੇ ਇਸ ਪਿੱਛੇ ਕਹਾਣੀ ਕੀ ਹੈ ਪੰਜਾਬ ਦੇ ਨੂਵੀ ਨਾਲ ਨਾਲ ਸ਼ੂਹਾਂਗੇ 1844 247 1550 ਉਹ ਨਿਆਰ ਨੰਬਰ ਹੈ 1844 247 1550 ਉਹ ਨਿਆਰ ਨੰਬਰ ਚਾਹ ਠੰਡੀ ਕਰਕੇ ਪੀਣ ਦਾ ਵੀ ਅੱਡ ਸਵਾਦ ਹੈ ਇੱਥੇ ਤਾਂ ਗਲਾਸ ਰੱਖ ਕੇ ਠੰਡੀ ਕਰਦੇ ਆ ਨਾ ਉੱਥੇ ਪਰਨਾ ਲਾ ਕੇ ਤੇ ਪਰਨੇ ਦੇ ਵਿੱਚ ਲੜਪ ਦੇ ਵਿੱਚ ਫਸ ਫੜ ਕੇ ਗਲਾਸ ਨੂੰ ਕੰਗਣੀ ਆਲੇ ਨੂੰ ਫਿਰ ਇਹ ਵੀ ਡਰ ਕਿ ਤੇ ਪਰਨੇ ਚੋ ਖਿਸਕ ਨਾ ਜਾਵੇ ਫਿਰ ਉੱਪਰੋਂ ਪਹਿਲੀ ਉਂਗਲ ਦੀ ਕੁੰਡੀ ਵਿੱਚ ਪਾਈ ਦੀ ਸੀ ਤੇ ਉੱਪਰੋਂ ਫੜ ਕੇ ਰੱਖਣਾ ਉਂਗਲ ਵਿੱਚ ਪਾ ਕੇ ਫਿਰ ਨੱਕ ਦੇ ਕੋਲ ਚਾਹ ਦੀ ਭਾਫ਼ ਫਿਰ ਕਲੋਲਾ ਕਰਦੀ ਹੈ ਮੁੱਛਾਂ ਦੇ ਉੱਪਰ ਭਾਫ਼ ਦੇ ਥੋੜੇ ਜੇ ਕਣੇ ਆ ਜਾਂਦੇ ਆ ਇਸ ਕਿਤੇ ਕਿਤੇ ਚਾਹ ਦੀ ਪੱਤੀ ਵਿੱਚੋਂ ਆਉਂਦੀ ਐ ਫਿਰ ਉਹ ਵੀ ਚੂਸਣੀ ਪੈਂਦੀ ਥੱਲੇ ਹੌਲੀ ਦੇਖ ਫਿਰ ਜਿਉਂ-ਜਿਉਂ ਚਾਹ ਅੰਦਰ ਜਾਂਦੀ ਐ ਬੰਦਾ ਪੈਰੀ ਪੈਰਾ ਭਾਰ ਬੈਂਦਾ ਹੌਲੀ-ਹੌਲੀ krpia.krpiaradio.com ਤੇ ਜਿੱਥੇ ਤੁਸੀਂ ਸਿੱਧਾ ਪ੍ਰਸਾਦ ਸੁਣਦੇ ਹੋ ਤੇ ਐਪ ਡਾਊਨਲੋਡ ਕਰ ਸਕਦੇ ਹੋ ਹਰਜੀਤ ਸਿੰਘ ਗਿੱਲ ਦੀ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਗੱਲਬਾਤ ਹੁੰਦੀ ਐ ਤੇ ਤੁਹਾਡੇ ਲਈ ਪ੍ਰੋਗਰਾਮ ਜਿਹੜਾ ਰਿਕਾਰਡ ਕਰਕੇ ਇਟਲੀ ਤੋਂ ਨੋ ਜਵਾਨ ਮੁੰਡੇ ਨੇ ਖਬਰਨਾਮੇ ਦੇ ਥੱਲੇ ਉਹ ਪਾਉਂਦੇ ਆ ਨਿੱਕਾ ਸਾਡਾ ਗਿਆ ਪੰਜਾਬ ਨੂੰ ਆ ਕੇ ਫਿਰ ਉਸ ਨੂੰ ਕੰਪਿਊਟਰ ਰੂਮ ਸੰਭਾਲਾਂਗੇ ਤੇ ਫਿਰ ਉਹਦੇ ਕੰਮ ਨੇ ਕਰਨ ਵਾਲੇ ਖਾਸਾ ਕੰਮ ਸੀ ਮੈਨੂੰ ਤਾਂ ਸਮਝਾ ਕੇ ਗਿਆ ਸੀ ਮੇਰੇ ਦੀ ਪੜ ਪੱਲੇ ਪਿਆ ਮੈਂ ਮੈਂ ਤਾਂ ਸਿੱਧੀ ਗੱਲ ਕਰਨ ਵਾਲਾ ਮਾਈਕ ਮੈਨੂੰ ਸੈੱਟ ਦੇ ਮੈਂ ਬੋਲ ਦੂੰ ਗਾਂ ਵਾਲੇ ਕੰਮ ਥੋੜੇ ਐ 18432471550 8442471550 ਤਾਂ ਹੀ ਫੋਨ ਫਲਿੱਪ ਫੋਨ ਰੱਖਿਆ ਖੋਲੋ ਤੇ ਬੰਦ ਆ ਬਟਨ ਬਟਨ ਨੱਪਣੇ ਆਪਣੇ ਕੰਮ ਬਸ ਦੀ ਗੱਲ ਨਹੀਂ ਹੈ 18442471550 ਉਹ ਨੰਬਰ ਹੈ krpiaudio.com ਤੇ ਸਿੱਧਾ ਪ੍ਰਸਾਦ ਸੁਣੋਗੇ ਮੈਨੇਜਰ ਸਾਹਿਬਾ ਦਾ ਨੰਬਰ 6044406462 ਹੈ ਤੇ ਨਾਲ ਹੀ info@krpiaudio.com ਵਾਰਿਸ਼ ਸ਼ਾ ਜੀ ਨੂੰ ਕਿਵੇਂ ਲਿਖਦਾ ਟਾਬਾਂ ਦੇ ਪਾਣੀਆਂ ਦੇ ਸੀ ਸ਼ੀਸ਼ਿਆਂ ਦਾ ਸੇਵਕ ਕੋ ਟਿੱਬਿਆਂ ਤੇ ਬੈਠਾ ਰੇਤੇ ਨੂੰ ਛਾਣਦਾ ਸੀ ਟਾਬਾਂ ਦੇ ਪਾਣੀਆਂ ਦੇ ਸੀ ਸ਼ੀਸ਼ਿਆਂ ਤੇ ਬੈਠਾ ਰੇਤੇ ਨੂੰ ਛਾਣਦਾ ਸੀ ਉਹਨੂੰ ਨਵਾਬੀ ਫੁੱਲਾਂ ਦੀ ਬਾਸ ਦਾ ਪਤਾ ਸੀ ਤੇ ਸ਼ੌਕ ਵੀ ਗਲਿਆਰਿਆਂ ਤੋਂ ਪਾਰ ਜਾਣ ਦਾ ਸੀ ਸੁਖਨਾ ਦੇ ਨੱਕ ਦੀ ਨਥਨੀ ਘੜ ਕੇ ਕਿਦੋਂ ਸੀ ਲਾਇਆ ਚਾਹ ਉਸ ਨੂੰ ਤੋਂ ਸ਼ਮਕਾਂ ਵੀ ਖਾਣ ਦਾ ਸੀ ਵਿਸਤਾਰ ਦਾ ਹੁਨਰ ਸੀ ਆਕਾਸ਼ ਗੰਗਾ ਵਰਗਾ ਪੰਜਾਬੀ ਦੀ ਇੱਕ ਵਿੱਚ ਪ੍ਰਤਾਪ ਮਾਨ ਦਾ ਸੀ ਉਸਦੇ ਲਹੂ ਚਿੱਤਰ ਦੇ ਧੁੱਪ ਤੇ ਸੀ ਅਕੀਦ ਦੇ ਤੇ ਉਹ ਪੀੜਾਂ ਕਿਸੇ ਏਕ ਹਾਨ ਦਾ ਸੀ ਸ਼ਬਦਾਂ ਦੇ ਆਸਣਾ ਤੇ ਤਖਤਾਂ ਤੇ ਬਹਿ ਗਈ ਜੋ ਇੱਕ ਵੰਗ ਜਿਹੀ ਮਟਿਆਰ ਨੂੰ ਭਲਾ ਕੌਣ ਜਾਣਦਾ ਸੀ ਇੱਕ ਵੰਗ ਜਿਹੀ ਮਟਿਆਰ ਨੂੰ ਭਲਾ ਕੌਣ ਜਾਣਦਾ ਸੀ ਹਰਮਨਜੀਤ ਰਾਣੀ ਤਤ ਸੰਦੇਹਾਂ ਹੀ ਵਧੀਆ ਪੰਜਾਬੀ ਪੜਨ ਨੂੰ ਮਿਲੀ ਬਾਈ ਸ਼ਿਵਚਨ ਜੱਗੀ ਕੁੱਸੇ ਨਾਲ ਫੇਸਬੁੱਕ ਤੇ ਗੱਲ ਹੋਈ ਮੈਂ ਕਿਹਾ ਮਿਲਣ ਨੂੰ ਹੀ ਰਹਿ ਗਿਆ ਰੱਖ ਲਿਆ ਮੀਮਾ ਨੇ ਕਿਉਂ ਬੰਬੇ ਗਿਆ ਫਿਲਮਾਂ ਦੇ ਵਿੱਚ ਜਮਾਂ ਹੀ ਗੱਲ ਕਰਨ ਜੋਗਾ ਰਗਿਆ ਕਹਿੰਦਾ ਫਿਕਰ ਨਾ ਕਰਨ ਕਿਹਾ ਟਾਲੀਆਂ ਬੇਹੋ ਕਰਦੇ ਆਂਗੇ ਅਜੇ ਤਾਂ ਪਹਿਲਾ ਹੀ ਨੱਕਾ ਮੋੜਿਆ ਵੇਖੀ ਕਿੱਥੇ ਕਹਾਣੀ ਖੜਦੀ ਜਾ ਫਿਲਮਾਂ ਦੇ ਵਿੱਚ ਸ਼ੁਰੂਆਤ ਹੈ ਜਿਹੜੀ ਕਹਾਣੀਆਂ ਲਿਖਣੀਆਂ ਪਟ ਕਥਾ ਲਿਖਣੀ ਬੜਾ ਕੰਮ ਹੈ ਦਿਨ ਰਾਤ ਲਟਾਪੀਂਗ ਹੋ ਜਾਂਦਾ ਬੰਦਾ ਪਰ ਲਿਖੂ ਬਾਈ ਸਰੇ ਲਿਖਣ ਤੋਂ ਬਾਅਦ ਉਹਨੂੰ ਬਣਾਉਣ ਵਾਲੇ ਵੀ ਚਾਹੀਦੇ ਆ ਚੱਕ ਮੇ ਚੁੰਨਿਆਂ ਤੇ ਫਿਲਮਾਂ ਬਣਨੀਆਂ ਨਹੀਂ ਜੱਗੀ ਦੀਆਂ ਉਹਦੇ ਨਾਵਲਾਂ ਤੇ ਫਿਲਮਾਂ ਬਣਾਉਣ ਵਾਲੇ ਵੀ ਪਹਾੜ ਜਿੱਦੇ ਜੇਰੇ ਵਾਲੇ ਬੰਦੇ ਚਾਹੀਦੇ ਆ ਵਪਾਰੀ ਬੰਦੇ ਨਹੀਂ ਚਾਹੀਦੇ ਫਿਰ ਫਿਲਮ ਬਣੂ ਇਹ ਬੰਦੇ ਮੌਰ ਮੰਡੀ ਤੋਂ ਲੱਭਣੇ ਪੈਣੇ ਨੇ ਖੱਬੇ ਪਾਸਿਓਂ ਖੱਬੀ ਪੱਗ ਬੰਦ ਏ ਰੰਗੀ ਉਹ ਫੇਰ ਗੱਲ ਕਰਨਗੇ ਉਹਦੇ ਪਾਤਰਾਂ ਚ ਉਹ ਬੋਲਣਗੇ ਸਰਦਾਰ ਸੋਹੀ ਵਰਗੇ ਮੈਂ ਅੱਜ ਗੱਲ ਕਰਨੀ ਚਾਹੁੰਦੀ ਆ ਪੁੱਤਾਂ ਬਾਰੇ ਧੀਆ ਜਿਹੜੀਆਂ ਇਹ ਦੇਸ਼ ਚਾਹੇ ਜਿੰਨੇ ਮਰਦੀ ਹਾਣ ਦਾ ਜਿੰਨਾ ਦੇਸ਼ ਇਹ ਖੁੱਲਾ ਧੀਆ ਫੇਰ ਵੀ ਉਸ ਤਰ੍ਹਾਂ ਹੀ ਇਹ ਘਰਾਂ ਚ ਰਹਿੰਦੀਆਂ ਮੈਨੂੰ ਜਿਵੇਂ ਪੰਜਾਬ ਦੇ ਵਿਹੜਿਆਂ ਚ ਰਹਿੰਦੀਆਂ ਲੱਗਦੀਆਂ ਮਾਪਿਆਂ ਤੋਂ ਡਰ ਕੇ ਮਾਪਿਆਂ ਦੇ ਭੈਅ ਚ ਆਪਣੇ ਸ਼ੌਕਾਂ ਨੂੰ ਗੰਢ ਦੇ ਕੇ ਥੋੜੀ ਜਿਹੀ ਚੀਜ਼ ਤੇ ਖੁਸ਼ ਹੋਣ ਦੀ ਬਹੁਤ ਵੱਡੀ ਇੱਕ ਉਹਨਾਂ ਨੂੰ ਰੱਬ ਨੇ ਸੋਚ ਦਿੱਤੀ ਹੈ ਪੁੱਤ ਨੂੰ ਲੰਚ ਦੇ ਲਈ 20 ਡਾਲਰ ਦੇ ਰੇ ਉਹ ਕਹੇ ਓਨਲੀ 20 ਇਹਦਾ ਕੀ ਆਉਣਾ ਧੀ ਨੂੰ 2 ਡਾਲਰ ਦੇ ਦੇ ਉਹ ਗੱਲ ਉਹ ਦੇ ਨਾਲ ਚਿੰਬੜੂ ਥੋੜੇ ਮੁਰਮੜ ਥੈਂਕ ਯੂ ਡੈਡੀ ਥੈਂਕ ਯੂ ਡੈਡੀ ਥੈਂਕ ਯੂ ਡੈਡੀ ਫਰਕ ਕੀ ਦਿੱਤਾ ਹੈ ਰੱਬ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਫਿਰ ਮਾਮਾ ਨੇ ਇਹਨਾਂ ਦੇ ਵਿੱਚੋਂ ਮਾਮਾ ਨੇ ਰੂਪ ਲੈਣਾ ਤੇ ਘਰ ਬੰਨਣ ਵਾਲੀਆਂ ਐ ਇਹਨਾਂ ਤੋਂ ਬਿਨਾ ਕਹਾਣੀਆਂ ਨਹੀਂ ਬਣਦੀਆਂ ਘਰ ਸੰਪੂਰਨ ਤਾਂ ਹੈ ਉਹਦੇ ਵਿੱਚ ਜੇ ਸੰਪੂਰਨ ਇਸਤਰੀ ਹੋਵੇ ਗੁਣ ਔਗਣ ਬੰਦੇ ਆਪਣੇ ਲਪੋਕੇ ਇਸਤਰੀਆਂ ਦੇ ਅੱਗੇ ਕਰ ਲੰਦੇ ਫਲਾਣੀ ਆ ਫਲਾਣੀ ਉਹ ਫਲਾਣੀ ਇਹ ਫਲਾਣੀ ਉਹ ਕਦੇ ਆਪਣੇ ਝੱਗੇ ਦੇ ਵਿੱਚ ਨਹੀਂ ਝਾਕਦੇ ਤੂੰ ਕੀ ਹੈ ਧੀਮੀਆਂ ਨੂੰ ਇਸਤਰੀਆਂ ਨੂੰ ਖੜਾਉਣਾ ਸਮਝਦੇ ਨੇ ਬੰਦੇ ਖੜਾਉਣਾ ਖੜਾਉਣਿਆਂ ਵਾਂਗੂ ਹੀ ਖੇਡਦੇ ਗੱਲਾਂ ਕਦੇ ਸੁਣੋ ਲੋਕਾਂ ਨੂੰ ਸੇਧ ਦੇਣ ਵਾਲਿਆਂ ਦੀਆਂ ਫਿਰ ਪਤਾ ਲੱਗੇ ਕਿੱਥੇ ਕਹਾਣੀ ਖੜਦੀ ਹੈ। ਸੋ ਇਹਨਾਂ ਦਾ ਮੇਰੇ ਮਨ ਦੇ ਵਿੱਚ ਇੱਕ ਹੈਰਵਾਸੀ ਸੰਦੇਹਾਂ ਦੱਜ ਗਈ ਇਹਨਾਂ ਨੂੰ ਇੰਨਾ ਕੁ ਵਧੀਆ ਪਾ ਇੰਨਾ ਕੁ ਉਹਨਾਂ ਨੂੰ ਸਮਝਾਓ ਕਿ ਕਦਰਾਂ ਕੀਮਤਾਂ ਦੇ ਨਾਲ-ਨਾਲੋ ਖੁੱਲ੍ਹ ਦਲੀ ਦੇ ਵਿੱਚ। ਉਹਨਾਂ ਟੁੱਕੇ ਡਰਦੀਆਂ ਸੰਗਾਉ, ਕੰਬਦੀਆਂ ਰਹਿੰਦੀਆਂ ਇੱਥੇ ਚਾਹੇ ਪਤਾ ਕਿ ਬਹੁਤ ਵਧੀਆ ਸਮਾਜ ਆ ਜਿੱਥੇ ਬਰਾਬਰਤਾ ਹੈ ਪਰ ਸਾਡੇ ਘਰਾਂ ਦੇ ਵਿੱਚ ਜੰਮਣ ਪਲ ਵਾਲੀਆਂ ਬੱਚੀਆਂ ਹਲੇ ਵੀ ਡਰ ਦੇ ਵਿੱਚ ਰਹਿੰਦੀਆਂ। ਸੰਘ ਦੇ ਵਿੱਚ ਰਹਿੰਦੀਆਂ ਪੁੱਤਾਂ ਤੋਂ ਕਿਉਂਕਿ ਅਸੀਂ ਉਹ ਦੇਖਦੀਆਂ ਕਿ ਪੁੱਤ ਨੂੰ ਕਿਹੜੀ ਟ੍ਰੀਟਮੈਂਟ ਅਤੇ ਮੈਨੂੰ ਕਿਹੜੀ ਟ੍ਰੀਟਮੈਂਟ ਪੁੱਤ ਦੇ ਬਰਥਡੇ ਤੇ ਕਿੰਨੇ ਦਾ ਸਮਾਨ ਹੈ ਤੇ ਮੇਰੇ ਬਰਥਡੇ ਤੇ ਕਿੰਨੇ ਦਾ ਸਮਾਨ ਪੁੱਤ ਦੇ ਭਾਈ ਦੇ ਬਰਥਡੇ ਤੇ ਕੀ ਹੋ ਰਿਹਾ ਮੇਰੇ ਬਰਥਡੇ ਤੇ ਕੀ ਹੋ ਰਿਹਾ ਕਿੱਥੇ ਜਾ ਰਹੇ ਕਿੱਥੇ ਆ ਰਹੇ ਵੀਰ ਵੀ ਖਰੀਦ ਰਿਹਾ ਪਰ ਫੇਰ ਵੀ ਈਰਖਾ ਦੇ ਵਿੱਚੋਂ ਬਾਹਰ ਨਿਕਲ ਕੇ ਵੀਰ ਵੀਰ ਕਰਕੇ ਉਹ ਪਿਆਰ ਕਰਦੀ ਧੀਆਂ ਨੂੰ ਸੰਭੋ ਹਰ ਰੋਜ਼ ਦਾ ਹੌਕਾ ਇਹਨਾਂ ਨੂੰ ਇੰਨੀਆ ਕੁ ਵਿਦਵਤਾ ਤੇ ਇੰਨਾ ਕੁ ਖੁੱਲ੍ਹ ਦਿਲਾਂ ਬਣਾਓ ਇੰਨੀਆ ਕਿ ਇਹਨਾਂ ਨੂੰ ਕੜੜੀਆਂ ਬਣਾਓ ਕਿ ਤੁਹਾਡੀ ਉੱਪਰ ਗੁਰੂ ਮਹਾਰਾਜ ਤੋਂ ਬਾਅਦ ਤੁਹਾਡੀ ਛਤਰ ਛਾਇਆ ਜੇ ਕਿਤੇ ਹਿੱਲਦੀ ਹੈ ਜੇ ਕਿਤੇ ਨੰਗੇ ਪਿੱੜ ਦੇ ਵਿੱਚ ਕੜਕ ਧੁੱਪ 'ਚ ਵੀ ਖੰਡ ਤਾਂ ਵੀ ਕੜੜੀਆਂ ਰਹਿਣ ਇਉਂ ਨਾ ਹੋ ਜਾਣ ਕਿਤੇ ਪਿਓ ਤੇ ਮਾਂ ਦੇ ਸਾਂਹ ਤੋਂ ਬਾਅਦ ਹਿੱਲਣ ਤੋਂ ਬਾਅਦ ਕਿਤੇ ਇਹ ਹਿੱਲ ਜਾ ਧੀਆਂ ਨੂੰ ਸਪੈਸ਼ਲ ਟ੍ਰੇਨ ਕਰੋ ਵਪਾਰਕ ਸੰਦੇਸ਼ ਧੀਆ ਰਾਣੀਆਂ ਦੀ ਗੱਲ ਹੈ ਜਿਹੜੀ ਉਹ ਭਾਵਕ ਕਰਦੀ ਹੈ ਬਾਈ ਜੀ ਸਖਦੀਪ ਸਿੰਘ ਬਰਾੜ ਕਹਿੰਦਾ ਮੈਨੂੰ ਤਿੰਨ ਧੀਆ ਬਾਈ ਜੀ ਰਾਤ ਨੂੰ ਸੁੱਤੀਆਂ ਪਈਆਂ ਹੁੰਦੀਆਂ ਜਾਂ ਮੈਂ ਜਾਨਾਂ ਪਰ ਜਦ ਖੜਕਾ ਹੁੰਦਾ ਸੁੱਤੀਆਂ ਪਈਆਂ ਅੱਧੀਆਂ ਅੱਖਾਂ ਖੋਲ ਕੇ ਉੱਠ ਕੇ ਪਿਆਰ ਕਰਕੇ ਫੇਰ ਸੌਂਦੀਆਂ ਸੰਭਣ ਦੀ ਲੋੜ ਹੈ ਕਿਉਂਕਿ ਸਾਡੇ ਵੇਚੇ ਚੀਜ਼ਾਂ ਬਸੀਆਂ ਹੋਈਆਂ ਨਾ ਚਾਹੁੰਦੇ ਹੋਏ ਵੀ ਕਿਤਨਾ ਕਿਤੇ ਸਾਡੀ ਬੋਡੀ ਲੈਂਗੁਏਜ ਉਹਨਾਂ ਨੂੰ ਦੱਬ ਦਿੰਦੀ ਆ ਸਾਡੀਆਂ ਅੱਖਾਂ ਉਹਨਾਂ ਨੂੰ ਦੱਬ ਦਿੰਦੀਆਂ ਉਮਲ ਫੁੱਲ ਨੇ ਮਰਜਾ ਜਾ ਜਾਂਦੇ ਨੇ ਬਚਪਨ ਦੇ ਸਦਮਿਆਂ ਦੇ ਵਿੱਚੋਂ ਕਦੇ ਵੀ ਸ਼ਖੀਅਤ ਜਿਹੜੀ ਪੂਰਨ ਆ ਬਾਹਰ ਉਗੜ ਕੇ ਨਹੀਂ ਆ ਸਕਦੀ ਸੰਭੋ ਸੰਭਣ ਦੀ ਲੋੜ ਐ ਇਸ ਤੋਂ ਅੱਗੇ ਪੀੜ੍ਹੀਆਂ ਤੁਸੀਂ ਵੇਖ ਲਓ 500 ਡਾਲਰ ਪੁੱਤ ਨੂੰ ਦੇ ਦੋ ਉਹ ਗੱਲ ਨੂੰ ਚਿੰਬੜਦਾ ਪੰਜ ਦੇ ਦਿਓ ਧੀ ਨੂੰ ਸ਼ਾਲ ਮਾਰ ਕੇ ਗੱਲ ਨੂੰ ਚਿੰਬੜਦੀ ਐ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪਤਾ ਹੀ ਨਹੀਂ ਕਿੰਨੀ ਵਾਰ ਕਿੰਨੀ ਵਾਰ ਉਹ ਕਹਿੰਦੀ ਪਰਿਵਾਰਾਂ ਦੇ ਵਿੱਚ ਬਹੁਤ ਕਿਸਮਤ ਵਾਲੇ ਨੇ ਜਿਨ੍ਹਾਂ ਨੂੰ ਧੀਆ ਬਖਸ਼ੀਆਂ ਚਾਹੇ ਉਹ ਜਿੰਨੀਆਂ ਵੀ ਹੋਣ ਇੱਕ ਨੇ ਦੋ ਨੇ ਤਿੰਨ ਨੇ ਗਿਣਤੀ ਜਿਵੇਂ ਪੁੱਤਾਂ ਨੂੰ ਗਿਣਦੇ ਉਹਨਾਂ ਨੂੰ ਇਸ ਤਰ੍ਹਾਂ ਹੀ ਗਿਣਨਾ ਚਾਹੀਦਾ ਹੈ ਦੇਣ ਦੀ ਜ਼ਰੂਰਤ ਹੈ ਡਬਲ ਸਟੈਂਡਰਡ ਨਹੀਂ ਉਸ ਉਮਰ ਉਦੋਂ ਵੱਡੀਆਂ ਜਿਹੜੀ ਵੀ ਉਮਰ ਦੇ ਘਰੇ ਧੀਆ ਨੇ ਉਸ ਜਿਹੀ ਧੀਆ ਬਾਹਰ ਹੈ ਕਿਉਂ ਨਹੀਂ ਬਈ ਆਪਣੇ ਘਰੇ 20 ਸਾਲ ਦੀ ਧੀਆ ਤੇ ਬਾਹਰ ਜਿਹੜੀ 20 ਸਾਲ ਦੀ ਉਹ ਧੀ ਨਹੀਂ ਹੈ ਨਿਗਾਹ ਜਿਹੜੀ ਹੈ ਸਿੱਧੀ ਰੱਖਿਆ ਕਰੋ ਤੇ ਨਾਲ ਤੋਂੰਬ ਸਪੌਂਸਰ ਹਨ ਪੀਰ ਫਾਈਨੈਂਸ਼ੀਅਲ ਪੀਰ ਫਾਈਨੈਂਸ਼ੀਅਲ ਤੋਂ ਦਲੀ ਸਿੰਘ ਗਲ ਰੂਮੀ ਉਹਨਾਂ ਨੇ ਸਨੇਹ ਦਿੱਤਾ ਹੈ ਕੋਈ ਵੀ ਟਰੱਕ ਲੈਣਾ ਨਵਾਂ ਜਾਂ ਪੁਰਾਣਾ ਟ੍ਰੇਲਰ ਲੈਣਾ ਜਾਂ ਹੁਣ ਇਕਪਮੈਂਟ ਲੈਣਾ ਕੋਈ ਕੋਈ ਤੁਸੀਂ ਐਕਸਕੇਵੇਟਰ ਲੈਣਾ ਜਾਂ ਕੋਈ ਕੰਮ ਸ਼ੁਰੂ ਕਰਨਾ ਜਾਂ ਟਰੱਕ ਟਰੈਕਟਰ ਵਗੈਰਾ ਕੋਈ ਸਮਾਨ ਲੈਣਾ ਕੋਈ 베ਰੀ ਤੋੜਨ ਵਾਲੀ ਮਸ਼ੀਨ ਲੈਣੀ ਹੈ ਸਾਰਾ ਸਮਾਨ ਹੈਵੀਅਰਥ ਇਕਪਮੈਂਟ ਤੋਂ ਲੈ ਕੇ ਫਾਰਮ ਦੀ ਸਾਰੀ ਮਸ਼ੀਨਰੀ ਟਰੱਕ ਟ੍ਰੇਲਰ ਡੰਪ ਟਰੱਕ ਕੁਝ ਵੀ ਨਵੇਂ ਜਾਂ ਚਲਦੇ ਜਾਂ ਕਿਤੋਂ ਮਹਿੰਗਾ ਲੋਨ ਲੈ ਇੱਕ ਬੈਠੇ ਉਹ ਸਸਤਾ ਕਰਨਾ ਪੀਲ ਫਾਈਨੈਂਸ਼ੀਅਲ ਤੇ ਗਲਦੀਪ ਸਿੰਘ ਗਿਲ ਰੂਮੀ ਨਾਲ ਗੱਲਬਾਤ ਕਰਨੀ ਹੈ 6545036969 6045036969 ਪੀਰ ਫਾਈਨੈਂਸ਼ੀਅਲ 747535 ਸਟਰੀਟ ਤੇ ਜੁਨਿਟ ਨੰਬਰ 112 ਕੋਸਕੋ ਦੇ ਪਿਛਲੇ ਬੰਨੇ 7475131 ਸਟਰੀਟ ਪੀਰ ਫਾਈਨੈਂਸ਼ੀਅਲ ਪ੍ਰੋਗਰਾਮ ਦੇ ਸਪான்ਸਰ ਨੇ ਨਾਲ ਹੀ ਕੈਪਟਨ ਮੀਟ 6045030070 ਪਾਲਵਿੰਗਨ ਸੈਂਟਰ ਦੇ ਵਿੱਚ ਵਧੀਆ ਮੀਟ ਖਰੀਦਣ ਲਈ ਵਧੀਆ ਕੁਆਲਿਟੀ ਦਾ ਮੀਟ ਇੱਥੋਂ ਖਰੀਦੋ ਮੀਟ ਦੇ ਜਿਹੜੇ ਪ੍ਰੋਡਕਟਸ ਨੇ ਹੋਰ ਸਮਾਨ ਹੈ ਉਹ ਵੀ ਇੱਥੋਂ ਮਿਲਦਾ ਕੈਪਟਨ ਮੀਟ 604503335030070 ਕੈਪਟਨ ਮੀਟ 6045030070 ਕੱਲ ਦਾ ਰੇਡ ਕਾ ਪਿਆ ਇੱਕ ਅਖਬਾਰ ਨੇ ਖਬਰ ਦੇਤੀ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਸਰਪੰਚ 트ੰਪ ਨੇ ਫੋਨ ਕੱਟਤਾ ਉੱਥੇ ਨਾਲ ਇੱਕ ਆਈਲੈਂਡ ਹੈ ਛੋਟੀ ਜੀ ਆਸਟ੍ਰੇਲੀਆ ਦੇ ਪਪਵਾ ਗਿਨੀ ਉਹ ਪਪਵਾ ਗਿਨੀ ਦੇ ਵਿੱਚ 700 ਬੰਦਾ ਰਿਫਿਊਜੀ ਬੈਠਾ ਤੇ ਉਹਨੂੰ ਇੱਥੇ ਲੈ ਕੇ ਆਉਣਾ ਸੀ ਉਹ ਹੋਰ ਦੇਸ਼ਾਂ ਦੇ ਰਿਫਿਊਜੀ ਨੇ ਗੱਲ ਊਵਾਮਾ ਦੇ ਨਾਲ ਪ੍ਰਧਾਨ ਮੰਤਰੀ ਦੀ ਚੱਲੀ ਦੀ ਆਸਟ੍ਰੇਲੀਆ 3.5 ਕਿਲੋਮੀਟਰ ਉਧਰ ਨਹੀਂ ਭੰਨ ਦਿੰਦੇ ਤੇ ਇਧਰ ਦੀ ਗੱਲ ਚੱਲੀ ਸੀ ਜਦ ਡੋਨਲਡ ਟਰੰਪ ਨਾਲ ਪ੍ਰੈਜ਼ੀਡੈਂਟ ਨਾਲ ਗੱਲ ਹੋਈਏ ਗੁੱਸੇ ਹੋ ਗਿਆ ਕਹਿੰਦੇ ਫੋਨ ਵਿੱਚ ਕੱਟਿਆ ਗਿਆ ਉਹ ਕਹਿੰਦਾ ਵੀ ਤੇਰਾ ਦੇਸ਼ ਗਵਾਣ ਚਾ ਤੇ ਤੂੰ ਸਾਡੇ ਕੱਲ ਨੂੰ ਦੂਜਾ ਬੋਸਟਨ ਦਾ ਬੰਬਰ ਭੇਜ ਰਹੇ ਹੈ ਤੋਂ ਆ ਕੇ ਅਮਰੀਕਾ ਦੇ ਸਿਟੀਜ਼ਨ ਬਣੇ ਹੋਏ ਦੋਨੇ ਭਾਈਆਂ ਨੇ ਜਿਹੜਾ ਬੋਸਟਨ ਮੈਰਾਥਨ ਦੇ ਵਿੱਚ ਬੰਬ ਬਲਾਸਟ ਕੀਤਾ ਸੀ ਉਹ ਉੱਥੇ ਰਿਫਿਊਜੀ ਕਜ਼ਾਕਿਸਤਾਨ ਤੋਂ ਜ਼ਿਆਦਾ ਨੇ ਉਹ ਇੱਥੇ ਨਹੀਂ ਆ ਸਕਦੇ ਬਾਲਾ ਕੜਾ ਚੌਕੀਦਾਰ ਬਣ ਗਿਆ ਭਈ ਸੋ ਕਦੇ ਫਿਰ ਫੋਨ ਕੱਟਿਆ ਗਿਆ ਲੈਵਲ ਉੱਥੇ ਵੀ ਇਹੀ ਐਸੇ ਲਿਆ ਚ ਸਾਉ ਉੱਥੇ ਵੀ ਨਹੀਂ ਹੈ ਇਹ ਤਾਂ ਮੁੰਡੇ ਸਾਡੇ ਪੜ੍ਹਾਈ ਦੇ ਵੇਸ ਤੇ ਪੜ੍ਹੇ ਲਿਖੇ ਬੰਦੇ ਸਦਲਜ ਰਿਫਿਊਜੀਰ ਵਗੈਰਾ ਦੀ ਇਲੈਗਲ ਇਮੀਗ੍ਰੈਂਟ ਦੀ ਗੱਲ ਕਰੀਏ ਉਹ ਨਹੀਂ ਬੰਨ ਦਿੰਦਾ ਕਿਉਂਕਿ ਇੱਕ ਟਾਪੂ ਹੀ ਐ ਅਲੱਦਲੇ ਪਾਣੀ ਐ ਉਹਦੀ ਸਿਕਿਉਰਿਟੀ ਬਹੁਤ ਐ ਦੇਸ਼ ਬਹੁਤ ਵੱਡਾ ਦੇਸ਼ ਜਿੱਦੇ ਮਰਜ਼ੀ ਵੱਡੇ ਹੋਣ ਬੰਦਾ ਗਲਤ ਨਹੀਂ ਬਣਨ ਦਿੰਦੇ ਨੌਕਰੀ ਵਧੀਆ BB 55 ਡਾਲਰ ਮਿਨਿਮਮ ਉਹਨਾਂ ਦੇ ਵੇਜਸ ਨੇ ਉੱਥੇ ਸਾਡੀ ਕਮਿਊਨਿਟੀ ਬਹੁਤ ਫਰਟਾਈਲ ਤਕੜੀ ਹੋ ਰਹੀ ਆ ਉੱਥੇ ਪੜ੍ਹੇ ਲਿਖੇ ਮੁੰਡੇ ਗਏ 15 14 15 ਸਾਲ ਨਾਲ ਇਹ ਮੰਗੇਤਰ ਲੈ ਗਏ ਮੰਗਣੇ ਹੋਏ ਹਵਾਏ ਵਿੱਚੇ ਹੀ ਚੱਕਤਾ ਕੰਮ ਹੁਣ ਮਾਪੇ ਨੇ ਉੱਥੇ ਖੁੱਲੇ ਘਰ ਨੇ ਬਹੁਤ ਫਰਕ ਐ ਉਸ ਦੇਸ਼ 'ਚ ਸੋ ਇਹ ਛੋਟੀ ਦੀ ਆਈਲੈਂਡ ਇੱਕ 3.5 ਕਿਲੋਮੀਟਰ ਟੱਟ ਤੋਂ ਉਸ ਦੀ ਗੱਲ ਇਹ ਜੇ ਚੱਲੀ ਉਹ ਕਹਿੰਦਾ ਨਾ ਨਾ ਨਾ ਇਹ ਨਹੀਂ ਇਹ ਨਹੀਂ ਗੱਲ ਵਾ। ਫਿਰ ਇਹ ਚੀਜ਼ ਨੂੰ ਕਨਫਰਮ ਨਹੀਂ ਕੀਤਾ ਦੋਨਾਂ ਨੇ ਕਿ ਫੋਨ ਕੱਟੇ ਗਏ ਆ ਪਰ ਫੋਨ ਕੱਟੇ ਗਏ ਇਸ ਗੱਲ ਦਾ ਇੱਕ ਪੇਪਰ ਨੇ ਖਲਾਸਾ ਕੀਤਾ ਵੀਕਐਂਡ ਤੇ ਗੱਲ ਹੋਈ ਇਹ ਤਪਸ਼ ਬਾਹਰ ਨਿਕਲੀ ਹੁਣ। ਬਹੁਤ ਤਕੜਾ ਸਟੈਂਡ ਆ ਤੇ ਲੋਕ ਹੱਕ ਚ ਖੜਨ ਲੱਗੇ ਕਿ ਆਪਣੇ ਦੇਸ਼ ਦੇ ਵਿੱਚ ਕਿਹਨੂੰ ਕੋ ਸੱਦਣਾ ਉਹਦਾ ਆਪਣਾ ਹੱਕ ਹਕੂਕ ਹੈ ਤੇ ਉਹਨੂੰ ਚੈਲੰਜ ਨਹੀਂ ਤੁਸੀਂ ਕਰ ਸਕਦੇ ਇਹ ਗੱਲ ਬਹੁਤ ਜ਼ੋਰ ਨਾਲ ਚੱਲ ਰਹੀ ਆ ਦੂਜੇ ਬੰਨੇ ਮਨੁੱਖੀ ਹੱਕਾਂ ਦੇ ਨੰਬਰਦਾਰ ਕਹਦੇ ਨੇ ਵਧੀਆ ਦੇਸ਼ਾਂ ਨੂੰ ਗਰੀਬ ਬੰਦਿਆਂ ਦੀ ਬਾਹ ਫੜਨੀ ਚਾਹੀਦੀ ਆ ਬਹੁਤ ਫਾਈਨ ਲਾਈਨ ਖਿੱਚੀ ਗਈ ਦੇਖਦੇ ਹਾਂ ਹੁਣ ਗਾਹਾਂ ਗਾ ਕੀ ਬਣਦਾ ਐਮੀ ਵਰਕ ਦਾ ਇੱਕ ਗੀਤ ਅਜਕੇ 36 ਮਿੰਟ ਹੋਇਆ ਜੀ ਸੁਖੀ ਗਰੇਵਾਲ ਤੁਸੀਂ ਏਰਤੇ ਹੋ ਜੀ ਜੀ ਗਿੱਲ ਸਾਹਿਬ ਸਾਸੀ ਕਾਲ ਪਹਿਲਾਂ ਤਾਂ ਪ੍ਰਵਾਨ ਕਰੋ ਅਹ ਗਿਲ ਸਾਹਿਬ ਮੈਂ ਪਰਸੋ ਤੋਂ ਤੁਹਾਡਾ ਪ੍ਰੋਗਰਾਮ ਸੁਣਨ ਲੱਗਿਆ ਮੈਨੂੰ ਨੰਬਰ ਕਿਸੇ ਸੱਜਣ ਤੋਂ ਮਿਲਿਆ ਪਹਿਲੀ ਗੱਲ ਤਾਂ ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਜਿਹੜੀ ਰਚਨਾ ਤੁਸੀਂ ਪਹਿਲਾਂ ਸਾਂਝੀ ਕਰਦੇ ਹੋ ਕੋਈ ਵੀ ਕਿਸੇ ਪੁਰਾਣੇ ਕਵੀ ਦੀ ਉਹ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀ ਹੈ ਕਿਉਂਕਿ ਅਸੀਂ ਰਜੇਮੈਂਜ ਐਨੇ ਰੁੱਝ ਗਏ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਟੁੱਟ ਚੁੱਕੇ ਹਾਂ ਮਤਲਬ ਤੁਹਾਡੀ ਜਵਾਨੀ ਸੁਣ ਕੇ ਬਹੁਤ ਸਕੂਨ ਆ ਜਾਂਦਾ ਸੋ ਇਸ ਕਰਕੇ ਇੱਕ ਦਾ ਬਹੁਤ ਹੀ ਵਧਾਈ ਦੇ ਪਾਤਰੋਂ ਤੁਸੀਂ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਬਾਕੀ ਜਿਹੜਾ ਅੱਜ ਤੁਸੀਂ ਆ ਇਸ਼ੂ ਚੱਕਿਆ ਧੀਆਂ ਵਾਲਾ ਬਿਲਕੁਲ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਬਿਲਕੁਲ ਸੱਚ ਗੱਲ ਆ ਕਿਉਂਕਿ ਅਸੀਂ ਚਾਹੇ ਲੱਖ ਉਹ ਚੀਜ਼ ਨੂੰ ਅਸੀਂ ਭਲਾ ਦਈਏ ਕੋਈ ਗੱਲ ਨਹੀਂ ਬੇਟੀਆਂ ਪਰ ਉਹ ਜਾਂਦਾ ਨਹੀਂ ਕਿਤੇ ਨਾ ਕਿਤੇ ਉਹ ਚੀਜ਼ ਬਿਲਕੁਲ ਝਲਕਦੀ ਆ ਸੀ ਉੱਤੋਂ ਉੱਤੋਂ ਦਾ ਕਰੀ ਜਾਂਦੇ ਅਸੀਂ ਫਰਕ ਨਹੀਂ ਰੱਖਦੇ ਪਰ ਇਹ ਚੀਜ਼ ਹੈਗੀ ਆ ਬਿਲਕੁਲ ਇਹ ਚੀਜ਼ ਤੋਂ ਸਾਨੂੰ ਪਰੇ ਹਟਣਾ ਚਾਹੀਦਾ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਅਸੀਂ ਮੂਰੇ ਲੈ ਕੇ ਆਈਏ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਕਰੀਏ ਸੋ ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਮੇਰਾ ਅੱਜ ਦਿਲ ਕੀਤਾ ਵੀ ਮੈਂ ਕਾਲ ਕਰਾਂ ਤੇ ਜਾਂਦੇ ਜਾਂਦੇ ਮੈਂ ਦੋ ਲਾਈਨਾਂ ਸਿਰਫ ਮੈਨੂੰ ਵੀ ਚਰੀਟਾ ਮਾਰਨ ਦਾ ਸ਼ੌਂਕ ਆ ਤੇ ਜਾਂਦੇ ਜਾਂਦੇ ਮੈਂ ਦੋ ਲਾਈਨਾਂ ਧਿਆਨ ਲਈ ਬੋਲਨੀਆ ਚਾਹਨਾ ਬੰਗਲਾ ਕੋਠੀ ਨਾ ਕੋਈ ਵੱਡੀ 8-9 ਲੱਖ ਦੀ ਨਾ ਹੀ ਗੱਡੀ ਰੰਗਲਾ ਪੀੜਾ ਕੱਚਾ ਵੇੜਾ ਜਾਂ ਦੀ ਛਾਂ ਬਾਪੂ ਤੇ ਤੋਂ ਮੰਗ ਜੀ ਬੇਤੀ ਮੰਜੀ ਜੋ ਬਾਪੂ ਤੋਂ ਮੰਗ ਜੀ ਬੇਤੀ ਮੰਜੀ ਜੋ ਥੈਂਕ ਯੂ ਗਿਲ ਸਰ ਜਿੰਦੇ ਥੈਂਕ ਸੋ ਮਚ ਗਰ ਰਸਲ ਬਪਾਰਕ ਸੰਦੇਸ਼ ਯੂਕਰੇਨ ਦੇ ਵਿੱਚ 2 ਸਾਲ ਦੀ ਸ਼ਾਂਤੀ ਸੀ ਤੁਸੀਂ ਦੇਖ ਲਓ ਬਈ ਬਾਕੀ ਬੰਦੇ ਰਸ਼ੀਆ ਦੇ ਉੱਥੇ ਲੜਾਈ ਵਿੱਢੀ ਬੈਠਿਆ ਤੇ ਬਹੁਤ ਜ਼ਿਆਦਾ ਬੰਬਾਰੀ ਹੋਈ ਹੈ ਤੇ ਉੱਥੇ ਦਾ ਇੱਕ ਛੋਟਾ ਜਿਹਾ town hai ever ever difficult jeva theek bolna te 20000 bande utthe de ye usdi rajdhani de neede hai te 20000 log utthon yak chann de vich unna nu ghar chhadna paya na utthe bijli hai na heat hai na pani hai minus 2 degree temperature ladai jehdi hai ਇਸ ਸੱਭਾ ਨੇ ਸ਼ੁਰੂ ਹੋਈ ਹੈ ਤੁਹਾਨੂੰ ਦੱਸਿਆ ਸੀ ਕਿ ਇਸ ਖਿੱਤੇ ਦੇ ਵਿੱਚ ਜੰਗੀ ਮਸ਼ਕਾਂ ਜਿਹੜੀਆਂ ਤਿਆਰ ਨੇ ਚੱਲ ਰਹੀਆਂ ਨੇ ਤੇ ਇਹਨਾਂ ਮਸ਼ਕਾਂ ਦੇ ਵਿੱਚ 4000 ਦੇ ਕਰੀਬ ਫੌਜੀ ਜਿਹੜੇ ਨੇ ਆਵਾਮਾ ਦੀ ਸਰਕਾਰ ਆਵਾਮਾ ਦੀ ਪ੍ਰੈਜ਼ੀਡੈਂਸੀ ਦੇ ਵੇਲੇ ਇੱਥੋਂ ਭੇਜੇ ਸੀ ਉਸਨੇ ਤੇ ਹੋਰ ਈਸਟਰਨ ਯੂਰਪ ਦੇ ਵਿੱਚ ਨੈਟੋ ਸਾਂਝੀਆਂ ਮਸ਼ਕਾਂ ਕਰ ਰਹੀ ਹੈ ਤੇ ਉਸਨੇ ਹੁਣ ਆਪਣੇ ਤੌਰ ਤੇ ਅੱਖਾਂ ਦਿਖਾਉਣੀ ਆ ਤੁਹਾਨੂੰ ਪਤਾ ਹੀ ਹੈ ਕਿ ਹੁਣ ਬਹੁਤ ਫਰਕ ਏ ਹੁਣ ਉਹ ਨਹੀਂ ਰਹੇਗੇ ਜੀ ਜਿਵੇਂ ਪਿੰਡਾਂ 'ਚ ਕਹਾਉਤ ਪਾਉਂਦੇ ਹੁੰਦੇ ਸੀ ਉਹ ਕਹਾਣੀ ਹੈ ਹੁਣ ਜਿੰਨੇ ਠੱਲਣਾ ਹੈ ਨਾਲ ਬਣਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਪੁਤਨ ਦੀ ਸਾਂਝੀ ਗੱਲ ਤੇ ਕੈਬਨਟ ਦੇ ਵਿੱਚ ਵਿਦੇਸ਼ ਮੰਤਰੀ ਦੇ ਨਾਲ ਜਿਹੜੀ ਪੁਤਨ ਦੀ ਯਾਰੀ ਲੋਕਾਂ ਦੇ ਸਾਹਮਣੇ ਜਗ ਜਾਰ ਹੈ ਬਹੁਤ ਵਾਰ ਅਕਸੋਂ ਦਾ ਐਕਸੀਓ ਜਾ ਕੇ ਉਹਨੂੰ ਮਿਲ ਚੁੱਕਿਆ ਤੇ ਉੱਥੇ ਇੱਕ ਰਫੈਨਬੀ ਦਾ ਡਿਸਪਿਊਟ ਇਸਨੇ ਠੀਕ ਕੀਤਾ ਸੀ ਆ ਸਾਲ ਆ ਜਿਹੜਾ ਪਹਿਲਾ ਸਾਲ ਜ਼ੋਰ ਲੱਗਣ ਤੋਂ ਪਹਿਲਾ ਜਿਹੜਾ ਸਮਾਂ ਹੁੰਦਾ ਉਹ بڑا ਹੁੰਦਾ ਜਦ ਤੱਕ ਕੰਸੀਕਵੈਂਸਸ ਵਾਰ ਆਉਂਦੇ ਆ ਲੋਕਾਂ ਦੀਆਂ ਗਤੀਵਿਧੀਆਂ ਬਾਹਰ ਹੁੰਦੀਆਂ ਜਦ ਤੱਕ ਨਹੀਂ ਬੰਦਾ ਰੁਕਦਾ ਨਾਸਟਾ ਦੀ ਬਾਤ ਅੱਜ ਜੇ ਵਰਲਡ ਦੀਆਂ ਪਹਿਲੀਆਂ 6 ਖਬਰਾਂ ਚੱਕਣੀਆਂ ਹੋਣ ਉਹਦੇ ਚ 4 ਖਬਰਾਂ ਡਾਉਨ ਐਂਡ ਪੰਪ ਦੀਆਂ ਆਸਟ੍ਰੇਲੀਆ ਵਾਲੀ ਗੱਲ ਨਾਸਟਾ ਦੀ ਗੱਲ ਸ਼ੁਰੂ ਕਰ ਰਿਹਾ ਯੂਕਰੇਨ ਦੀ ਲੜਾਈ ਨੂੰ ਅਖੀਰ ਦੇ ਵਿੱਚ ਪੱਤਰਕਾਰ ਉਸ ਵਿਸ਼ਲੇਸ਼ਣ ਇਹ ਕਰਦਾ ਹੈ ਕਿ ਜਿਹੜੇ ਬਾਗੀ ਬੈਠੇ ਆ ਉਥੇ ਰੈਬਲਸ ਜਿਹੜੇ ਬੈਠੇ ਆ ਦੇਖੋ ਇੱਕ ਦੇਸ਼ ਦੇ ਬੰਦੇ ਆ ਉਹ ਰਸ਼ੀਆ ਦੇ ਬੰਦੇ ਆ ਤੇ ਜਦ ਮਰਜ਼ੀ ਉਹਨਾਂ ਨੂੰ ਬਿਲਡਰ ਕਰ ਸਕੀਏ ਉਹ ਬੇਬਾਬ ਸੌ ਇੱਥੇ ਪਰ ਨਹੀਂ ਉਹਨਾਂ ਨੂੰ ਤਾਂ ਸਾਜੋ ਸਮਾਨ ਮਿਲ ਰਿਹਾ ਉਹ ਲੜ ਰਹੇ ਨੇ ਹੁਣ ਯੂਕਰੇਨ ਨੂੰ ਬਚਾਉਣ ਦੇ ਲਈ ਕਿਹਨੇ ਖੜਨਾ ਸੀ ਨੈਟੋ ਨੇ ਨੈਟੋ ਤੋਂ ਅਮਰੀਕਾ ਹੱਥ ਖਿੱਚ ਰਿਹਾ ਅਮਰੀਕਾ ਨੇ ਇੱਥੇ ਹੁਣ ਜਾਣਾ ਨਹੀਂ ਹੈ ਦੇ ਵਿੱਚ ਯੈਸ ਈਰਾਨ ਵਾਲੇ ਪਾਸੇ ਨੂੰ ਕਸ਼ੀਦਗੀ ਹੋ ਰਹੀ ਹੈ ਈਰਾਨ ਦੀ ਗੱਲ ਬਹੁਤ ਚਿਰਾਂ ਦੀ ਰੜਕ ਰਹੀ ਹੈ ਲੋਕਾਂ ਨੂੰ ਈਰਾਨ ਤੇ ਹਮਲੇ ਦੀਆਂ ਗੱਲਾਂ 에ਅਰਕ੍ਰਾਫਟ ਕੈਰੀਅਰ ਦੇ ਕੋਲ ਜਾਣ ਦੀਆਂ ਗੱਲਾਂ ਉਹਦੇ ਪਛਟਦੇ ਕੁ ਰਹਿਣ ਦੀਆਂ ਗੱਲਾਂ ਤੇ ਹੁਣ ਹੁਣ ਬਿਲਕੁਲ ਸਬੰਧ ਜਿਹੜੇ ਵਿਗੜਨਗੇ ਹੋਰ ਵਿਗੜਨਗੇ ਕਿ ਜਿਹੜੀ ਡੀਲ ਹੋਈ ਸੀ ਸਾਂਝੀ ਦੇਸ਼ਾਂ ਦੀ ਉਹਦੇ ਵਿੱਚੋਂ ਡੋਨਲਡ ਟਰੰਪ ਨੇ ਕਿਹਾ ਨੋ ਕੋਈ ਇਸ ਤੇ ਬੰਦਸ਼ਾ ਮੈਂ ਨਹੀਂ ਹਟਾਉਣੀ ਇਹ ਜਿਹੜੀ ਠੀਕ ਹੈ ਦੇਸ਼ ਨੂੰ ਸੁਰੱਖਿਅਤ ਰੱਖਣਾ ਦੇਸ਼ ਦੇ ਵਿੱਚ ਬੰਦੇ ਨਹੀਂ ਆਉਣ ਦੇਣੇ ਪਰ ਜੇ ਹਰ ਰੋਜ਼ ਹੀ ਕੋਈ ਨਾ ਕੋਈ ਸੜੀ ਸਿਆਪਾ ਖੜਾ ਰੱਖਣਾ ਨਾ ਖੇਰ ਗੱਲ ਗਲਤ ਪਾਸੇ ਨੂੰ ਜਾ ਰਹੀ ਹੈ ਹੁਣ ਕੱਲ ਬ੍ਰੈਡ ਬਾਇਟ ਜਿਹੜੀ ਇੱਕ ਵੈਬਸਾਈਟ ਹੈ ਜਿੱਥੇ ਬਹੁਤ ਜ਼ਿਆਦਾ ਤੇਜ਼ ਵਿਚਾਰਾਂ ਵਾਲੇ ਦੀਆਂ ਖਬਰਾਂ ਛਾਪੀਆਂ ਜਾਂਦੀਆਂ ਉਸ ਦੇ ਚੀਫ ਜਿਹੜਾ ਉਹਦਾ ਮਿਲੋ ਵਿਆਨੂਪੋਲੋਸ ਉਸਨੇ ਆ ਕੇ ਬੋਲਣਾ ਸੀ ਯੂਨੀਵਰਸਿਟੀ ਬਰਕਲੇ ਦੇ ਵਿੱਚ ਉੱਥੇ ਵਿਦਰੋਹ ਹੋ ਗਿਆ ਤੇ ਅੱਗ ਲੱਗ ਗਈ 1200 ਦੇ ਕਰੀਬ ਬੰਦਿਆਂ ਨੇ ਵੈਨਿਊ ਘੇਰ ਲਿਆ ਤੇ 트ੰਪ ਨੇ ਉੱਥੇ ਬੈਠੇ ਟਵੀਟ ਕੀਤਾ ਕਹਿੰਦਾ ਜੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ ਫ੍ਰੀ ਸਪੀਚ ਨਹੀਂ ਹੋਣ ਦਿੰਦੇ ਤਾਂ ਨੋ ਫੈਡਰਲ ਫੰਡਸ ਤੁਹਾਨੂੰ ਕੋਈ ਫੈਡਰਲ ਫੰਡ ਨਹੀਂ ਮਿਲਣਾ ਜਦ ਆਹ ਲੈਵਲ ਦੀ ਕਹਾਣੀ ਚੱਲ ਜੱਸ ਹੈ ਕਿ ਇੱਕ ਵੈਬਸਾਈਟ ਹੈ ਜਿਹੜੀ ਇਸ ਦੇ ਹੱਕ 'ਚ ਬੋਲਦੀ ਆ ਨਸਲਵਾਦੀ ਜਿੱਥੇ ਬੂਹ ਆਉਂਦੀ ਹੈ ਉਹਦਾ ਜੇ ਹੈੱਡ ਵੀ ਨਹੀਂ ਬੋਲਣ ਦਿੱਤਾ ਜਾਂਦਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਫ੍ਰੀ ਸਪੀਚ ਦੀ ਗੱਲ ਕਰਦਾ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਵੀ ਫ੍ਰੀ ਸਪੀਚ ਵਾਲਿਆ ਤਾਂ ਉਹਨਾਂ ਨੂੰ ਕਹਿੰਦਾ ਵੀ ਕਰਕੇ ਪਿੱਛੇ ਸਾਈਨ ਆਫ ਇੰਟਰੋਗੇਸ਼ਨ ਪ੍ਰਸ਼ਨ ਮਾਰਕ ਇਹ ਜਿਹੜੀਆਂ ਇਹ ਜੀਆਂ ਗੱਲਾਂ ਇਹ ਠੀਕ ਪਾਸੇ ਨੂੰ ਨਹੀਂ ਜਾਂਦੀਆਂ ਜਿੱਥੇ ਵਿਚਾਰ ਤਾਰਾ ਜਿਹੜੀ ਐ ਉਹ ਕੋਈ ਵੀ ਐ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਗੱਲ ਲੋਕਾਂ ਨੂੰ ਪਸੰਦ ਆਉ ਪਰ ਜੇ ਗੱਲ ਇੱਥੇ ਤੱਕ ਦੂਜੇ ਬੰਦੇ ਪਾਸੇ ਨੂੰ ਜਾਊ ਕਿ ਵੇ ਨਾ ਨਾ ਹੁਣ ਮੈਂ ਆ ਵੀ ਕਰੂੰ ਆ ਵੀ ਕਰੂੰ ਫੇ ਬਾੜਾ ਲੰਮਾ ਪਾਰੀ ਨਹੀਂ ਖੇਲੀ ਜਾਣੀ ਤੁਸੀਂ ਇੱਥੇ ਹੀ ਦੇਖ ਲਿਓ ਗੱਲ ਕੀ ਬਣਨੀ ਐ ਫੇ ਦੇ ਵਿੱਚ ਲੋਕ ਇਸ ਗੱਲ ਕਰਕੇ ਬੜੇ ਫਿਕਰ ਦੇ ਵਿੱਚ ਨੇ ਜੇ ਕਿਸੇ ਕਿਸ ਨਾਲ ਫੋਨ ਦੀ ਕਨਵਰਸੇਸ਼ਨ ਤੁਸੀਂ ਵਿੱਚ ਵਿਚਾਲੇ ਕੱਟਦੇ ਹੋ ਕੋਈ ਗੱਲ ਤਾਂ ਕੋਈ ਨਾ ਕੋਈ ਹੋਈ ਹੈ ਜਿਹੜੀ ਬਾਹਰ ਨਿਕਲੀ ਹੈ ਤੇ ਉਸ ਤੋਂ ਲੋਕ ਇਸ ਨੇ ਕੁਝ ਨਹੀਂ ਕਿਹਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਕਿ ਨਾ ਨਾ ਸਾਡੇ ਬਹੁਤ ਸਟਰੋਂਗ ਟਾਈਜ਼ ਨੇ ਤੇ ਇਹ ਹੈ ਬੁਰ ਪਰ ਭੂਰੇ ਵਾਲਾਂ ਦੀ ਕਹਾਣੀ ਹੈ ਰੈਡ ਨੱਕ ਦੀ ਰੈਡ ਨੱਕ ਨਾਲ ਜਿੱਤੇ ਕਿਤੇ ਖੜਕਦੀ ਹੈ ਪਰ ਇੱਕ ਜਦ ਸਿਆ રંગ ਦੇ ਲੋਕਾਂ ਦੇ ਖਿਲਾਫ ਗੱਲਾਂ ਖੜਨੀਆਂ ਨੇ ਤਾਂ ਉੱਥੇ ਫਿਰ ਡਿਫਰੈਂਟ ਹੋ ਜਾਣੀਆਂ ਗੱਲ ਐਨੀਵੇਜ਼ ਹਲੇ ਸਮਾ ਲੱਗੂਗਾ ਤੇ ਅੱਜ ਸਪੁਰ ਦੇ ਖਾਕ 6 ਜਣਿਆਂ ਦੇ ਵਿੱਚੋਂ 3 ਨੂੰ ਮੋਂਟਰੀਅਲ ਦੇ ਵਿੱਚ ਕਰ ਦਿੱਤਾ ਜਿੱਥੇ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਗੱਲ ਕੀਤੀ ਕਿ ਇਸ ਹਨੇਰੇ ਦੇ ਵਿੱਚੋਂ ਅਸੀਂ ਨਿਕਲਾਂਗੇ ਵੀ ਵਿਲ ਰਾਈਜ਼ ਫ্রম ਦਿਸ ਡਾਰਕਨੈਸ ਟਰੂਡੋ 6 ਜਣਿਆਂ ਚੋਂ 3 ਨੂੰ ਮੋਂਟਰੀਅਲ ਦੇ ਵਿੱਚ ਫਿਰ ਦੇਖਾਖ ਕੀਤਾ ਗਿਆ ਜਿੱਦ ਹੀ ਇਸ ਤੇ ਹਮਲਾ ਹੋਇਆ ਮਸਜਿਦ ਤੇ ਬੜੀਆਂ ਨਵੀਆਂ ਗੱਲਾਂ ਚੱਲ ਰਹੀਆਂ ਨੇ ਤੇ ਖਿਆਲ ਰੱਖਣ ਦੀ ਲੋੜ ਹੈ ਮੈਂ ਹਰ ਰੋਜ਼ ਤੁਹਾਨੂੰ ਕਹਿਣਾ ਵਿਜ਼ੀਬਲ ਮਿਨੋਰਟੀਜ਼ ਕਿਤੇ ਵੀ ਨੇ ਆਪਣਾ ਆਪ ਖਿਆਲ ਰੱਖਾ ਇੱਕ ਸਾਡਾ ਜਿਹੜਾ ਕੈਨੇਡੀਅਨ ਮੈਂਟ ਹੈ ਜਿਸ ਸਾਡੇ ਕੇ ਬਣਦੇ ਉੱਥੋਂ ਸੋਨੇ ਦੇ 17 ਸਿੱਕੇ ਉੱਥੇ ਦੇ EMPLOYEE ਨੇ ਇੱਕ ਨੇ ਸਿਆਹ ਰੰਗ ਦਾ ਬੰਦਾ ਲੈਸਟਰ ਲਾਰੈਂਸ ਸਰੀਰ ਦੇ ਵਿੱਚ ਲੁਕੋ ਕੇ ਲੈ ਗਿਆ 17 ਸਿੱਕੇ ਬਾਹਰ ਵੇਚਣ ਲੱਗਿਆ ਬਾਹਰ ਫੜ ਲਿਆ 2 ਲੱਖ ਡਾਲਰ ਦਾ ਹੁਣ ਫਾਈਨ ਹੋਇਆ ਤੇ 30 ਮਹੀਨੇ ਦੀ ਸਜ਼ਾ ਬੋਲੀ ਇੱਕ ਤਾਂ ਜ਼ਮੇਕਾ 'ਚ ਘਰ ਬਣਾ ਲਿਆ ਇੱਕ ਫਲੋਰੀਡਾ 'ਚ ਕਿਸ਼ਤੀ ਲੈ ਲਈ ਤੇ 20 50 192 ਤੋਂ 264 ਗ੍ਰਾਮ ਦਾ ਇੱਕ ਪੱਕਾ ਸੋਨੇ ਦੀ ਅਸਲ ਜਿਹੜੀ ਹੌਕੀ ਖੇਲਣ ਵਾਲੀ ਉਹ ਇੱਕ ਮਿੰਟ ਦੇ ਵਿੱਚ ਬਣਨੀ ਸੀ ਸੋਨੇ ਦੀ ਬਣਨੀ ਸੀ ਬਣੀ ਸੀ ਉਹ ਉੱਥੋਂ ਚੋਰੀ ਕਰਕੇ ਲੈ ਗਿਆ ਤੇ ਜਦ ਬਾਅਦ ਵੇਚਣ ਲੱਗ ਗਿਆ 17 ਜਿਹੜੀਆਂ ਉਸਨੇ ਵੇਚ ਦਿੱਤੀਆਂ ਜਿਹੜੀ 679500 ਡਾਲਰ ਦੀ 2014 ਤੇ 15 ਦੇ ਵਿੱਚ ਉਹਨੇ ਵੇਚੀ 192 ਤੋਂ 264 ਗ੍ਰਾਮ ਉਸ ਦਾ ਪੀਸ ਦਾ ਵਜਨ ਹੈ ਲੈ ਗਿਆ ਬੱਗਾ ਸ਼ੇਰ ਲਕੋ ਤੇ ਹੁਣ ਉਹ ਸਜਾ ਬੋਲੀ ਹੈ ਗੱਲ ਨਹੀਂ ਬਣੀ ਜਸਰਿੰਦਰ ਸਿੰਘ ਦੀ ਲਾਈਨ ਨੰਬਰ 2 ਹਾਂਜੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਨਾ ਅਮਰੀਕਾ ਦੇ ਹਵਾਲੇ ਨਾਲ ਇੱਕ ਪੰਜਾਬ ਬਾਰੇ ਸੁਨੇਹਾ ਦੇਣਾ ਚਾਹੁੰਦਾ ਪੰਜਾਬ ਦੇ ਜਦੋਂ ਇਲੈਕਸ਼ਨ ਵਿੱਚ ਦੋਕ ਦਿਨ ਨਹੀਂ ਜਾਗੇ ਆ ਇੱਕਦਾਂ ਨੂੰ ਉਹ ਜਰੂਰੀ ਗੱਲ ਇਹ ਆਈ ਪਈ ਹਾਂਜੀ ਤੇ ਦੇ ਵਿੱਚ ਨਾ ਜਿਹੜਾ ਅਮਰੀਕਾ ਦੀ ਇਲੈਕਸ਼ਨ ਹੋਈ ਆ ਇਹਦੇ ਵਿੱਚ ਕਾਫੀ ਬੰਦੇ ਬਹੁਤ ਵੱਡੀ ਪਰਸੈਂਟੇਜ ਐ ਇੱਕ ਰਹਿ ਗਈ ਆ ਵੋਟ ਆ ਪਾਉਣੋਂ ਉਹ ਹੁਣ ਬਹੁਤ ਪਛਤਾਉਂਦੇ ਆ ਜੀ ਹਾਂ ਤੇ ਇਸ ਕਰਕੇ ਮੈਂ ਚਾਹਨਾ ਵਾ ਪੰਜਾਬ ਦੇ ਲੋਕਾਂ ਨੂੰ ਬਾਅਦ ਚ ਪਛਤਾਵੇ ਨਾਲੋਂ ਘਰੇ ਨਾ ਬੈਠੇ ਰਹਿ ਜਾਣ ਹੁਣ ਜਿਹੜੇ ਬੰਦੇ ਅਮਰੀਕਾ 'ਚ ਇਹਨਾਂ ਨੇ ਵੋਟ ਨਹੀਂ ਪਾਈ ਉਹਨਾਂ ਵਾਲਾ ਪਛਤਾਵਾ ਪੰਜਾਬ ਦੇ ਲੋਕਾਂ ਹੁੰਗਾ ਕਿਰਨ ਆਪਾਂ ਬਸ ਇਹੀ ਸਿਨੇਮਾ ਦੇਣਾ ਚਾਹਣਾ ਹੈ ਧੰਨਵਾਦ ਜੀ ਵਪਾਰਕ ਸੰਦੇਸ਼ ਪੰਜਾਬ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਜੀ ਉਹਦੇ ਵਿੱਚ ਇਹ ਹੈ ਕਿ ਸ਼ਿਵਲਾਲ ਡੋਡਾ ਦੇ ਫਾਰਮ ਤੋਂ 20 ਟਰੱਕ ਸ਼ਰਾਬ ਤੇ ਉਹਨਾਂ ਨੇ ਫੜੇ ਨੇ ਤੇ ਪੌਣੇ ਦੋ ਲੱਖ ਲੀਟਰ ਹੈ ਉਹ ਸ਼ਰਾਬ ਜੇ ਲੀਟਰ ਦੇ ਵੀ ਬੋਤਲ ਹੋਈ ਤਾਂ ਪੌਣੇ 2 ਲੱਖ ਬੋਤਲਾਂ ਲੀਟਰ ਤੋਂ ਵੱਧ ਦੀ ਬੋਤਲ ਹੈ ਰਾਮਸਰਾ ਫਾਰਮ ਹਾਊਸ ਰਾਮਸਰਾ ਫਾਰਮ ਹਾਊਸ ਤੇ ਜਿਹੜਾ ਰੇਡ ਹੋਈ ਹੈ ਜਿਹਦੇ ਵਿੱਚ 20 ਟਰੱਕ ਜਿਹੜੇ ਫੜੇ ਤੇ 1 ਲੱਖ 757 ਲੀਟਰ ਜਿਹੜੀ ਸ਼ਰਾਬ ਉਹਦੇ ਵਿੱਚੋਂ ਫੜੀ ਹੈ ਤੇ ਉਹੀ ਫਾਰਮਾਸੀ ਜਿੱਤੇ 27 ਸਾਲਾਂ ਦੇ ਗਲਤ ਯੂਥ ਪੀਮ ਟੈਂਕ ਦਾ ਕਤਲ ਹੋਇਆ ਸੀ ਸ਼ਿਵਲਾਡ ਡੋਡਾ ਜੇਲ੍ਹ ਦੇ ਵਿੱਚ ਸੀ ਆਪਣੇ ਭਤੀਜੇ ਨਾਲ ਤੇ ਉਹਦੇ ਬਾਅਦ ਵੀ ਉਸ ਨੂੰ ਟਿਕਟ ਮਿਲੀ ਹੈ ਬੱਲੇ ਬੱਲੇ ਹੋਈ ਪਈ ਹੈ ਤੇ ਇਸ ਤਰ੍ਹਾਂ ਹੀ ਢੰਡੇ ਦੇ ਵਿੱਚ ਇੱਕ ਗਡਾਊਨ ਦੇ ਵਿੱਚ 1,20,000 ਜਿਹੜੀਆਂ ਬੋਤਲਾਂ ਸ਼ਰਾਬ ਦੀਆਂ ਦੋ ਗਡਾਉਨ ਦੇ ਗਡਾਮਾਂ ਦੇ ਵਿੱਚ ਫੜੀਆਂ ਤੇ ਜਿਹੜੇ ਜਿਹੜੇ 10,000 ਸ਼ਰਾਬ ਦੇ ਬਕਸੇ ਸੀ ਪੁਲਿਸ ਕਿਉਂਕਿ ਐਸਐਸਪੀ ਇੱਥੇ ਪੰਜਾਬ ਪੁਲਿਸ ਦਾ ਬਾਹਰੋਂ ਹੁਣ ਲਿਆਂਦਾ ਹੋਇਆ ਐਸਐਸਪੀ ਕੇਤਨ ਹੈ ਆਈਪੀਐਸ ਅਫੀਸਰ ਹਾ ਤੇ ਨਾਲ ਜਿਹੜੀ ਡੀਸੀਆਈ ਸ਼ਾ ਕਾਲੀਆ ਉਹ ਅਤੇ ਇਹਨਾਂ ਦੋਨਾਂ ਕਰਕੇ ਇਹ ਗੱਲ ਹੋਈ ਜੇ ਕੋਈ ਲੱਗਿਆ ਹੁੰਦਾ ਆਪਣਾ ਐਸਐਸਪੀ ਤਕੀਨਾ ਫਾਸੀ ਦੋਦੇ ਦੇ ਫਾਰਮ ਤੇ ਕਿਨੇ ਜਾਣਾ ਸੀ ਡਿਪਟੀ ਕਮਿਸ਼ਨਰ ਕਮ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਈਸ਼ਾ ਕਾਲੀਆ ਨੇ ਇਹਦੇ ਤੇ ਐਕਸ਼ਨ ਕੀਤਾ ਤੇ ਨਾਲ ਐਸਐਸਪੀ ਕੇਤਨ ਬਾਲੀਰਾਮ ਪਾਟਲ ਇਹ ਪਾਟਲ ਜੀ ਨੇ ਬਹਾਵਾ ਵਾਲਾ ਜਿਹੜੇ ਪੁਲਿਸ ਹੈ ਉਹਦੇ ਨਾਲ ਤੇ ਬੀਐਸਐਫ ਦੀਆਂ ਟੁਕੜੀਆਂ ਨਾਲ ਲਾ ਕੇ ਇੰਟਰਵਿਊ ਹੁੰਦੀ ਖਬਰ ਹੈ ਪੜ ਲਿਓ ਕਿਤੇ ਐ ਨਾ ਕਿਉਂ ਕਿਤੇ ਵੈਸੇ ਹੀ ਗੱਲ ਹੋ ਰਹੀ ਹੈ ਇਹ ਵੀ ਗੱਲ ਬੜੀ ਚੱਲੀ ਆ ਜੀ মিডিਆ ਇੱਥੇ ਝੂਠ ਬਹੁਤ ਬੋਲਦਾ ਸਾਰਾ মিডিਆ ਝੂਠ ਨਹੀਂ ਬੋਲਦਾ ਕਈ ਵਾਰ ਆਪਣਾ ਦਿਮਾਗ ਇਸ ਤਰ੍ਹਾਂ ਖੜ ਜਾਂਦੇ ਨੇ ਵੀ ਸਾਡੀ ਪਾਰਟੀ ਨੂੰ ਕੋਈ ਨਾ ਬੋਲੇ ਯਸ ਬਰਾਬਰ ਦੀ ਗੱਲ ਸਾਰਿਆਂ ਦੀ ਕਰਨੀ ਚਾਹੀਦੀ ਹੈ ਹੁਣੇ ਡੋਡਾ ਦਾ ਫਾਰਮ ਹਾਊਸ ਉਹਦੇ ਵਿੱਚੋਂ ਇੰਨੀਆਂ ਬੋਤਲਾਂ ਡੋਡਾ ਇੱਕ ਟ ਤੇ ਲੜ ਰਿਹਾ ਅਕਾਲੀ ਦਲ ਦੇ ਤੇ ਫਿਰ ਹੁਣ ਇਹਨੂੰ ਮਾਫੀ ਕਿੱਥੋਂ ਦੇ ਸਕਦੇ ਹੁਣ ਇਹ ਕਹਿੰਦੇ ਵੀ ਇਹ ਬਿਲਕੁਲ ਅਨ ਸ਼ਰਾਬ ਹੈ ਇਹ ਡਾਕੂਮੈਂਟਸ ਨਹੀਂ ਮਿਲ ਸਕੇ ਤੇ ਹਸੀਜ਼ ਕੀਤੇ 20 ਦੇ 20 ਟਰੱਕ ਉਹਨੇ 2 ਲੱਖ ਲੀਟਰ ਸ਼ਰਾਬ ਹੈ ਤੇਰ ਦੇਨ ਤੇਰ ਦੇਨ ਕੀ ਦੋ ਅੱਜ ਤਿੰਨ ਸਵੇਰ ਹੋ ਗਈ ਦਿਹਾੜੀ ਕੱਲ ਦੀ ਹੋਈ ਹੈ ਬਸ ਤੇ ਵੋਟਾਂ ਚਾਰ ਨੂੰ ਪੈਜਣੇ ਸੁੱਖ ਦੇ ਨਾਲ ਪੈਜਣ ਇਹ ਹੀ ਗੱਲ ਹੈ ਸਭ ਤੋਂ ਵੱਡੀ ਕਿ ਇੱਕ ਜਿਹੜੀਆਂ ਨਸਤ ਕੋਈ ਨਾ ਕੋਈ ਨਵੀਂ ਵੀਡੀਓ ਨਵੀਂ ਵੀਡੀਓ ਨਵੀਂ ਪੈ ਰਹੀ ਆ ਜਿਹੜੀ ਫੇਸਬੁੱਕ ਹੈ ਉਹ ਬਹੁਤ ਗਰਮ ਤੇ WhatsApp ਬਹੁਤ ਗਰਮ ਹੋ ਗਿਆ ਇਲੈਕਸ਼ਨ ਚਾਰ ਤੋਂ ਬਾਅਦ ਠੰਡਾ ਹੋ ਖੱਲੇ ਕੋਈ ਨਹੀਂ ਲੋਕਾਂ ਨੇ ਵੋਟਾਂ ਦੀ ਲਿਸਟ ਆਨਲਾਈਨ ਹੈ ਇੱਥੋਂ ਬੈਠ ਕੇ ਲੋਕ ਪੰਜਾਬ ਦੇ ਆਪਣਾ ਪਿੰਡ ਲੱਭ ਕੇ ਉੱਥੇ ਵੋਟਰਾਂ ਨੂੰ ਫੋਨ ਕਰ ਰਹੇ ਨੇ ਘੰਟਿਆਂ ਵੱਧੀ ਨਿੱਜੀ ਤੌਰ ਤੇ ਪਿੰਡ ਦੀ ਵੋਟ ਪਿੰਡ ਦੇ ਵਿੱਚੋਂ ਬੰਦੇ ਪਛਾਣੋ ਬੰਦਿਆਂ ਨੂੰ ਫੋਨ ਕਰਕੇ ਕਹੋ ਸਾਰਿਆਂ ਨੇ ਜ਼ੋਰ ਲਾਇਆ ਸਾਰੀਆਂ ਪਾਰਟੀਆਂ ਲੱਗੀਆਂ ਹੋਣਗੀਆਂ ਕੱਲੀ ਇੱਕ ਪਾਰਟੀ ਨਹੀਂ ਸਾਰੀਆਂ ਲੱਗੀਆਂ ਹੋਣਗੀਆਂ ਰਿਜ਼ਲਟ ਨੇ ਜਿਹੜੇ ਉਹ ਹੁਣ ਮਾਰਚ ਤੱਕ ਹਲੇ ਬਹੁਤ ਦਿਨ 4 ਫਰਵਰੀ ਤੋਂ ਲੈ ਕੇ 10 11 ਮਾਰਚ ਤੱਕ ਫੇਰ ਬਹੁਤ ਦਿਨ ਨੇ 37 38 ਬੜੀ ਤੇਜ਼ੀ ਰਹਿਣੀ ਆ ਉਹ ਦਿਨਾਂ 'ਚ ਵੀ ਆ ਹੋ ਗਿਆ ਉਹ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਆਖਰ ਰਿਜ਼ਲਟ ਤੇ ਗੱਲ ਬਣਨੀ ਐ ਜਿਹੜੀ ਦੁਆਬੇ ਦੀ ਆ ਕੁਝ ਸੀਟਾਂ ਨਕੋਦਰ ਦੀ ਸੀਟ ਹੈ ਜਿਹੜੀ ਗੁਰਪ੍ਰਤਾਪ ਸਿੰਘ ਵਡਾਲਾ ਦੀ ਉਹਨਾਂ ਦੀ ਬੜੀ ਉੱਥੇ ਸਾਊਂਡ ਪੋਜੀਸ਼ਨ ਦੱਸੀ ਗਈ ਹੈ ਬਹੁਤ ਉਹਨਾਂ ਇੱਥੋਂ ਗਏ ਹੋਏ ਆ ਤੇ ਉਹਦੇ ਵਿੱਚ ਕਿਉਂਕਿ ਦਾਗ ਨਹੀਂ ਹੈ ਕੋਈ ਭ੍ਰਿਸ਼ਟਾਚਾਰ ਮੁਕਤ ਸੇਵਾ ਸਰ ਵਡਾਲਾ ਨੇ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਮੈਨੂੰ ਇਉਂ ਲੱਗਦਾ ਵੀ ਜਿੱਥੇ ਪਾਰਟੀ ਦੇ ਨਾਲੋਂ ਬੰਦਿਆਂ ਨੂੰ ਤਰਜੀਹ ਇਸ ਵਾਰ ਜਿਹੜੀ ਆ ਦੁਆਬੇ ਦੇ ਮੱਝ ਦੇ ਵਿੱਚੋਂ ਸ਼ਾਇਦ ਮਿਲ ਸਕਦੀ ਹੈ ਹੋ ਸਕਦਾ ਪਾਰਟੀ ਕਰਕੇ ਫਾਇਦਾ ਵੀ ਹੋ ਜਵੇ ਤੇ ਪਾਰਟੀ ਕਰਕੇ ਨੁਕਸਾਨ ਵੀ ਹੋ ਜਵੇ ਜਿਹੜੇ ਸਾਊ ਮਨੇ ਦਰবেশ ਜਿਹੜੇ ਸਿਆਸਤਦਾਨ ਨੇ ਜਿਹੜੇ ਘਰਫੂਕ ਤਮਾਸ਼ਾ ਵੇਖਦੇ ਆ ਉਹਨਾਂ ਕੰਮ ਜਿਹੜਾ ਕਰਨਾ ਤੇ ਕਿਸੇ ਦਾ ਮਿਹਣਾ ਨਾ ਹੋਣਾ ਲੰਬੇ ਸਮੇਂ ਤੱਕ ਇੱਕ ਇੱਕ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੈ ਸੁਰਤਾ ਸਿੰਘ ਢਡਾਲਾ ਉਹਨਾਂ ਨੇ ਵਧੀਆ ਸੇਵਾ ਕੀਤੀ ਆਪਣੇ ਏਰੀਆ ਦੀ ਵੱਡੇ ਵਡਾਲੇ ਉਹਨਾਂ ਤੋਂ ਲੈ ਕੇ ਤੇ ਪਰ ਬਾਕੀ ਵੋਟਾਂ ਹਾਲੇ ਤਕ ਇਹ ਗੱਲ ਨਾ ਕਰੋ ਇਹ ਗੱਲਾਂ ਨਾ ਫਲਾਓ ਪਲੀਜ਼ ਜਿੱਤ ਦੇ ਦਾਅਵੇ ਨਾ ਕਰੋ ਜਿੱਤ ਜਦ ਤੱਕ ਨਹੀਂ ਹੁੰਦੀ ਜਿੱਤ ਨੂੰ ਤੁਸੀਂ ਨਹੀਂ ਕਹਿ ਸਕਦੇ ਔਰ ਕਿਸੇ ਨੂੰ ਦੱਬੋ ਨਾ ਹਰ ਵਿਚਾਰਾਂ ਦਾ ਸਤਕਾਰ ਕਰੋ ਆਪਸ ਵਿੱਚ ਭਾਈਵੰਦੀ ਹੈ ਜਿਹੜੀ ਭਾਈਚਾਰਾ ਇੱਕ ਇੱਕ ਜਗ੍ਹਾ ਤੇ ਰਹਿ ਕੇ ਕਿਸੇ ਨੂੰ ਨਾ ਨਿੰਦੋ ਨਾ ਕਿਸੇ ਨੂੰ ਕੁਝ ਕਹੋ ਆਪਣੀ ਗੱਲ ਕਰੋ ਇਹ ਜਿਹੜਾ ਆਉਣਾ ਦਾ ਕੁਝ ਸਮਾਂ ਇਹ ਵਧੀਆ ਰਹੇ ਉੱਥੇ ਸੁੱਖ ਸ਼ਾਂਤੀ ਰਹੇ ਪੰਜਾਬ ਦੇ ਵਿੱਚ ਇਹੀ ਮਨ ਦੇ ਵਿੱਚ ਹੈ ਬੋਟਾ ਸੁੱਖ ਸਵੀਲੇ ਨਾਲ ਪਹਿ ਜਾਣ ਇਹੀ ਵਧੀਆ ਪ੍ਰੋਗਰਾਮ ਦੇ ਸਪான்ਸਰ ਲੋਕਲ ਜਿਹੜੀਆਂ ਕੁਝ ਖਬਰਾਂ ਜੀ ਸਾਡਾ ਜਿਹੜਾ ਝਗੜੇ ਮੁੰਡਿਆਂ ਦੇ ਚੱਲ ਰਹੇ ਨੇ ਉਹ ਝਗੜਿਆਂ ਨੂੰ ਸੰਭਲਣ ਲਈ ਜਿਹੜੀ ਪੁਲਿਸ ਫੋਰਸ ਹੈ ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਸਰੀ ਦੀ ਐਂਟੀ ਗੈਂਗ ਟਾਸਕ ਫੋਰਸ ਹੈ ਨਾ ਦੀ ਸਰੀ ਦੀ RCMP ਦੀ ਉਹਨਾਂ ਵਿੱਚ ਪੰਜਾਬੀ ਮੁੰਡਿਆਂ ਦੀ ਸ਼ਮੂਲੀਅਤ ਨਾ ਹੋਣਾ ਉਹ ਇੱਕ ਚਿੰਤਾ ਦਾ ਵਿਸ਼ਾ ਵੱਡੀਆਂ ਜਗ੍ਹਾ ਤੇ ਅਸੀਂ شان ਗਿਲਵਰਗੇ ਸੀਨੀਅਰ ਅਫੀਸਰ ਨੇ ਤੇ ਹੋਸ ਸਾਡੇ ਮੁੰਡੇ ਨੇ ਪਰ ਬਹੁਤ ਵੱਡੀ ਇਤਨਾ ਕਿਤੇ ਕਮੀ ਰਹਿ ਜਾਂਦੀ ਹੈ ਜਦ ਕਿਤੇ ਫੇਰ ਬਿਆਨ ਲੈਣੇ ਹੁੰਦੇ ਆ ਤੇ ਫੇਰ ਪੰਜਾਬੀ ਬੋਲਦੇ ਅਫੀਸਰਾਂ ਨੂੰ ਸੱਦੀ ਦੇ ਆ ਉੱਥੇ ਉਸ ਟਾਸਕ ਫੋਰਸ ਤੇ ਫੋਰਸ ਦੇ ਵਿੱਚ ਪੰਜ ਚਾਰ ਪੰਜਾਬੀ ਅਫੀਸਰ ਚਾਹੀਦੇ ਆ ਜਿਨ੍ਹਾਂ ਨੂੰ ਪਤਾ ਹੋਵੇ ਕਿਵੇਂ ਨੌਜਵਾਨ ਮੁੰਡਿਆਂ ਨੂੰ ਸਮਝਾਉਣਾ ਪਿਆਰ ਨਾਲ ਬੈਠਣਾ ਕਰਨਾ ਉਹ ਨਹੀਂ ਦੱਸਦੇ ਜੇ ਤੁਸੀਂ ਵੇਖੋ ਪਿਛਲੇ ਦਿਨੀ ਕਿਸੇ ਇਕੱਠ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਸਿਹਰੀ ਖੜੀ ਸੀ ਸਰਸਕਾਰ ਦੇ ਸਮੇਂ ਉਹ ਕਿੱਥੇ ਮੰਦੇ ਆ ਮੁੰਡੇ ਜਿਹੜੇ ਡਰਦੇ ਉਹ ਕਿੱਥੋਂ ਡਰਦੇ ਆ ਧੱਕੇ ਦੇ ਦੇ ਕੇ ਪੁਲਿਸ ਨੂੰ ਅੰਦਰ ਵੜ ਗਏ ਉਹ ਕਹਿੰਦੇ ਅਸੀਂ ਜਾਣ ਤੁਸੀਂ ਕਿਵੇਂ ਰੋਕੋਗੇ ਪਰ ਜਿਹੜੀ ਭਾਈ ਦੀ ਕੋਈ ਮੁਸ਼ਕਲ ਹੈ ਤੇ ਉਹਦੇ ਵਿੱਚ ਉਹਨਾਂ ਦੇ ਖਿਲਾਫ ਜੂਝਣ ਲਈ ਪੁਲਿਸ ਫੋਰਸ ਬਣਾਈਆ ਉਹਦੇ ਵਿੱਚ ਪੰਜਾਬੀ ਅਫੀਸਰ ਚਾਹੀਦੇ ਚਾਹੀਦੇ ਆ ਇਹ ਕੀ ਗੱਲ ਕੇ ਉਹਦੇ ਵਿੱਚ ਕੋਈ ਹੈ ਹੀ ਨਹੀਂ ਇੱਕ ਇੱਕ ਵਾਢੀ ਹੋਈ ਇਹ ਗੱਲ ਕਿਵੇਂ ਹੋ ਗਈ ਕਿ ਉਹਦੇ ਵਿੱਚ ਕੋਈ ਵੀ ਪੰਜਾਬੀ ਪੁਲਿਸ ਅਫੀਸਰ ਨਹੀਂ ਇਹ ਫਰਕ ਹੈ ਉਹਦੇ ਵਿੱਚ ਪੰਜਾਬੀ ਪੁਲਿਸ ਅਫੀਸਰ ਚਾਹੀਦੇ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਸਪਾਈ ਚਾਰਜ ਵਿੱਚ ਅਸੀਂ ਕਿਵੇਂ ਗੱਲ ਕਰਨੀ ਹੈ ਹਾਲਾਂਕਿ ਚਾਹੇ ਕੋਈ ਫਰਕ ਨਹੀਂ ਇਹ ਨਹੀਂ ਮਤਲਬ ਪੰਜਾਬੀ ਪੰਜਾਬੀ ਨੂੰ ਛੱਡ ਦੂ ਨਹੀਂ ਪਰ ਫਿਰ ਵੀ ਉਹ ਪੰਜਾਬੀ ਮੁੰਡੇ ਕਈ ਵਾਰ ਦਿਲ ਖੋਲਣ ਦਾ ਯਤਨ ਕਰਦੇ ਆ ਆਪਣੇ ਦੇ ਕੋਲ ਸਮਝਾਉਣ ਦਾ ਯਤਨ ਕਰਦੇ ਆ ਅਸਲ ਗੱਲ ਕੀ ਹੈ ਇਹ ਪਤਾ ਲੱਗਿਆ ਕਿ ਜਿਹੜੀ ਸਿਟੀ ਅਫਸਰੀ ਦੇ ਵਿੱਚ ਜਿਹੜੀ ਸਰੀ ਆਰਸੀਐਮਪੀ ਆ ਉਹਦੇ ਵਿੱਚ ਜਿਹੜੀ ਗੈਂਗ ਦੀ ਟਾਸਕ ਫੋਰਸ ਹੈ ਉਹਦੇ ਵਿੱਚ ਪੰਜਾਬੀ ਪੁਲਿਸ ਅਫੀਸਰ ਕੋਈ ਨਹੀਂ ਕਿਤੇ ਨਾ ਕਿਤੇ ਫਿਰ ਇਹ ਜਿਹੜਾ ਮੁਸ਼ਕ ਜਿਹੜਾ ਮਾਰਨਾ ਸ਼ੁਰੂ ਹੋ ਜਾਂਦਾ ਹੈ ਕਿ ਕਾਫਤਾ ਕਿਤੇ ਨਾ ਕਿਤੇ ਚੱਲਦਾ ਹੀ ਰਹਿਣਾ ਮੈਂ ਤਾਂ ਹੀ ਮੁਰਮੁਰ ਕਹਿਣਾ ਕਿ ਆਪਾਂ ਨੂੰ ਤਾਂ ਆਪਣੇ ਹੱਕ ਖੁਦ ਰੱਖਣੇ ਪੈਂਦੇ ਪਰ ਅਲਰਟ ਹੋਣ ਦੀ ਲੋੜ ਹੈ ਰੀਪਰੈਜ਼ੈਂਟੇਟਿਵ ਚਾਹੀਦੇ ਆ ਜਿਹੜੇ ਬੋਲ ਸਕਣ ਜਿਹੜੇ ਗੱਲ ਕਰ ਸਕਣ ਜੇ ਚੁਣੇ ਜਾਣਾ ਚੁਣੇ ਜਾਣ ਤੋਂ ਬਾਅਦ ਪੰਜਾਬ ਵਾਲੀ ਰਾਜਨੀਤੀ ਖੇਲਣੀ ਐ ਉਹਦੇ ਵਿੱਚ ਕੁਛ ਨਹੀਂ ਰੱਖੀਦਾ ਔਰ ਇਹਦੇ ਵਿੱਚ ਹੀ ਅਸੀਂ ਫਸੇ ਆਂ ਕਦੇ ਕਿਸੇ ਨੂੰ ਖੜਾਤਾ ਕਿਸੇ ਨੂੰ ਨਾਮਿਨੇਸ਼ਨ ਜਿਤਾਤਾ ਕਿਸੇ ਨੂੰ ਕਿਤੇ ਲੈ ਗਏ ਕਿਸੇ ਨੂੰ ਵਾਪਸ ਲੈ ਗਏ ਇੱਥੇ ਮੈਂ ਤੇ ਉੱਥੇ ਆਟਵਾਜ ਵੀ ਮੈਂ ਤੇ ਵਿਕਟੋਰੀਆ 'ਚ ਵੀ ਮੈਂ ਸਿਟੀ 'ਚ ਵੀ ਮੈਂ ਮੈਂ ਮੈਂ ਬੱਕਰਿਆਂ ਨੂੰ ਹੁੰਦੀ ਫਿਰਦੀ ਐ ਜਦ ਤੁਸੀਂ ਵਧੀਆ ਰੋਲ ਨਹੀਂ ਕਰਦੇ ਤਾਂ ਗੜਬੜ ਰਿਗਾਰਡਲੈਸਨੀ ਪਾਰਟੀ ਪਾਰਟੀ ਕੋਈ ਵੀ ਹੋਵੇ ਸਭ ਪਾਰਟੀਆਂ ਚ ਇਹ ਜਿਹੜੀ ਗੱਲ ਚੱਲ ਰਹੀ ਹੈ ਐਨਡੀਪੀ ਵਰਗੀ ਪਾਰਟੀ ਦੇ ਵਿੱਚ ਇੱਕ ਐਮਐਲਏ ਆਪਣੀ ਜਗ੍ਹਾ ਸੀਟ ਖਾਲੀ ਕਰਦੀ ਹੈ ਉਹ ਪਬਲਿਕ ਨਹੀਂ ਪਬਲਿਕ ਤੌਰ ਤੇ ਦੱਸਦੀ ਨਹੀਂ ਆਪਣੇ ਖਾਸ ਚਿਹਤਿਆਂ ਦੇ ਵਿੱਚੋਂ ਚੁਣ ਕੇ ਹੌਲੀ ਦੇ ਕੇ ਬੁੱਕਲ ਚ ਗੁੜ ਭੰਦੀ ਹੈ ਇਹ ਸਾਰੇ ਪਾਸੇ ਆ ਪਾਰਟੀਆਂ ਸਟੈਂਡ ਨਹੀਂ ਲੈਂਦੀਆਂ ਉਹਦੋਂ ਉਸ ਨੋਮੀਨੇਸ਼ਨ ਦੇ ਵਿੱਚ ਹੁਣ ਦੇ ਜਿਹੜੇ ਐਮਐਲਏ ਨੇ ਯੂਨੀਅਨ ਵਾਲੇ ਬੰਦੇ ਨੇ ਉਹ ਮਦਦ ਕਰਦੇ ਅੰਦਰ ਲੋਕੇ ਕੋਈ ਗੱਲ ਥੋੜਾ ਚੱਲਦੀ ਹੈ ਇਸਨੂੰ ਜਿਤਾਉਂਦੇ ਜਿਤਾਉਂਦੇ ਆਪਣੀ ਸੀਟ ਨਾ ਖੋਲਿਓ। ਔਰ ਸਭ ਤੋਂ ਵੱਡਾ ਭਾਈਚਾਰੇ ਦੇ ਵਿੱਚ ਇੱਕੋ ਹੀ ਦੁੱਖ ਆ ਉੱਥੇ ਪੰਜਾਬ ਦਾ ਵੀ ਤੇ ਇੱਥੇ ਪਾਰਦਰਸ਼ੀ ਨਹੀਂ ਗੱਲ ਹੁੰਦੀ ਨਾ ਲੋਕ ਦੁਖੀ ਹੋ ਜਾਂਦਾ। ਲਾਲਿੰਦਨ ਲੋਕ ਫੜ ਕੇ ਉੱਪਰ। ਸਦਾ ਮੇਰੇ ਖਿਆਲ ਦੇ ਤੁਸੀਂ ਪਬਲਿਕ ਆਫਿਸ ਦੇ ਵਿੱਚੋਂ ਲੋਕ ਤੁਹਾਨੂੰ 1.5 ਪੌਣੇ 2 ਲੱਖ ਡਾਲਰ ਦਿੰਦੇ ਨੇ ਫਹਿਰੀਆਂ ਤੇ ਹੈਲੀਕਾਪਟਰਾਂ ਦੇ ਚੜ੍ਹ ਨੂੰ ਤੇ ਉੱਥੇ ਅਪਾਰਟਮੈਂਟ ਥੱਲੇ ਅਪਾਰਟਮੈਂਟ ਲੋਕਾਂ ਦੇ ਤੁਸੀਂ ਦੇਣਦਾਰ ਹੋ ਤੇ ਲੋਕਾਂ ਨੂੰ ਖੁੱਲੀ ਗੱਲ ਕਰਨਾ ਤੁਹਾਡਾ ਫਰਜ਼ਾ ਲੋਕ ਲਪੇਟ ਤੋਡੇ ਖਾਤੇ ਚ ਕਿਉਂ ਆਉਂਦਾ ਹੋਰ ਕਿਤੇ ਕਿਉਂ ਨਹੀਂ ਹੁੰਦਾ ਇਹ ਨੋਮੀਨੇਸ਼ਨਲ ਜਿਹੜੀਆਂ ਇਧਰੋਂ ਤੱਕ ਉਧਰ ਕਰ ਇਹ ਸਾਡੇ ਭਾਈਚਾਰੇ ਦੇ ਵਿੱਚ ਹੀ ਕਿਉਂ ਹੁੰਦਾ ਹੋਰ ਕਿਸੇ 'ਚੋਂ ਨਹੀਂ ਹੁੰਦਾ ਸਿਟਿੰਗਾਂ ਐਮਐਲਏ ਚ ਆ ਕੇ ਦੂਜੇ ਸਿਟਿੰਗਾਂ ਐਮਐਲਏ ਨੂੰ ਗਾਹਾਂ ਇਹਨੂੰ ਇੱਥੋਂ ਮਾਰੇ ਕਚਾਲ ਨਾਲ ਦੋ ਸੱਟ ਘਰੋਂ ਜਦ ਤੱਕ ਸੇਖ ਨਹੀਂ ਆਉਂਦਾ ਕੋਈ ਨਹੀਂ ਸੁਣਦਾ ਕਰਨਜੀਤ ਸਿੰਘ ਦੀ ਲਾਈਨ ਨੰਬਰ 4 ਹਾਂਜੀ ਸਤਿਕਾਰ ਜੀ ਗੱਲ ਤਾਂ ਸਤਿਕਾਰ ਜੀ ਬਾਈ ਜੀ ਮੈਂ ਕਿਹਾ ਸਾਬ ਜਿਹੜੇ ਆਪਣੇ ਮੁੰਡਿਆਂ ਦਾ ਪੁਲਿਸ ਚ ਗੈਂਗ ਵਾਲੇ ਪਾਸੇ ਉਹਨਾਂ ਨੂੰ ਗੀਲ ਕਰਨ ਤੇ ਨਾ ਸਾਹਮਣੇ ਆਉਣਾ ਹੂੰ ਇਹ ਹੋ ਸਕਦਾ ਆਪਨਾ ਪ੍ਰੈਫਰ ਕਰਦੇ ਹੋ ਕਿਉਂਕਿ ਸਾਡੇ ਬੰਦੇ ਰਹਿ ਤਾਂ ਭਾਲਦੇ ਜਦੋਂ ਆਪਣਾ ਬੰਦਾ ਦੇਖਦੇ ਆ ਨਾ ਉਹ ਕੋਈ ਵੀ ਸਾਡੇ ਨਾਲ ਰਿਸਪੈਕਟ ਕਰੂਗੇ ਤੇ ਹੋ ਸਕਦਾ ਆਪਣੇ ਪੁਲਿਸ ਵਾਲੇ ਮੁੰਡੇ ਕੋਰਟ ਪਰਸੇ ਜਾ ਕੇ ਨਰਜ਼ ਨਹੀਂ ਜੀ ਅਦਰ ਵੇ ਹੈ ਜੇ ਮੇਰੇ ਜਿਹੜੇ ਸੋਰਸ ਨੇ ਉਹਨੇ ਇਹ ਦੱਸਿਆ ਇਹ ਅਦਰਵੇਅ ਹੈ ਉਹ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਡਿਪਿਊਟ ਨਹੀਂ ਕੀਤਾ ਜਾ ਰਿਹਾ। ਓਕੇ। ਬਾਕੀ ਜੇ ਪੁਲਿਸ ਫੋਰਸ ਪੁਲਿਸ ਹੈੱਡ ਕਰਮਜੀਤ ਸਿੰਘ ਜੀ ਕਹੇ ਤੂੰ ਫਲਾਣੀ ਜਗ੍ਹਾ ਡਿਊਟੀ ਕਰਨੀ ਹੈ ਜਵਾਬ ਨਹੀਂ ਕੋਈ ਦੇ ਸਕਦਾ। ਮੈਂ ਤਾਂ ਕਹਿੰਦਾ ਉਹਦੇ ਵਿੱਚ ਵਧੀਆ ਹੋਣ ਉਹਨਾਂ ਨੂੰ ਵਾਰਾਇਆ ਜਾ ਸਕੇ ਸਮਝਾਇਆ ਜਾ ਸਕੇ ਉਹ ਪੁੱਤਰੋ ਉਹ ਛੋਟੇ ਭਾਈ ਨਾ ਕਰੋ ਇਹਦਾ ਅੰਤ ਮਾੜਾ ਮੰਨ ਜੋ ਮੰਨ ਜੋ ਜੇ ਉਹਨਾਂ चांस दिता ਦਿੱਤਾ बड़ा फर्क है ਹੈ बोली ਬੋਲੀ ਦਾ ਤੇ ਦੂਜੀ ਬੋਲੀ ਦਾ ਆਪਾਂ ਤੇ ਜਾਣਿਆ ਆਪਣੀ ਬੋਲੀ ਚ ਇਹ ਤਾਂ ਗੱਲਾਂ ਨਾਲ-ਨਾਲ ਹੀ ਚੱਲਣੀਆਂ ਨੇ ਕਈ ਵਾਰ ਸਾਨੂੰ ਲੱਗਣ ਲੱਗ ਜਾਂਦਾ ਸੱਸੀ ਬਹੁ ਗੰਟੀ ਚ ਹੋ ਗਏ ਸਾਡੇ 5-7 ਐਮਐਲਏ ਨੇ 5-7 ਸਾਡੇ ਐਮਪੀ ਨੇ ਤੇ ਕੋਈ ਕੰਟਰੀ ਹੋਵੇ ਕੋਈ ਜਗ੍ਹਾ ਹੋਵੇ ਤੁਹਾਨੂੰ ਰੋਲ ਦਿੱਤਾ ਜਾਂਦਾ ਜੇ ਤੁਸੀਂ ਧਿੱਲੀ ਗੱਲ ਕਰੋ ਧਿੱਲੀ ਗੱਲ ਕੀਤੀ ਨਹੀਂ ਤਾਂ ਤੁਸੀਂ ਵਪਾਰ ਸੰਦੇਸ਼ 12 ਵਜੇ ਕੇ 13 ਮਿੰਟ ਹੋਏ ਹੋ ਰਹੇ ਨੇ ਜੀ ਹੋਰ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸੁਣਾਣੀ ਸਰਿੰਦਰਜੀਤ ਕੌਰ ਪੰਨੂ ਮੇਰੇ ਨਾਲ ਨੇ ਲਾਈਨ ਨੰਬਰ 2 ਸੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਸਿਕਾ ਭੈਣ ਜੀ ਜੀ ਜੀ नी ਇੱਕ ਸ਼ਿਕਾਇਤ ਕਰਨੀ ਸੀ ਤੁਹਾਨੂੰ ਕਰੋ ਜੀ ਆ ਜਿਹੜੀ ਬੀਬੀ ਐਡ ਦੇ ਕੇ ਜਾਂਦੀ ਹੈ ਸ਼ਰਾਬਾਂ ਦੇ ਕਰਦੇ ਆ ਜੀ ਗੱਲ ਫੇਰ ਮੈਨੇਜਮੈਂਟ ਨੂੰ ਕਹਨੇ ਆ ਜੀ ਯਾ ਇਹ ਵੀ ਬੈੜੀ ਬੋਲਦੀ ਆ ਬੀਪੀ ਉਹ ਇਸ ਤਰ੍ਹਾਂ ਬੀਬੀਆਂ ਨਹੀਂ ਬੋਲਦਿਆਂ ਜਿਵੇਂ ਇਹ ਐਡ ਹੈ ਉਹਨਾਂ ਨੂੰ ਸੋਹਣੀ ਲੱਗਿਆ ਕਹਿੰਦੇ ਸਾਡੀ ਤਾਂ ਇਹੀ ਚਲਾਓ ਲੱਗਦੀ ਤਾਂ ਪਹਿੜੀ ਵੀ ਆ ਕਹਿੰਦੇ ਸ਼ਰਾਬਾਂ ਦੇ ਨਾਂ ਹੁਣ ਸਾਰੇ ਤਾਂ ਸ਼ਰਾਬਾਂ ਦੇ ਨਾਂ ਨਹੀਂ ਨਾ ਜਾਣਦੇ ਸਾਰੇ ਮਰਦ ਸ਼ਰਾਬ ਨਹੀਂ ਪੀਂਦੇ ਸਾਰਿਆਂ ਨੂੰ ਇੱਕ ਰਸੇ ਵੰਦੀ ਆ ਨਾਲੇ ਬਗਿਆੜੀ ਵਾਂਗੂ ਬੋਲਣਾ ਨਹੀਂ ਵਧੀਆ ਲੱਗਦਾ ਇਸਤਰੀ ਨਰਮ ਬੋਲਦੀ ਵਧੀਆ ਲੱਗਦੀ ਉਹਦੇ ਸ਼ਬਦਾਂ ਦੇ ਵਿੱਚ ਜਿਹਾ ਜਾਦੂ ਇਹੀ ਤਾਂ ਗੋਣਾ ਬੰਦੇ ਤੇ ਉਹਦੇ ਵਿੱਚ ਦਾ ਭੈੜਾ ਲੱਗਦਾ ਇਸਤਰੀ ਦੇ ਤਾਂ ਸ਼ਬਦੇ ਦੋ ਨੇ ਦੋ ਫੁੱਲ ਸੁੱਟੇ ਨਹੀਂ ਬੰਦਾ ਪਾਰਾ ਬਣ ਕੇ ਗਿਆ ਨਹੀਂ ਬਸ ਤੇ ਸ਼ਬਦ ਜਿਹੜੇ ਨੇ ਉਹ ਵਧੀਆ ਚਾਹੀਦੇ ਇਹ ਗੱਲ ਠੀਕ ਹੈ ਬੀਬੀ ਜੀ ਜੈਰੀਬਰਾ 604 722 8899 ਬੈਸਟ ਡੀਲ ਔਨ ਬੈਸਟ ਰੇਟਸ 604 762 8889 jerry broad program the sponsor ਤੁਸੀਂ ਕੁਝ ਵੀ ਰੈ residencial commercial ਕੋਈ ਪ੍ਰੋਪਰਟੀ ਲੈਣੀ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੈਰੀ ਬਰਾਡ ਉਹ ਲਈ ਮੌਰਗੇ ਤੁਹਾਨੂੰ ਲੈ ਕੇ ਦੇਣਗੇ 6047628899 बेस्ट ਡੀਲ ਔਨ ਬੈਸਟ ਰੇਟ ਸਾਰੇ bc ਚ ਨਾਲੇ ਸਵਾਮਾ ਦਿੰਦੇ ਹੈ ਜੈਰੀ ਬਰਾਡ ਜੈਰੀ ਬਰਾੜ ਨਾਲ ਗੱਲਬਾਤ ਕਰਿਓ ਬਹੁਤ ਮਿਲਣਸਾ ਨੌਜਵਾਨ ਹੈ ਤੇ ਮੌਰਗੇਜ ਤੁਹਾਨੂੰ ਲੈ ਕੇ ਦੇਣਗੇ ਖੜੇ ਪੈ ਜਿੱਥੋਂ ਮਰਜੀ ਲੈ ਕੇ ਦੇਣ ਇੱਕ ਵਾਰ ਵਜਨ ਦੇਈਦਾ ਪੂਰਾ ਵੀ ਬਾਈ ਤੇਰੀ ਕਰਨ ਦਾ ਯਾਰ ਪੰਜਾਬੀ ਸਟਾਈਲ ਕਰ ਲਈਦਾ ਕਦੇ-ਕਦੇ ਉਹ ਮੈਂ ਕਿਹਾ ਹੈ ਵੀ ਤੇਰੇ ਕਰਨ ਦਾ ਇਹ ਜੇ ਆਈ ਤੇਰੇ ਕੋਲ ਤਾਂ ਜਾਂ ਪਿੰਡ ਚ ਢਾਲ ਲੈਣ ਜਾਂਦੇ ਹੁੰਦੇ ਨਾ ਚਮਲਾਉਂਦੇ ਸਵੇਰੇ-ਸਵੇਰੇ ਕਿਸੇ ਨੇ ਚਾਹ ਚੂ ਪੀ ਕੇ ਬੈਠਕ ਚ ਬੈਠਾ ਹੋਣਾ ਚਾਰ ਪੰਜ ਨੇ ਜਾ ਵੜਨਾ ਤੇ ਓਕਣੀ ਅੱਦਲੇ بڑے ਪੈਰ ਵਿੱਚ ਤੇ ਕੁਰਮ ਦੀਆਂ ਜੁੱਤੀਆਂ ਗਚਰ ਗਚਰ ਰੇਤਾ ਵੱਡਣਾ ਪੈ ਤੇ ਬੈਠੋ ਬੈਠੋ ਬੈਠੋ ਢਾਹੋ ਮੰਝੇ ਚਾਹ ਬਣਵਾਉਏ ਉਹਨੇ ਫੇਰ ਚਾਹ ਕਣਾ ਰਾਤ ਬਣਿਆ ਬੈਠਾ ਹੁੰਦਾ ਪਲੰਗ ਤੇ ਉਹਦਾ ਸਵੇਰ ਦਾ ਫੁੱਲ ਖਿੜਿਆ ਹੋਇਆ ਸੀ ਚਾਹ ਹੋਰ ਪੀਣ ਨਾਲ ਪਿੰਨੀਆਂ ਛਕਦਿਆਂ ਦੋ ਹਾਂ ਕਿਵੇਂ ਆਈ ਪੰਚਾਇਤ ਫੇਰ ਉਹ ਉਹ ਪੂਪਾ ਬਣ ਜਾਂਦਾ ਵੀ ਪੰਜ ਛੇ ਬੰਦੇ ਆਏ ਨੇ ਉਹਨਾਂ ਢਾਲ ਲੈਣ ਆਏ ਬੜੇ ਭਾਈ ਢਾਲ ਤੇ ਤੋਂ ਵੱਧ ਲੈਣੀਆਂ ਆ ਪਈਆ ਤੇ ਤੋਂ 20000 ਲੈਣਾ ਫਿਰ ਇੱਕ ਉਹਦੇ ਵਿੱਚੋਂ ਜਿਹੜਾ ਰਾਤ ਦਾ ਘਾਉ ਮਾਉ ਜਿਆ ਹੁੰਦਾ ਉਹ ਹੌਲੀ ਹੌਲੀ ਬੋਲਦਾ ਕਹਿੰਦਾ ਪਹਿਲਾਂ ਲੱਸੀ ਮੰਗਾਓ ਲੱਸੀ ਪੀ ਕੇ ਕਰਦੇ ਆਂ ਗੱਲ ਉਹਨੇ ਪਹਿਲਾਂ ਲੱਸੀ ਪੀਣੀ ਫੇਉ ਕਹਣਾ ਮੁੱਛਾਂ ਵਾਛਾ ਉਹਨੇ ਪੂੰਝ ਕੇ ਛਿੱਧੀਆਂ ਲਾ ਕੇ ਲੱਸੀ ਦੀਆਂ ਫਿਰ ਉਹਨੇ ਕਹਣਾ ਵੇ ਤੇ ਢਾਲ ਸੀ ਸਰਦਾਰਾ ਵੱਡੀ ਲੈਣਿਆ ਹੁਣ 5 ਕਿਲੇ ਵਾਲਿਆਂ ਜਾਂ ਸਰਦਾਰ ਬਣਾ ਲੈਣਾ ਉਹਨੇ ਵੀ ਮਾੜਾ ਜਿਹਾ ਹਿੱਲਣਾ ਰੌਲਾ ਪੈਣਾ ਮੰਜੇ ਨੇ ਜਿਹਦੇ ਤੇ ਉਹਨੇ ਬੈਠੇ ਹੋਣਾ ਪਲੰਗ ਉਹਦਾ ਵੀ ਹਿੱਲਣਾ ਲਵੇਰ ਪਈਆ 20000 ਦਿੱ ਤੋਂ ਲੈਣਾ ਟਾਲਦਾ ਦੇਖ ਪੰਚਾਇਤ ਆਇਆ ਭਾਈ ਆਇਆ ਭਾਈਆਂ ਦੀ ਕਾਹੀ ਮੋੜੀ ਦੇ ਨਹੀਂ ਹੁਣ ਚਾਹੇ ਜੀ ਨਾ ਹੁਣ ਜੇਬ ਚ 20000 ਨੂੰ ਹਾਂ ਕਰਾ ਕੇ ਆਉਂਦੇ ਜਾਂ ਪੰਜ ਸੱਤ ਜਾ ਵੜਦੇ ਸੋ ਉਹ ਜ਼ੋਰ ਪਾ ਕੇ ਕਹਦੇ ਜੇ ਰਿਬਾੜ ਵਿੰਡੋਜ਼ 604 597 ਤੇ ਤੁਸੀਂ ਜਾਣਕਾਰੀ ਤਾਂ ਸਦਾ ਅਵਾਰਡ ਵਿਨਿੰਗ ਜੇ ਵਿੰਡੋਜ਼ ਨੇ ਤਾਂ OSSS ਵਿੰਡੋਜ਼ ਨੇ ਬਹੁਤ ਵਧੀਆ ਵਿੰਡੋਜ਼ ਬਣਾਉਂਦੇ ਨੇ ਆਊਟ ਜਿਹੜਾ ਬਾਹਰਲਾ ਤੁਹਾਡਾ ਘਰ ਹੈ ਉਹਦੇ ਘਰ ਦੇ ਨਾਲ ਦਾ ਫਰੇਮ ਬਣਾ ਕੇ ਤੇ ਸਿਰੇ ਤੇ ਛੇ ਲਾ ਕੇ ਜਾਂ ਤਾਂ ਪੂਰਾ ਕੰਨ ਬਲੇਲ ਪੈ ਜਾਏ ਬਾਹਰਲੇ ਪਾਸਿਓਂ osssswindows.com 604 597 5033 ਸੁਨਾਨੀ ਮਹਿੰਦਰ ਕੌਰ ਜੀ ਲਾਈਨ ਨੰਬਰ 4 ਹਲੋ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਲਿਆਉਨੇ ਮੈਂ ਜੋ ਤੁਸੀਂ ਕਿਹਾ ਬਗਿਆ ਬਗਿਆਰੀ ਆ ਗਿਆ ਪੰਜਾਬੀ ਜੱਲਾ ਬਹੁਤ ਵਧੀਆ ਹੁੰਦੀਆਂ ਤੁਹਾਡੀਆਂ ਤੇ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪਾਜੀ ਲਿਆਉਨੇ ਆ ਤੇ ਆਪਣਿਆਂ ਕੀਤਾ ਪ੍ਰੋਗਰਾਮ ਇਹ ਬਹੁਤ ਵਧੀਆ ਗੱਲ ਆ ਆਪਣੇ ਪੰਜਾਬ ਵਿੱਚੋਂ ਜਿਹੜੀ ਨਾ ਦਾਜ ਦੀ ਰਸਮ ਹਟਾਉਣੀ ਚਾਹੀਦੀ ਇਹਨਾਂ ਨੇ ਬਹੁਤ ਕੰਮ ਖਰਾਬ ਕੀਤਾ ਹਾਂਜੀ ਇੱਕ ਕਰਦੇ ਆ ਜੀ ਗੱਲ ਇੱਕ ਅਦੇ ਦਿਨ ਚੇ ਆ ਇੱਥੇ ਵੀ ਪੂਰੀ ਆ ਜੀ ਗੱਲ ਇੱਥੇ ਵੀ ਉਨਾ ਹੀ ਐ ਹਾਂਜੀ ਜਿਹੜੇ ਅਮੀਰ ਐ ਜਾਂਦੇ ਆ ਉਹ ਲੋਕ ਕਿ ਵੀ ਦੇਈ ਜਾਂਦੇ ਉਹਨਾਂ ਨੂੰ ਫੜਨਾ ਚਾਹੀਦਾ ਫੇਰ ਕੇ ਤੇ ਹਟਣਗੇ ਨਹੀਂ ਤੇ ਬੱਚੀਆਂ ਕੀ ਲੈ ਕੇ ਜਾਂਦੀਆਂ ਕੀ ਖਾਂਦੀਆਂ ਬਾਦੂ ਹਨਾ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਤਾਂ ਜੀ ਥੈਂਕ ਕੇ ਥੋੜਾ ਖਾਣ ਲੱਗ ਪਿੰਦੀਆਂ ਜਿਹੜਾ ਦੇ ਕੀਤੀ ਇਹਨਾਂ ਨੇ ਦਾਜਾਂ ਨੇ ਤੇ ਜਿਹੜੇ ਅਮੀਰ ਬੰਦੇ ਆ ਉਹਨਾਂ ਨੇ ਹਾਂਜੀ ਠੀਕ ਆ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਤੇ ਉਹਨੂੰ ਬੇਨਤੀ ਆ ਬੀਬੀਆਂ ਨੂੰ ਫੋਨ ਕਰਿਆ ਕਰੋ ਤੁਸੀਂ ਪਿੱਛੇ ਰਹਿ ਜਾਨੀ ਐ ਫਿਰ ਇੱਕ ਜੇ ਕੋਈ ਕਰ ਲੈਨੇ ਫਿਰ ਦੂਜੀ ਹੀ ਹਾ ਗੱਲ ਤਾਂ ਨਹੀਂ ਫੋਨ ਤੇ ਹੁੰਦੀ ਆ ਸਾਡੀ ਗੱਲ ਐ ਇਹਨੂੰ ਸਿੱਧਿਆ ਕਰਦਾ ਬਸ ਫੋਨ ਕਰਿਆ ਕਰੋ ਕਾਲ ਇਹਨ ਕੱਲ ਪਰਸੋਂ ਸੋਢੀ ਸਾਹਿਬ ਕਹਿੰਦੇ ਵੀ ਤੁਹਾਡੇ ਜਦ ਕੋਈ ਬੋਲ ਬਾਕੀ ਉਹਦੇ ਪਿੱਛੇ ਤਾਂ ਤੁਹਾਡੇ ਕੋਈ ਫੋਨ ਨਾ ਕੋਈ ਹਿੰਦੂ ਵੀਰ ਕਰਦਾ ਨਾ ਕੋਈ ਮੁਸਲਮਾਨ ਵੀਰ ਕਰਦਾ ਦੇਖੋ ਮਰਜੀ ਅਗਲੇ ਦੀ ਆ ਫੋਨ ਕਰਨੀ ਕਰਨਾ ਜਾਂ ਨਾ ਕਰਨਾ ਮੈਂ ਕਰਨਾ ਪ੍ਰੋਗਰਾਮ ਜੇ ਨਹੀਂ ਵੀ ਕੋਈ ਕਰਦਾ 3 ਘੰਟੇ ਮੇਰੇ ਲਈ ਤਾਂ ਘਟਨੇ ਮੈਂ ਤਾਂ ਸੁਣਾਈ ਜਾਣੀ ਕਿਹੜਾ ਲੈਣ ਜਾਣਾ ਮੈਂ ਕਿਤੇ ਕੁਛ ਕਾਲਰ ਐਡ ਕਰ ਦਿੰਦੇ ਆ ਪਰ ਗੱਲ ਸੱਚ ਦੀ ਹੋਣੀ ਹੈ ਫੋਨ ਕਾਲਸ ਜੇ ਮੈਂ ਫੇਕ ਆਪਣੀ ਬਾਵਾ ਕਹਾਉਣ ਦੇ ਲਈ ਮੈਂ ਕੀ ਕਰਾਉਣਾ ਉਹ ਜੀਆਂ ਫੋਨ ਕਾਲਸ ਤੋਂ ਕੰਟੈਂਟਸ ਚਾਹੀਦੇ ਆ ਗੱਲ ਠੀਕ ਚਾਹੀਦੀ ਆ ਤੇ ਸਿੱਧੀ ਗੱਲ ਚਾਹੀਦੀ ਫਿਰ ਫੋਨ ਕੀਤਿਆਂ ਦਾ ਫਾਇਦਾ ਸੋ ਸੁਣ ਕੇ ਵੀ ਸਵਾਦ ਆਉਂਦਾ ਸਾਰੇ ਫੋਨ ਨਹੀਂ ਕਰ ਸਕਦੇ ਸਾਰੇ ਸੁਣਦੇ ਆ ਜਿਹਦੇ ਕੋਲ ਵਿਦਵਤਾ ਉਹ ਫੋਨ ਕਰ ਲੈਣ ਤੇ ਫੋਨ ਕਰਕੇ ਕਾਲਰ ਜਾਂ ਤੁਸੀਂ ਫੋਨ ਕਰਦੇ ਹੋ ਇਹ ਵੀ ਗੱਲ ਏਅਰ ਤੇ ਕਰਨੀ ਹਰ ਇੱਕ ਦੇ ਵਸ ਗੱਲ ਨਹੀਂ ਉਹ ਕਹਿੰਦਾ ਯਾਰ ਕੱਚੀ ਗੱਲ ਨਾ ਹੋ ਜਾ ਕਿਤੇ ਸਿੰਘ ਸਾਹਿਬ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ ਹੀ ਦੇ ਦੇਹਜ ਪ੍ਰਸਾਦ ਤੇ ਪ੍ਰੋਗਰਾਮ ਤਾਂ ਆਉਣਾ ਚਾਹੀਦਾ ਜੀ ਬਹੁਤ ਜ਼ਰੂਰੀ ਆ ਤੇ ਮੈਂ ਆ ਉਹਦਾ ਦੱਸਣਾ ਚਾਹੁੰਦਾ ਹਾਂ ਨਿੱਜੀ ਪਾਪੂ ਨੇ ਵੱਡੀਆਂ ਦੋ ਭੈਣਾਂ ਵੇਈਆਂ ਸੀਗੀਆਂ ਚੁੰਨੀ ਚੜਾ ਗਈ ਤੇ ਦੋਨੇ ਬਹੁਤ ਖੋਸ਼ ਬਾਖਦੀਆਂ ਤੇ ਪਰਿਵਾਰ ਵੀ ਵਧੀਆ ਸੀਗੇ ਆਪਣਾ ਵੀ ਉਸ ਬਾਅਦ ਐਂ ਹੋਇਆ ਉਹ ਬਾਅਦ ਮੇਰੇ ਛੋਟਾ ਭਰਾ ਤੇ ਭੈਣ ਉਹ ਵੀ ਐਂ ਹੀ ਵਿਆਹੀ ਐ ਤੇ ਮੈਨੂੰ ਨਹੀਂ ਲੱਗਦਾ ਜੀ ਜਿਹੜੀਆਂ ਚੀਜ਼ਾਂ ਅਗਲੇ ਦੇ ਘਰੇ ਹੁੰਦੀਆਂ ਵਾਪਾਂ ਉਹ ਕੱਪ ਦੇਣੀ ਵਾ ਚੱਕ ਕੇ ਉਹ ਦੇਈ ਜਾਂਦੇ ਆ ਉਹ ਲਈ ਆਉਂਦੇ ਆ ਜਾਂਦਾ ਕੰਮ ਨੇ ਕਿਨੇ ਕਿ ਹੁੰਦੇ ਆਪਾਂ ਮੈਨੂੰ ਯਾਦ ਆਈ ਪੰਜਵੀਂ ਛੇਵੀਂ ਤੋਂ ਬਾਅਦ ਇਹ ਲੇਖ ਲੇਖ ਲਿਖਦੇ ਹੁੰਦੇ ਹੀ ਆਪਾਂ ਬਈ ਆਪਾਂ ਦੇਖ ਪੜਾ ਸਾਡਾ ਦੇਖ ਲਿਖੋ ਤੇ ਉਹ ਮੈਨੂੰ ਲੱਗਦਾ ਸੋਮਵਾਰ ਨੂੰ ਵਿੱਢਦੇ ਆਂਗਾ ਸਿੰਘ ਹਾਂਜੀ ਸ੍ਰੀ ਗੱਲਪਾ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਬਹੁਤ ਵਧੀਆ ਜੀ ਜਦੋਂ ਤੁਸੀਂ ਨਾ ਸਾਨੂੰ ਸਾਰੇ ਪੰਜਾਬ ਦੀ ਆਵਾਜ਼ ਆ ਗਈ ਸਨ ਬਾਬਾ ਜੀ ਧੰਨਵਾਦ ਤੁਹਾਡਾ ਇਹਨਾਂ ਮਾਨ ਦੇ ਬੋਲ ਇਹ ਹਨ ਪ੍ਰਾਣੀਆਂ ਜਦਾਂ ਜਿੱਥੇ ਆ ਜਾਂਦੀਆਂ ਤੇ ਗੱਲ ਇਹ ਆ ਭਾਜੀ ਦਾਜ ਦਾ ਕੰਨੇ ਰਹਿ ਗਏ ਆ ਵੀ ਮੇਰੇ ਭਾਲ ਅਗਲੇ ਮਹੀਨੇ ਉਹ ਕਹਿ ਚੁੱਕਾ ਅਸੀਂ ਕੁਝ ਨਹੀਂ ਲੈਣਾ ਦੇਣਾ ਤੇ ਕੁੜੀ ਵਾਲੇ ਕਹਿੰਦੇ ਬੰਦਾ ਵੀ 150 ਆਓ ਦੇਣਾ ਵੀ ਇਹੀ ਸਾਲਾ ਕੁਝ ਆ ਇਹ ਨੂੰ ਕਹਿੰਦੇ ਦਾਜ ਮੰਗਦੇ ਜਿਹੜੇ ਨਹੀਂ ਉਹ ਕਹਿੰਦੇ ਵੀ ਨਹੀਂ ਲੈਣਾ ਧੱਕੇ ਨਾਲ ਕਹਿੰਦੇ ਇਹ ਸਾਡੀ ਕੁੜੀ ਦੀ ਆ ਕੁੜੀ ਹੈ ਨਹੀਂ ਗੀ ਲੋਕਾਂ ਕਹਿਣਾ ਇਹਨੂੰ ਦਿੱਤਾ ਹੀ ਆ ਧੰਵਾਜੀ ਸੋਹਨਾਮ ਸਿੰਘ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਸਿੱਖ ਨੇ ਹੁੰਦੀ ਤੁਹਾਡੇ ਜਿਹੜੇ ਟੋਟਕੇ ਤੁਸੀਂ ਸੁਣਾਉਂਦੇ ਹੋ ਨਾ ਇਹ ਇਹ ਬੰਦੇ ਹੁੰਦੇ ਆ ਤੁਹਾਡੇ ਕੋਲ ਬੈਠਣੋਂ ਦਿਲ ਕਰਦਾ ਤੋਪੇ ਸ਼ਾਮੇ ਬਿਪੜਾਂ ਦੀ ਸ਼ਾਮੇ ਥੜੇ ਰੋਤੇ ਸੋ ਚਲੋ ਖੈਰ ਇਹ ਜਿਹੜੀ ਦਾਜ ਆ ਨਾ ਗਿੱਲਾ ਸਾਹਿਬ ਅਸਲ ਸੋਚ ਇਹ ਹੈਗੀ ਆ ਵੀ ਦਾਜ ਬੰਦ ਹੋ ਸਕਦਾ ਆ ਜੇ ਜਿਹੜੀਆਂ ਸੋਹਰਾ ਪਰਿਵਾਰ ਹੈਗਾ ਜੇ ਉਹਨੂੰ ਉੱਤੀ ਸਮਝਣਾ ਫਰਕ ਹੈਗਾ ਅੱਜ ਹੁਣ ਵੈਸੇ ਤਾਂ ਲੋਕ ਸੁਧਰ ਗਏ ਆ ਪਰ ਪੁਰਾਣੇ ਸਮੇਂ 'ਚ ਜਿਹੜਾ ਬਾਪ ਸੀ ਨਾ ਦੇਖੋ ਦਾਜ ਕੀ ਦਿੰਦਾ ਸੀਗਾ ਭਾਂਡੇ ਵਗੈਰਾ ਬਿਸਤਰੇ ਤੇ ਪਹਲਾਂਗਾ ਆ ਉਹ ਵਿਚਾਰੀ ਜਦੋਂ ਉਹਦੇ ਘਰ ਤੋਂ ਤੇ ਸਹੁਰੇ ਤੋਂ ਕੋਈ ਉਹਦੇ ਘਰ ਵਾਲਾ ਉਹਦੇ ਭਰਾ ਆਂਦਾ ਸੀ ਜਾਂ ਕੋਈ ਹੋਰ ਉਹ ਸਹੁਰੇ ਤੋਂ ਉਹਦੇ ਮਾਪਿਆਂ ਤੋਂ ਕੋਈ ਮੁੰਡਾ ਆਂਦਾ ਭਰਾ ਵਗੈਰਾ ਉਹ ਆਪਣੇ ਹੀ ਕੱਪੜੇ ਕੱਢ ਕੇ ਵਿਛਾ ਲਈ ਹੁੰਦੀ ਤੇ ਆਪਣੇ ਹੀ ਭਾਂਡੇ ਜਦੋਂ ਜੁਦੀ ਹੁੰਦੀ ਤੇ ਆਪਣੇ ਹੀ ਭਾਂਡੇ ਲੈ ਜਾਂਦੀ ਆ ਵੈਸੇ ਸਾਨੂੰ ਨਾ ਅਸੀਂ ਅਸੀਂ ਧੀਆ ਕਹਿ ਤਾਂ ਦਿੰਨੇ ਪਰ ਬਣਾਦੇ ਨਹੀਂ ਜੇ ਅਸੀਂ ਧੀਆ ਬਣਾ ਲਈਏ ਤੇ ਦਾਜ ਦੀ ਜ਼ਰੂਰਤੇ ਨਹੀਂ ਪੈਣੀ ਹੈਗੀ ਨੋਟ ਕਰ ਲਿਓ ਜੇ ਸੱਸ ਆਪਣੀ ਨੋਨ ਨੂੰ ਧੀ ਸਮਝੇ ਬਈ ਮੇਰੀ ਧੀ ਮੇਰੀ ਮਾਲਕਣਾਂ ਜਾਇਦਾਦ ਦੀ ਮਾਲਕਣੇ ਆ ਗਈ ਆ ਇਹ ਲੜਾਈ ਝਗੜੇ ਹੋਏ ਨਹੀਂ ਸਕਦੇ ਨਾ ਬਾਪ ਆਪਣੀ ਧੀ ਨੂੰ ਦਾਜ ਦੇਵੇ ਕਿਉਂਕਿ ਉਹਨੂੰ ਪਤਾ ਤੇ ਮੇਰੀ ਧੀ ਮੇਰੇ ਕੋਲ ਉੱਠ ਕੇ ਦੂਸਰੇ ਆਪਣੇ ਘਰ ਉਹ ਚਲ ਜਾਈ ਚਲ ਗਈ ਆਪਣੇ ਦੂਸਰੇ ਬਾਪ ਕੋ ਚਲ ਗਈ ਝਗੜਾ ਉਦੋਂ ਸ਼ੁਰੂ ਹੁੰਦਾ ਜਦੋਂ ਅਸੀਂ ਨੋਹ ਸਮਝਦੇ ਆ ਨੋਹ ਦੇਖ ਕੇ ਹੀ ਉਹਨੂੰ ਮਾਰੀਏ ਵਿਚਾਰੀ ਰਸੋਈ ਚ ਖੜਾਕਾ ਕਰਦੀ ਆ ਤੇ ਸਾਰਾ ਢੱਬਰ ਕੰਨ ਚੱਕ ਲੈਂਦਾ ਪਤਾ ਨਹੀਂ ਕਿ ਉੱਥੇ ਸੋ ਸਾਨੂੰ ਧੀ ਬਣਾਣੀ ਪਊਗੀ ਧੀ ਵੀ ਸਾਨੂੰ ਕੁਝ ਨਾ ਕੁਝ ਕਹਿ ਜਾਂਦੀ ਉਹ ਵੀ ਜਰ ਲੈਣੇ ਅਸੀਂ ਸੋ ਸਾਨੂੰ ਨੋਹ ਨੂੰ ਧੀ ਬਣਾਣਾ ਪਊਗਾ ਤਾਂ ਜਾ ਕੇ ਦਾਜ ਹੀ ਮੁਕਣਾ ਹੈ ਸਵਾਗਤ ਹੈ ਸਭ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਧੰਵਾਦ ਆ ਸ੍ਰੀ ਹਰਨਾਮ ਸਿੰਘ ਜੀ ਸ੍ਰੀ ਗੁਰਦੇਵ ਸਿੰਘ ਜੀ ਲਾਈਨ ਅਪ ਗਿਲਸਾ ਸਸਟੀ ਕਾਲੀ ਦਾ ਸੀਗਾ ਰਕਰ ਸਾਹਿਬ ਜਿਲਸਾ ਪਹਿਲਾਂ ਜਿਹੜਿਆ ਤੁਹਾਡੇ ਕਾਲ ਜਿੰਨੇ ਵੀ ਆਂਦੇ ਆ ਨਾ ਪਹਿਲਾਂ ਤੁਹਾਡੀ ਪ੍ਰਸ਼ੰਸਾ ਕਰਦੇ ਤੁਸੀਂ ਹੈ ਹੋ ਇਸ ਲਾਈਕ ਕਰਦੇ ਆ ਤੁਹਾਡਾ ਜਿਹੜਾ ਅੰਦਾਜ਼ੇ ਪਿਆ ਗੱਲਾਂ ਉਹੀ ਹੈ ਤੁਹਾਡਾ ਅੰਦਾਜ਼ੇ ਨਾਲ ਆ ਜੀ ਸਰ ਦੂਜੀ ਗੱਲ ਮੈਂ ਜਿਲਸਾ ਵੀ ਕੰਮ ਜਾਣੂ ਜੀ ਸਾਡਾ ਚੜਦਾ ਪੰਜਾਬ ਤਾਂ ਲੰਦਾ ਪੰਜਾਬ ਦੋਏ ਪੰਜਾਬ ਹੈ ਪਰ ਸਾਡੀ ਪੰਜਾਬੀ ਪਤਾ ਨਹੀਂ ਕਿਉਂ ਸ਼ੁੰਗੜਦੀ ਜਾ ਰਹੀ ਹੈ ਪੰਜਾਬ ਦੇ ਲੋਕ ਜਿਹੜੇ ਸਿੱਖ ਨਹੀਂ ਆ ਉਹ ਆਪਣੇ ਆਪ ਨੂੰ ਉਹਨਾਂ ਦੀ ਉਹ ਆਪਣੀ ਬੋਲੀ ਨਹੀਂ ਸਮਝਦੇ ਹੈ ਪਾਕਿਸਤਾਨ ਤੇ ਤੁਹਾਡੇ ਕਿਨੂਆ ਦੀ ਇੱਕ ਐ ਰੰਦੀ ਐ ਉਹ ਸਰਗੋਧ ਵਾਲੇ ਦਾ ਖਾਸ ਪੰਜਾਬ ਦਾ ਅਨੁੱਖੀ ਰੰਗ ਇਸ ਜਹਾਜ਼ ਦੇ ਵਿੱਚ ਦਾ ਉਹ ਹੁਣ ਵੀ ਉੱਥੇ ਪੰਜਾਬੀ ਬੋਲੀ ਜਾਂਦੀ ਐ ਪਰ ਉਹ ਮਤਲਬ ਐ ਦੇਖੋ ਉردوਵਾਰ ਹਿੰਦੀ ਮਿਲ ਗਈ ਸਾਨੂੰ ਬਾਹਰ ਗਾਦੇ ਤਾਂ ਸਿੱਖਾਂ ਨੂੰ ਮੇਰਾ ਕਹਿਣ ਤੋਂ ਪਾ ਰਿਹਾ ਪੰਜਾਬੀ ਦਾ ਪੰਜਾਬੀ ਰੀ ਚਾਹੇ ਸਾਡਾ ਧਰਮ ਕੋਈ ਵੀ ਹੋਵੇ ਸੋ ਸਾਨੂੰ ਇਸੀ ਤੇ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਅਸੀਂ ਤਾਂ ਆਪਣੀ ਐਡਾ ਵੀ ਉਸ ਬੋਲਦੇ ਤੇ ਇਹ ਸਾਨੂੰ ਪਤਾ ਹੁੰਦਾ ਕਿ ਅਸੀਂ ਸਭ ਪੰਜਾਬੀ ਬੋਲਦੇ ਪੰਜਾਬੀ ਐ ਪਰ ਉਹ ਉردو ਵਾਲੇ ਆ ਉਦੋਂ ਉਦੋਂ ਸੋਈਦੇ ਬਿਲਕੁਲ ਹਿੰਦੀ ਨਾਲ ਮਿਲਦੀ ਜੁਲਦੀ ਜੇ ਉਹ ਬੋਲ ਸਕਦੇ ਤੁਸੀਂ ਪੰਜਾਬੀ ਆਪਸ ਵਿੱਚ ਕਿਉਂ ਨਹੀਂ ਗੋਪਰਾ ਇਕੱਠੇ ਹੋ ਕੇ ਆਪਸ ਵਿੱਚ ਗੱਲਬਾਤ ਕਰ ਸਕਦੇ ਪੰਜਾਬੀ ਲੈਂਗਵੇਜ ਨੂੰ ਤੁਹਾਡਾ ਬਹੁਤ ਠੀਕ ਹੈ ਜੀ ਮੈਂ ਕਰਦਾ ਜੀ ਅਸਲ ਇਹ ਜਿਹੜੀਆਂ ਐਡਸ ਨੇ ਇਹ ਮੇਰੇ ਖਿਆਲ ਪਾਕਿਸਤਾਨ ਤੋਂ ਹੀ ਬਣਵਾ ਕੇ ਭੇਜਦੇ ਆ ਇਹ ਜ਼ਿਆਦਾਤਰ ਫਰੂਟੀ ਕੈਨਾਂ ਵਾਲੇ ਸਰਗੋਦੇ ਦੇ ਜੇ ਆਉਣ ਸਰਗੋਤ ਦੇ ਕਿੰਨੂ ਕਹਿ ਜਾਣ ਹੁਣ ਉਹ ਥੋੜੀ ਜੀ ਕਿਉਂਕਿ ਖਰੀਦਣ ਵਾਲੇ ਪੰਜਾਬੀ ਨੇ ਮੋਸਟਲੀ ਤੇ ਸੁਣਨ ਵਾਲੇ ਪੰਜਾਬੀ ਨੇ ਐਡ ਦੇ ਵਿੱਚ ਰਸ ਹੋਵੇ ਤੇ ਐਡ ਵਧੀਆ ਹੋਵੇ ਤੇ ਜਿਹੜਾ ਸਨੇਹਾ ਮੈਂ ਤੁਹਾਨੂੰ ਦੱਸਾਂ ਕਿ ਸਾਰੇ ਖਰਚੇ ਜਿਹੜੇ ਐਡਵਰਟਾਈਜ਼ਮੈਂਟ ਦੇ ਸਿਰ ਤੇ ਚੱਲਦੇ ਆ ਕਿੰਨੇ ਬੰਦੇ ਸੁਣਦੇ ਆ ਜਿਨ੍ਹਾਂ ਨੂੰ ਫ੍ਰੀ ਬਿਲਕੁਲ ਮੁਫਤ ਜਿਹੜਾ ਫਰਨਿਸ਼ ਕਰਦੇ ਆ ਘਰੇ ਬੈਠਿਆਂ ਨੂੰ ਕੱਲੀ-ਕੱਲੀ ਚੀਜ਼ ਦੁਨੀਆ ਦੀ ਸਾਰੇ ਰੇਡੀਓ ਤੋਂ ਸਾਰੇ ਹੋਸਟ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਫਾਈਨੇਸਟ ਬਿਲਕੁਲ ਅਲੀਟ ਮੀ ਅਲੀਟ ਮੀ ਫਾਈਨੇਸਟ ਵਾਲੀ ਜਿਹੜੀ ਕਹਾਣੀ ਹੈ ਉਹ ਠੀਕ ਹੈ ਸਭ ਤੋਂ ਬਿਲਕੁਲ ਸੁਈ ਦੇ ਨੱਕੇ થી ਗੱਲਾਂ ਕੱਢ ਕੇ ਕੋਈ ਸ਼ਬਦ ਗਲਤ ਬੋਲਦੀ ਹੈ ਤੁਸੀਂ ਕਰੈਕਟ ਕਰਦੇ ਮੈਂ ਕਮਿਊਨਿਟੀ ਲਈ ਫਰਟਾਈਲ ਸ਼ਬਦ ਵਰਤ ਗਿਆ ਫਰਟਾਈਲ ਹੈ ਜਿਹੜਾ ਉਪਜਾਊ ਜ਼ਮੀਨ ਲਈ ਵਰਤਿਆ ਜਾਂਦਾ ਸੋਹਾਰ ਜਟਾਣਾ ਨੇ ਕਰੈਕਟ ਕੀਤਾ ਕਹਿੰਦੇ ਪ੍ਰੋਸਪਰ ਸ਼ਬਦ ਹੈ ਔਰ ਸਿਰ ਮੱਥੇ ਜਿਹੜੇ ਕਹੀਦਾ ਬਿਲਕੁਲ ਠੀਕ ਹੈ ਖੁਸ਼ਹਾਲ ਜਿਹੜਾ ਉਹ ਪਚਾਰਾ ਹੋ ਸਕਦਾ ਜ਼ਮੀਨ ਉਪਜਾਊ ਆ ਫਰਟਾਈਲ ਜਿਹੜੀ ਸ਼ਬਦ ਹੈ ਉਹ ਧਰਤੀ ਲਈ ਜਦ ਤੁਸੀਂ ਕਰੈਕਟ ਕਰਦੇ ਹੋ ਉਸੇ ਸਮੇਂ ਐਕਸੈਪਟ ਕਰਦੇ ਹੀ ਕੀਰੀਦ ਤਾਂ ਇਹ ਵਧੀਆ ਜਿਹੜੀ ਜਾਣਕਾਰੀ ਉਹਨਾਂ ਦਾ ਵੀ ਕੋਈ ਨਿੰਦਣ ਦਾ ਨਹੀਂ ਉਹ ਇਹ ਸੀ ਵੀ ਸੁਣਣ ਵਾਲੇ ਬੰਦੇ ਦੇ ਕੋਲ ਵਧੀਆ ਚੀਜ਼ ਜਾਵੇ ਅਗਲੇ ਹਿੱਸੇ ਦੇ ਵਿੱਚ ਉੱਗੇ ਵੈਦ ਜਿਨ੍ਹਾਂ ਨੂੰ ਰੂਬਲ ਕਰਕੇ ਜਾਣਦੇ ਹੋ ਉਹਨਾਂ ਦੇ ਉਹ ਦਾ ਨਾਮ ਹੈ ਸਵਾਰ ਗਿਲ ਨੇ ਉਹ ਵੈਦ ਰੂਬਨ ਉਹਣੀ ਬਹੁਤ ਵਧੀਆ ਗੱਲਾਂ ਕਰਦੇ ਨੇ ਤੇ ਬਹੁਤ ਆਯੁਰਵੇਦ ਕੀ ਹੈ ਇਹ ਜੜੀ ਬੂਟੀਆਂ ਕੀ ਨੇ ਨਬਜ਼ ਕਿਵੇਂ ਵੇਖੀਦੀ ਆ ਕਿਹੜੀਆਂ ਚੀਜ਼ਾਂ ਕਿਹੜੀਆਂ ਮੁਸ਼ਕਲਾਂ ਅੱਜ ਦੇ ਦਿਨ 'ਚ ਜੜੀਆਂ ਬੂਟੀਆਂ ਦੀ ਮਹੱਤਤਾ ਕੀ ਹੈ ਦੁਨੀਆ ਕਿਉਂ ਧਾਕੇ ਆਯੁਰਵੇਦ ਵੱਲ ਨੂੰ ਜਾ ਰਹੀ ਹੈ ਟ੍ਰੈਡੀਸ਼ਨਲ ਜਿਹੜੀਆਂ ਚੀਜ਼ਾਂ ਸੀ ਉਹਨਾਂ ਵੱਲ ਨੂੰ ਕਿਉਂ ਜਾ ਰਹੀ ਹੈ ਕਿਉਂ ਬੰਦੇ ਪੰਜ ਪੰਜ ਚਾਰ ਚਾਰ ਦਵਾਈਆਂ ਲੈਣ ਤੇ ਚਾਰ ਖਰਾਕਾਂ ਲੈਣ ਤੇ ਬੰਦੇ ਵੱੜਿਆਂ ਦੇ ਰੋਗ ਕਿਵੇਂ ਟੁੱਟ ਰਹੇ ਨੇ ਵੈਦ ਗੱਲ ਕਰਨਗੇ ਵਪਾਰਕ ਸੰਦੇਸ਼ ਲੈ ਦੀ ਮੈਂ ਮਹਿਮਾਨ ਮੇਰੇ ਕੋਲ ਪਹੁੰਚ ਚੁੱਕੇ ਨੇ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਜਸਵੀਰ ਸਿੰਘ ਗਰੇਵਾਲ ਜੀ ਸੰਖੇਪ ਕੀ ਕਹਿਣਾ ਚਾਹੁੰਦੇ ਧੰਨਵਾਦ ਸਰਦਾਰ ਜੀ ਮੈਂ ਤਾਂ ਇਹ ਕਹਿਣਾ ਸੀ ਵੀ ਜਿਹੜੀ ਤੁਸੀਂ ਬੇਟੀਆਂ ਕਰਦੇ ਹੋ ਇਹਦੇ ਵਿੱਚ ਮਨੁੱਖ ਦੀ ਸਿਰਤੀ ਨੂੰ ਬਾਰ ਦਾ ਉਪਰਾਲਾ ਹੈ ਵਿਣੁੱਖ ਦਾ ਸੁਭਾਅ ਕਿ ਉਹ ਪੜ੍ਹ ਕੇ ਵੇਖ ਕੇ ਬਦਲਣ ਤੋਂ ਕਿੰਨੀ ਖਤਰੋਂਦਾ ਜੇ ਅਸੀਂ ਬਾਰ ਬਾਰ ਕਿਸੇ ਚੀਜ਼ ਦੇ ਗੁਣਾਂ ਨੂੰ ਗ੍ਰਹਿਣ ਕਰਨ ਤੋਂ ਬਾਅਦ ਸਾਡੇ ਚ ਇੱਕ ਛਾਪ ਪੈਦਾ ਹੁੰਦਾ ਕਿ ਅਸੀਂ ਇਹਨਾਂ ਗੁਣਾਂ ਨੂੰ ਕਿਤੇ ਨਾ ਕਿਤੇ ਧਾਰਨ ਕਰੀਏ ਉਹ ਪਹਿਲੂ ਤੋਂ ਤੁਸੀਂ ਇਹਨਾਂ ਵਾਰ-ਵਾਰ ਕਰਦੇ ਹੋ ਮੈਨੂੰ ਲੱਗਦਾ ਤੁਹਾਨੂੰ ਮਹੀਨੇ 'ਚ ਇੱਕ ਵਾਰ ਇਸ ਸਿਰਤੀ ਨੂੰ ਸਾਡੀਆਂ ਜਿਹੜੀਆਂ ਭਾਵਨਾਵਾਂ ਦੇ ਉੱਤੇ ਟੰਬਣ ਦੀ ਖਾਤਰ ਲਾਜ਼ਮਾਰ ਵਿਸ਼ੇਸ਼ਤਾਈ ਕੋਈ ਖਾਸ ਵਿਅਕਤੀ ਜਿਹੜਾ ਸਾਡੇ ਜਿਹੜੇ ਅੰਤਸ਼ਕਰਣ ਦੀ ਕਿਰਿਆ ਕਰਦੀ ਹੈ ਜਿਹਨੂੰ ਅਸੀਂ ਸਾਈਕੋਲੋਜੀ ਕਹ ਦਿੰਨੇ ਆ ਸਾਈਕੋਲੋਜੀ ਕੰਮ ਕਿਵੇਂ ਕਰਦੀ ਹੈ ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਫੀਮੇਲ ਦੋਪਟੀਆਂ ਨੇ ਉਨ੍ਹਾਂ ਦੀ ਪਰਵਰਿਸ਼ ਵਿੱਚ ਅਸੀਂ ਜਾਣਣ ਜਾਣੇ ਕੋਸ਼ਿਸ਼ ਜਿਵੇਂ ਕਰਦੇ ਹਾਂ ਇਹ ਸਾਈਕੋਲੋਜੀ ਦਾ ਹਿੱਸਾ ਹੈ ਜੇ ਤੁਸੀਂ ਕਦੀ ਵਾਰ ਇਦਾਂ ਦੇ ਵਿਅਕਤੀ ਨੂੰ ਜਾਂ ਕਿਸੇ ਬੀਬੀ ਨੂੰ ਲਿਆ ਕੇ ਇਹਦੇ ਤੇ ਚਰਨਾ ਪਾਓ ਸਾਡੀਆਂ ਸਿਰਤੀਆਂ ਦੇ ਵਿੱਚ ਤਬਦੀਲੀ ਦੇ ਚਾਂਸਸ ਜਿਹੜੇ ਨੇ ਉਹ ਵੱਧ ਸਕਦੇ ਨੇ ਇਸ ਬਰਾਲੇ ਲਈ ਤੁਹਾਡਾ ਧੰਨਵਾਦ ਮਿਹਰਬਾਨੀ ਧੰਨਵਾਦ ਸਾਡੀ ਸਿਹਤ ਬਾਰੇ ਇੱਕ ਬੇਨਤੀ ਕੀਤੀ ਹੈ ਬਹੁਤ ਇੱਕ ਵੱਡਾ ਨੌਂ ਸਰੀ ਦੇ ਵਿੱਚ ਉਨਾ ਨੂ ਮੈਂ ਸੱਦਿਆ ਹੈ ਕਿ ਦੱਸਿਆ ਜਾਵੇ ਕਿ ਆਯੁਰਵੇਦ ਕੀ ਹੈ ਇਲਾਜ ਕੀਨੇ ਬਿਮਾਰੀਆਂ ਕੀਨੇ ਸਾਡੇ ਘਰ ਘਰ ਦੇ ਵਿੱਚ ਇੱਕ ਮਰੀਜ਼ ਕਿਉਂ ਪਿਆ ਕੀ ਇਹ ਜੀ ਗੱਦਕ ਸਿੰਘੀ ਆ ਜਿਹਦੇ ਨਾਲ ਲੋਕ ਠੀਕ ਹੋ ਰਹੇ ਨੇ ਲੋਕ ਤਾ ਕੇ ਆ ਰਹੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਦੀ ਵੇਟਿੰਗ ਹੈ ਉਹਦੇ ਪਿੱਛੇ ਕਾਰਨ ਕੀ ਹੈ ਇਹ ਵਿਸ਼ੇਸ਼ ਗੱਲ ਮਹੀਨੇ ਚ ਦੋ ਵਾਰ ਉਹਨਾਂ ਨਾਲ ਚੱਲਿਆ ਕਰੇਗੀ ਕਿ ਤੁਹਾਡੀ ਸਿਹਤ ਤਕੜੀ ਕਿਵੇਂ ਰਹਿ ਸਕਦੀ ਬੈਜੀ ਤੁਹਾਡਾ ਸਵਾਗਤ ਹੈ ਸਤਰੀਆ ਕਾ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਲਿਸਨਰਾਂ ਨੂੰ ਐਸ ਵੇਲੇ ਦੁਪਹਿਰ ਦੀ ਤੇ ਬਾਹਰ ਮੌਸਮ ਬੜਾ ਨਿੱਗਾ ਨਿੱਗਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਪਹਿਲਾਂ ਤਾਂ ਆਯੁਰਵੇਦ ਬਾਰੇ ਥੋੜਾ ਜਿਹਾ ਸਮਝਾਓ ਕਿ ਇਹ ਇਲਾਜ ਪ੍ਰਣਾਲੀ ਕੀ ਹੈ ਸਾਡਾ ਜਿਹੜਾ ਹੈ ਜੀ ਹਜ਼ਾਰਾਂ ਸਾਲਾਂ ਤੋਂ ਇਲਾਜ ਜਿਹੜਾ ਉਹ ਜੜੀਆਂ ਬੂਟੀਆਂ ਨਾਲ ਹੀ ਕੀਤਾ ਜਾਂਦਾ ਸੀ ਠੀਕ ਹੈ ਸੋ ਅੱਜ ਤੋਂ 100 ਸਾਲ ਪਿੱਛੇ ਚਲੇ ਜਾਈਏ ਤੇ ਅੰਗਰੇਜ਼ੀ ਦਵਾਈ ਕੋਈ ਹੁੰਦੀ ਨਹੀਂ ਸੀ ਕੋਈ ਅਪ੍ਰੈਸ਼ਨ ਨਹੀਂ ਸੀ ਹੁੰਦਾ ਤੇ ਉਦੋਂ ਵੀ ਲੋਕਾਂ ਦੀ ਉਮਰ 100 ਸਵਾ 100 150 ਸਾਲ ਹੁੰਦੀ ਸੀ ਜੀ ਸੋ ਜਦੋਂ ਦਾ ਐਲੋਪੈਥੀ ਇਲਾਜ ਆ ਗਿਆ ਉਮਰਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਘਟਦੀਆਂ ਘਟਦੀਆਂ ਘਟਦ ਗਈਆਂ 40 ਸਾਲ ਦਾ ਬੁੱਢਾ 40 ਸਾਲ ਦਾ ਜਿਹੜੇ ਜਵਾਨ ਹੈ ਲੇਡੀਜ਼ ਹੈ ਚਾਹੇ ਜੈਂਟਸ ਹੈ ਉਹ ਆਪਣੇ ਆਪ ਨੂੰ ਬੁੱਢਿਆਂ ਦੇ ਵਿੱਚ ਲਾਤ ਕੋਆਣੀ ਸ਼ੁਰੂ ਕਰਾਂ ਤੇ ਸੋ ਅੱਜ ਦਾ ਜਮਾਨਾ ਸਟ੍ਰੈਸਫੁੱਲ ਓਵਰਵਰਕ ਤੇ ਨਾਲ ਨਾਲ ਜਿਹੜੀਆਂ ਚੀਜ਼ਾਂ ਆਪਾਂ ਬਹੁਤ ਸੋਚਦੇ ਨੇ ਟੈਨਸ਼ਨਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਹੋ ਗਈਆਂ ਸੋ ਆਯੁਰਵੈਦਿਕ ਸਾਡੇ ਜਿਹੜੇ ਬਜ਼ੁਰਗ 250 ਸਾਲ ਤੋਂ ਸਾਡੀ ਪੀੜ੍ਹੀ ਇਹ ਚੱਲ ਰਹੀ ਹੈ ਆਪਣੇ ਆਪਣੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਮੇਰੇ ਪਰਦਾਦਾ ਜੀ ਮਹਾਰਾਜਾ ਦਲੀਪ ਸਿੰਘ ਦੇ ਵੈਦਰੇ ਹੈ ਸੋ ਬੜੀ ਪ੍ਰਾਣੀ ਹੈ ਕਿ ਹਿਸਟਰੀ ਹੈ ਸੋ ਇਸੇ ਤਰੀਕੇ ਦੇ ਨਾਲ ਅੱਗੇ ਇਹਨੂੰ ਪੀੜੀ ਤੋਂ ਤੋਰਦੇ ਹੋਏ ਮੇਰੇ ਤਿੰਨੇ ਬੇਟੇ ਮੇਰੇ ਘਰ ਦੇ ਵੱਲ ਕਵਾਲੀਫਾਈਡ ਆਯੁਰਵੈਦਿਕ ਹਰਬਲਿਸਟ ਹੈ ਜਿਹੜੇ ਕਿ ਟ੍ਰਾਂਟੋ ਦੇ ਵਿੱਚ ਸਾਡਾ ਆਫਿਸ ਹੈ ਸਾਡਾ ਦਿੱਲੀ ਦੇ ਵਿੱਚ ਆਫਿਸ ਹੈ ਪੰਜਾਬ ਦੇ ਵਿੱਚ ਆਫਿਸ ਹੈ ਸੋ ਬੜੀ ਆਯੁਰਵੈਦਿਕ ਨੂੰ ਅਸੀਂ ਆਪਣੀ ਪੀੜੀ ਦਰ ਪੀੜੀ ਅੱਗੇ ਤੋਰਦੇ ਹੋਏ ਸੋ ਹੁਣ ਅੱਗੇ ਤਰੇਪੋਟਰੀਆਂ ਦਾ ਕਿ ਵੀ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਗਿਆ। ਸੋ ਆਯੁਰਵੇਦ ਕਿਤੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਆਪਾਂ ਟ੍ਰੀਟਮੈਂਟ ਕਰਦੇ ਹਾਂ ਕੋਈ ਜੜੀ ਬੂਟੀ ਖਾਣੇ ਆ ਤੇ ਇਹਦੇ ਨਾਲ ਬਿਮਾਰੀ ਨੂੰ ਦਬਾਇਆ ਨਹੀਂ ਜਾਂਦਾ ਬਿਮਾਰੀ ਨੂੰ ਹਟਾਇਆ ਜਾਂਦਾ ਸੋ ਸਮਾਂ ਲੱਗੇ ਹਰ ਚੀਜ਼ ਨੂੰ ਸਮਾਂ ਲੱਗਦਾ ਸਮੇਂ ਦੇ ਨਾਲ ਉਹ ਜ਼ਰੂਰ ਹਟ ਜਾਂਦੀ ਹੈ। ਬਿਮਾਰੀਆਂ ਸਾਡੇ ਮੈਂ ਹਮੇਸ਼ਾ ਹੀ ਗੱਲ ਕਰਦਾ ਹੁੰਦਾ ਕਿ ਸਾਡੇ ਕਿਚਨ ਦੇ ਵਿੱਚੋਂ ਲੱਗਦੀਆਂ। ਅੱਛਾ ਸੋ ਕਿਚਨ ਦੇ ਵਿੱਚੋਂ ਹੀ ਹਟਦੀਆਂ। ਸੋ ਜੇ ਤੁਸੀਂ ਆਪਣੇ ਕਿਚਨ ਨੂੰ ਕੰਟਰੋਲ ਕਰ ਲੰਨੇ ਆ ਦੋ ਇੰਚ ਜੀਬ ਨੂੰ ਸਵਾਦ ਨੂੰ ਠੀਕ ਕਰ ਲੰਨੇ ਆ ਤੇ ਤੁਹਾਨੂੰ ਬਿਮਾਰੀਆਂ ਲੱਗਣ ਦਾ ਕੋਈ ਮਸਲਾ ਹੀ ਨਹੀਂ ਰਹਿੰਦਾ ਸੋ 2 ਇੰਚ ਜੀਬ ਤੇ ਕਿਚਨ ਨੂੰ ਠੀਕ ਕਰ ਲਿਆ ਜਾਏ ਤੇ ਤੁਹਾਨੂੰ ਕੋਲੇਸਟ੍ਰੋਲ ਨਹੀਂ ਹੋਣਾ ਤੁਹਾਨੂੰ ਫੈਟ ਨਹੀਂ ਹੋਣੀ ਤੁਹਾਨੂੰ ਕੋਈ ਹੋਰ ਪ੍ਰੋਬਲਮ ਨਹੀਂ ਹੋਣੀ ਸੋ ਖਾਣ ਪੀਣ ਦੇ ਉੱਤੇ ਮੁਨਸਰ ਜਦੋਂ ਸਾਡੇ ਕੋਲ ਮਰੀਜ਼ ਆਉਂਦੇ ਆ ਅਸੀਂ ਉਹਨਾਂ ਦਾ ਡਾਇਗਨੋਸ ਕਰਦੇ ਆ ਸੋ ਡਾਇਗਨੋਸ ਅਸੀਂ ਪੁੱਛ ਕੇ ਨਹੀਂ ਕਰਦੇ ਮਰੀਜ਼ ਨੂੰ ਮਰੀਜ਼ ਨੂੰ ਕਿਸੇ ਨੇ ਸਾਡਾ ਕੋਈ ਵੀ ਸਟਾਫ ਮੈਂਬਰ ਕੋਈ ਇਹ ਨਹੀਂ ਪੁੱਛਦਾ ਪ੍ਰੋਬਲਮ ਸੋ ਕੋਈ ਆਪ ਹੀ ਉਹਨਾਂ ਦਾ ਡਾਇਗਨੋਸ ਕਰਕੇ ਜਿੱਦਾਂ ਸਾਡੇ ਦਾਦੇ ਪਰਦਾਦੇ ਜੀ ਕਰਦੇ ਸੀ ਫਾਦਰ ਸਾਹਿਬ ਕਰਦੇ ਸੀ ਸੋ ਨਵਾਂ ਦੇਖ ਕੇ ਜੀਵ ਦੇਖ ਕੇ ਅੱਖਾਂ ਦੇਖ ਕੇ ਹੀ ਪਹਿਲੇ ਜ਼ਮਾਨੇ ਤੇ ਅਸੀਂ ਜੀ ਪਿਸ਼ਾਬ ਦੇਖ ਕੇ ਵੀ ਕਰਦੇ ਹੁੰਦੇ ਸੀ ਪਰ ਉਹ ਇੱਥੇ ਇਹ ਵਸਤੂ ਕੰਟਰੀਆਂ ਦੇ ਵਿੱਚੋਂ ਜਿਹੜਾ ਕੋਈ ਥੋੜੀ ਜਿਹੀ ਪ੍ਰੋਬਲਮ ਵਾਲੀ ਗੱਲ ਐ ਸੋ ਸਰੀਕੇ ਨਾਲ ਨਹੀਂ ਸੋ ਨਭੇ ਦੇਖ ਕੇ ਅੱਖਾਂ ਦੇਖ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਬਿਮਾਰੀ ਐ ਉਹਨੂੰ ਲੱਭ ਲੈਣੇ ਆ ਤਿੰਨ ਤਸੀਰਾਂ ਲੱਭਦੇ ਪਿੱਤ ਤੇ ਕਫ ਸੋ ਅਸੀਂ ਬਾਤ ਪਿੱਤ ਤੇ ਕਫ ਦੇ ਆਧਾਰ ਦੇ ਉੱਤੇ ਚੱਲਦੇ ਆ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਸਾਡੀਆਂ ਬੈਲੈਂਸ ਹੋ ਜਾਂਦੀਆਂ ਤੇ ਫਿਰ ਉਹਦੇ ਨਾਲ ਕੀ ਹੁੰਦਾ ਕਿ ਬੋਡੀ ਜਿਹੜੀ ਤੰਦਰੁਸਤ ਹੋ ਜਾਂਦੀ ਐ ਸੋ ਹੁਣ ਦੇਖੋ ਕਿ ਬੀਬੀਆਂ ਭੈਣਾਂ 30 40 ਸਾਲ ਦੀਆਂ ਐ ਬੁੱਢੀਆਂ ਦੇ ਦਿਆਂ ਝੁੱਗੜੀਆਂ ਪੈ ਗਈਆਂ ਬੁਰਾ ਹਾਲ ਹੈ ਛਾਈਆਂ ਪਈਆਂ ਸੋ ਜਮਾਨਾ ਜਿਹੜਾ ਹੈਗਾ ਪਹਿਲੇ ਤੁਸੀਂ ਬੀਬੀਆਂ ਦੇਖੋ ਕਿ 60 70 ਸਾਲ ਦੀ ਵੀ ਬੀਬੀ ਜਿਹੜੀ ਆ ਉਹ ਵੀ ਬੁਢੀ ਨਹੀਂ ਸੀ ਲੱਗਦੀ ਜਵਾਨ ਲੱਗਦੀ ਸੀ ਤੇ ਅੱਜ ਦਾ ਜਮਾਨਾ ਕਿੰਨਾ ਚੇਂਜ ਹੋ ਗਿਆ ਸੋ ਸਾਡੇ ਖਾਣ ਪੀਣ ਦੇ ਨਾਲ ਸਾਡੇ ਸਟ्रेस ਦੇ ਨਾਲ ਸਾਡੇ ਓਵਰਵਰਕ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਅੱਜ ਦੇ ਜਮਾਨੇ ਦੇ ਵਿੱਚ ਇਹ ਗਾਹ ਜਾ ਰਹੀਆਂ ਜਿਹੜੀਆਂ ਉਮਰਾਂ ਜਿਹੜੀਆਂ ਘਟ ਰਹੀਆਂ ਜਦੋਂ 50 ਸਾਲ ਦਾ ਬੰਦਾ ਹੁੰਦਾ ਹੋ ਗਿਆ ਦਿਨ ਘੋੜਾ ਤੇ ਇਨਸਾਨ ਕਦੀ ਬੁੱਢੇ ਨਹੀਂ ਹੁੰਦੇ ਜੇ ਇਹਨਾਂ ਦੀ ਖਰਾਕ ਤੇ ਮੇਨਟੇਨੈਂਸ ਪੂਰੀ ਹੋਵੇ ਘੋੜਾ ਤੇ ਇਨਸਾਨ ਕਦੇ ਬੁੱਢੇ ਨਹੀਂ ਹੁੰਦੇ ਤੋਂ ਇਹ ਗੱਲਾਂ ਨੂੰ ਸੁਣਨ ਵਾਲੀਆਂ ਇਹ ਵਾਲੀਆਂ ਮੈਂ ਜਿਹੜੀਆਂ ਵੀ ਗੱਲਾਂ ਦੱਸਦਾ ਉਹ ਹਮੇਸ਼ਾ ਤਹਾਡੀਆਂ ਅਜਮਾਈਆਂ ਹੋਈਆਂ ਜਿਹੜੇ ਮੇਰੇ ਬਜ਼ੁਰਗ ਭੈਣ ਭਰਾ ਉਹਨਾਂ ਦੀਆਂ ਅਜਮਾਈਆਂ ਹੋਈਆਂ ਗੱਲਾਂ ਉਹਨਾਂ ਬੱਚਿਆਂ ਨੂੰ ਮੈਂ ਕਹਿੰਦਾ ਕਿ ਤੁਸੀਂ ਭਾਈ ਆਪਣੀ ਪ੍ਰਾਣੀ ਪ੍ਰਾਣਾਲੀ ਦੇ ਵਿੱਚ ਆ ਜਾਓ ਆਪਣੀਆਂ ਜੜੀਆਂ ਬੂਟੀਆਂ ਨੂੰ ਦੇਖ ਲਓ ਆਪਣੇ ਕਿਚਨ ਦੇ ਵਿੱਚ ਮੁੜਿਆਓ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਰਹਿਣਗੀਆਂ ਪੁਰਾਣੇ ਬਜ਼ੁਰਗ ਦੇਖੋ ਅੱਜ ਵੀ ਚੰਗੇ ਤੁਰੇ ਫਿਰਦੇ ਆ ਚੰਗੇ ਖਾਂਦੇ ਪੀਂਦੇ ਆ ਲਾਲ ਪੈ ਕਹਿੰਦੇ ਹੁੰਦੇ ਆ ਨਾ ਔਲੇ ਦਾ ਖਾਦਾ ਤੇ ਦੇਸੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਸੋ ਇੱਕ ਔਲਾ ਤੇ 20 ਸੰਤਰੇ ਇੱਕ ਬਰਾਬਰ ਹੈ ਸੰਤਰੇ ਖਾ ਲੋ ਤੇ ਖਾ ਲੋ ਤੇ ਅਸਰ ਬਰਾਬਰ ਹੈ ਸੋ ਇਹ ਚੀਜ਼ਾਂ ਅਜਮਾਈਆਂ ਕਹਿੰਦੀਆਂ ਨਹੀਂ ਕੋਈ ਕਿਤਾਬਾਂ ਪੜ੍ਹ ਕੇ ਨਹੀਂ ਮੈਂ ਦੱਸਦਾ ਮੈਂ ਤਾਂ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਦਾ ਕਿ ਤਿੰਨ ਹਜ਼ਾਰ ਜੜੀ ਬੂਟੀ ਜਿਹੜੀ ਹੈ ਉਹ ਮੈਂ ਆਪ ਜਾ ਕੇ ਜੰਗਲਾਂ ਚੋਂ ਲੈ ਕੇ ਆਉਣਾ ਸੋ ਉਹ ਜਿਹੜੀਆਂ ਜੰਗਲਾਂ ਦੇ ਵਿੱਚੋਂ ਜਦੋਂ ਅਸੀਂ ਜਾਂਦੇ ਆ ਤਾਂ ਸਾਨੂੰ ਬੜੀਆਂ ਸਮੱਸਿਆਵਾਂ ਆਉਂਦੀਆਂ ਆਹ ਨਾਲੇ ਸਮੇਂ ਦੇ ਵਿੱਚ ਅਸੀਂ ਜੰਗਲਾਂ ਵਾਲੀਆਂ ਵੀ ਗੱਲਾਂ ਕਰਦੇ ਰਹਿਵਾਂਗੇ ਕਿਿੱਦਾਂ ਇਹ ਇਕੱਠੀਆਂ ਕਰਦੇ ਆ ਸੋ ਇੱਥੇ ਜਿਹੜੀ ਆਪਾਂ ਗੱਲਾਂ ਬਾਤਾਂ ਕਰਦੇ ਆ ਕਿ ਆਯੁਰਵੈਦਿਕ ਕੀ ਹੈ ਸੋ ਆਯੁਰਵੈਦਿਕ ਦੇ ਵਿੱਚ ਇਹ ਚੀਜ਼ ਹੈ ਕਿ ਐਸੇ ਹਰ ਚੀਜ਼ ਆਜ ਹੁਣ ਅੱਜ ਦੇ ਜਮਾਨੇ 'ਚ ਵੀ ਦੇਖੋ ਕਿ ਬਹੁਤ ਭੈਣ ਭਰਾਵਾਂ ਨੂੰ ਪਤਾ ਕਿ ਹਲਦੀ ਜਿਹੜੀ ਹੈ ਦੁੱਧ 'ਚ ਪਾ ਕੇ ਪੀਨੇ ਆ ਸੋ ਹਲਦੀ ਜਿਹੜੀ ਹੈ ਇਹ ਵੀ ਚਾਰ ਤਰ੍ਹਾਂ ਦੀ ਹੁੰਦੀ ਹੈ ਸੋ ਐਸੀ ਹਲਦੀ ਦੀ ਗੋਲੀ ਬਣਾਣੇ ਸੋ ਹਲਦੀ ਦੀ ਗੋਲੀ ਬਣਾਣੇ ਤੇ ਚਾਰੇ ਹਲਦੀਆਂ ਉਹਦੇ ਸੋ ਦਾਰੂ ਹਲਦੀ ਕਾਲੀ ਹਲਦੀ ਅੰਬਾ ਹਲਦੀ ਤੇ ਜਿਹੜੀ ਆਪਾਂ ਖਾਣੇ ਸੋ ਇਹ ਚਾਰੇ ਜਦੋਂ ਅਸੀਂ ਖਾਣੇ ਆ ਤੇ ਚਾਰਾਂ ਦੇ ਡਿਫਰੈਂਟ ਅਸਰ ਆ ਉਹ ਇਕੱਠੀਆਂ ਹੋ ਕੇ ਮਿਕਸ ਹੋ ਕੇ ਨੈਚੁਰਲ ਸਟੇਰਾਈਡ ਬਣ ਜਾਂਦੀ ਹੈ ਹਮ ਸੋ ਹੁਣ ਬਹੁਤ ਲੋਕ ਕਹਿੰਦੇ ਆ ਕਿ ਤੁਹਾਡੀਆਂ ਦਵਾਈਆਂ ਕਿਉਂ ਅਸਰ ਛੇਤੀ ਕਰਦੀ ਬਿਲਕੁਲ ਦਿਹਾੜੀ ਦੇ ਨਾਲ ਠੀਕ ਹੋ ਰਹੇ ਨੇ ਸੋ ਐਸੀ ਪਹਿਲੀ ਗੱਲ ਹੈ ਕਿ ਅਸੀਂ ਸਾਰੀਆਂ ਦਵਾਈਆਂ ਮੈਂ ਆਪ ਬਣਾਉਂਦਾ ਕਿਸੇ ਕੋਲ ਸਾਡਾ ਕੋਈ ਵੀ ਗਰੋਸਰੀ ਵਾਲੀ ਆਈਟਮ ਨਹੀਂ ਬੰਦੀ ਕਿ ਕਿਸੇ ਗਰੋਸਰੀ ਸਟੋਰ ਦੇ ਉੱਤੇ ਸਾਡਾ ਸਮਾਨ ਸਾਡੀ ਫੈਕਟਰੀ ਦਾ ਵਿਕੇ ਸਾਡੀ ਫੈਕਟਰੀ ਜੀ ਐਮ ਪੀ ਸਰਟੀਫਾਈਡ ਕੰਪਨੀ ਹੈ 90 ਏਕੜ ਦੇ ਵਿੱਚ ਫੈਕਟਰੀ ਹੈ ਇੰਡੀਆ ਦੇ ਵਿੱਚ ਉਹ ਜੰਗਲ ਦੇ ਵਿੱਚ ਹੈ ਕੋਈ ਸ਼ਹਿਰ ਦੇ ਵਿੱਚ ਨਹੀਂ ਉਹ 300 ਏਕੜ ਉਹਦੇ ਅਲੱਗ ਵਾਲੇ ਜ਼ਮੀਨ ਜਿਹੜੀ ਸਾਨੂੰ ਗਵਰਨਮੈਂਟ ਨੇ ਲੀਜ਼ ਦੇ ਉੱਤੇ ਦਿੱਤੀ ਹੈ ਜੰਗਲ ਦੇ ਵਿੱਚ ਕਿ ਜਿਸੇ ਇਹ ਨੇਚਰਲ ਜੜੀਆਂ ਬੂਟੀਆਂ ਆਵਾਂ ਨੇ ਸੋ ਇਸੇ ਤਰੀਕੇ ਦੇ ਨਾਲ ਹੀ ਸਾਡੇ ਕੋਲ 3000 ਏਕੜ ਦਾ ਜਿਹੜਾ ਫਾਰਮ ਹੈ ਉਹ ਰਾਜਸਥਾਨ ਦੇ ਵਿੱਚ ਹੈ ਜਿੱਥੇ ਅਸੀਂ অ্যালোਵੈਰਾ ਗਾਨੇ ਆ ਕਿਉਂਕਿ অ্যালোਵੈਰਾ ਜਿਹੜਾ ਗਰਮ ਦੇਸ਼ ਦੇ ਵਿੱਚ ਹੀ ਹੁੰਦਾ ਗਰਮ ਸਟੇਟ ਦੇ ਵਿੱਚ ਹੀ ਹੁੰਦਾ ਸੋ ਸਾਰੀਆਂ ਜੜੀਆਂ ਬੂਟੀਆਂ ਅਸੀਂ ਆਪ ਤਿਆਰ ਕਰਦੇ ਆ ਪਰ ਵੇਚਣ ਵਾਸਤੇ ਕੋਈ ਵੀ ਚੀਜ਼ ਨਹੀਂ ਇਹ ਇਧਾਕੇ ਨਹੀਂ ਬਣਾਈ ਜਾਂਦੀ ਕਿ ਤੈਨੂੰ ਬਲਕ ਦੇ ਟਬਾ ਲਓ ਤੇ ਮਾਰਕੀਟ ਵਿੱਚ ਸਿੱਟ ਦੇ ਕੈਨੇਡਾ ਦੇ ਵਿੱਚ ਪਹਿਲਾ ਕਲੀਨਿਕ ਹੈ ਜਿਹੜਾ ਕਿ ਹੈਲਥ ਕੈਨੇਡਾ ਦੇ ਨਾਲ ਰਜਿਸਟਰਡ ਹੈ ਔਰ ਹੈਲਥ ਕੈਨੇਡਾ ਕੋਲੋਂ ਅਪਰੂਵਡ ਆਈਟਮਾਂ ਸਾਡੇ ਕੋਲ ਆਉਂਦੀਆਂ ਅਸੀਂ ਕੋਈ ਝੋਲਿਆਂ ਦੇ ਵਿੱਚ ਪਾ ਕੇ ਜਾਂ ਥੈਲਿਆਂ ਦੇ ਬੈਗ ਦੇ ਵਿੱਚ ਪਾ ਕੇ ਜਿਹੜੀਆਂ ਦਵਾਈਆਂ ਨਹੀਂ ਲੈ ਕੇ ਹੁੰਦੇ ਸਾਡੀਆਂ ਦਵਾਈਆਂ ਸਾਰੀਆਂ ਕੰਟੇਨਰਾਂ ਦੇ ਕੰਟੇਨਰ ਤੇ 22 ਏਅਰ ਤੇ 22 ਸ਼ਿਪ ਸਮਾਨ ਆਉਂਦਾ ਔਰ ਪ੍ਰੋਪਰ ਇਹਨੂੰ ਚੈੱਕ ਕੀਤਾ ਜਾਂਦਾ ਸੀਬੀਐਸਾ ਹੈਲਥ ਕੈਨੇਡਾ ਉਹ ਡਿਪਾਰਟਮੈਂਟ ਉਹਨੂੰ ਚੈੱਕ ਕਰਦੇ ਆ ਫੇਰ ਉਹ ਸਾਨੂੰ ਰਿਲੀਜ਼ ਕੀਤੀ ਜਾਂਦੀ ਹੈ ਸਾਡਾ 10-10 ਦਿਨ ਸਮਾਨ ਜਿਹੜਾ ਹੋਲਡ ਦੇ ਪਾਇਆ ਜਾਂਦਾ ਉਹ ਤੁਸੀਂ ਦੇਖੋਗੇ ਤੁਹਾਨੂੰ ਜਿਹੜੀਆਂ 에ਅਰਲਾਈਨਾਂ ਉਹਨਾਂ ਦੇ ਜਿਹੜੇ ਵੇਅਰ ਹੁੰਦਾ ਕਿੰਨੇ ਮਹਿੰਗੇ ਜਦੋਂ ਹੋਲਡ ਤੇ ਪਾਏ ਜਾਂਦੇ ਆ ਤੇ ਉਹਨਾਂ ਦਾ ਕਿੰਨਾ ਖਰਚ ਸਾਨੂੰ ਪੈ ਜਾਂਦਾ ਕਿੰਨੀ ਕਸਟਮ ਡਿਊਟੀ ਦਿੱਤੀ ਜਾਂਦੀ ਹੈ ਕਿੰਨੇ ਉਹਦੇ ਟੈਕਸਸ ਦੇ ਜਾਂਦੇ ਆ ਫੇਰ ਉਹ ਸਮਾਨ ਸਾਡੇ ਕੋਲ ਪਹੁੰਚਦਾ ਪਰ ਅਸੀਂ ਉਹਨੂੰ ਹੀ ਵੇਚਣ ਲਈ ਬੰਜੀ ਇੱਕ ਮਿੰਟ ਸੁਣਿਓ ਮੈਂ 2007 ਚ ਇੱਕ ਟਰਾਈ ਕੀਤੀ ਮੇਰਾ ਇੱਕ ਦੋਸਤ ਸੀ ਲੁਧਿਆਣੇ ਉਹ ਨਸ਼ਾ ਛਡਾਊ ਦਾ ਕੇਂਦਰ ਸੀ ਉਹ ਕੁਦਰਤੀ ਉਹਨੇ ਫਰੀ ਕੈਂਪ ਲਾਇਆ ਸਾਡੇ ਟੂਰਨਾਮੈਂਟ ਮੈਂ ਉਹਨੂੰ ਸੱਦ ਰਿਹਾ ਹੈਲਥ ਕਨੇਡਾ ਤਾਂ ਜੀ ਡਾਲਰ ਉਹਦੇ ਇੱਕ ਦਵਾਈ ਦਾ ਮੰਗੇ ਤੇ ਉਹਨਾਂ ਨੇ ਉਹਨੂੰ ਪਾਸ ਹੀ ਨਹੀਂ ਕੀਤੀ ਤਾਂ ਕੰਮ ਬਹੁਤ ਔਖਾ ਇੰਨੀਆਂ ਦਵਾਈਆਂ ਕਿਵੇਂ ਪਾਸ ਕਰਾਈਆਂ ਮੈਂ ਉਹਨੂੰ ਸਾਨੂੰ ਸਾਲ ਹੋ ਗਏ ਆ ਜੀ 98 ਦੇ ਵਿੱਚ ਮੈਂ ਇੱਥੇ ਸੜੀ ਦੇ ਵਿੱਚ ਹੀ ਆਪਣਾ ਕਲੀਨਿਕ ਸਟਾਰਟ ਕੀਤਾ ਸੀ ਤੇ ਮੈਨੂੰ ਪਰਮਿਸ਼ਨ ਨਹੀਂ ਸੀ ਦਿੱਤੀ ਕਿਉਂਕਿ ਇਥੇ ਸਿਸਟਮ ਨਹੀਂ ਸੀ ਉਹ ਸੋਸਾ ਨੂੰ ਅਚਾਨਕ ਸਾਡਾ ਮੂਵ ਹੋਣਾ ਪੈ ਗਿਆ ਉਸੇ ਵੇਲੇ ਕਿਉਂਕਿ ਇਥੇ 6 ਮਹੀਨੇ ਦੇ ਵਿੱਚ ਆਸ਼ਾ ਇਹ ਨਾ ਹੋ ਗਿਆ ਸੀ ਮਰੀਤਾਂ ਦਾ ਬਹੁਤ ਹੜਤੱਲੀ ਮੱਤ ਗਈ ਸੀ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਜਾ ਕੇ ਟ੍ਰਾਂਟੋ ਦੇ ਵਿੱਚ ਫੁੱਲ ਫਲੈਸ਼ ਸਾਰੇ ਕੰਮ ਸ਼ੁਰੂ ਕੀਤੇ ਔਰ ਅੱਜ ਸਾਨੂੰ ਇਹ ਮਾਣ ਹੈ ਪੰਜਾਬੀਆਂ ਤੇ ਉਹ ਪੰਜਾਬੀਆਂ ਦੇ ਵਿੱਚ ਮਾਣ ਹੈ ਕਿ ਜਿਹੜਾ ਸਾਡਾ ਕਲੀਨਿਕ ਹੈ A1 ਹਰਬਲ ਆਯੁਰਵੇਦਿਕ ਕਲੀਨਿਕ ਇਹ ਇੱਕੋ ਹੈਗਾ ਕਲੀਨਿਕ ਹੈ ਕੈਨੇਡਾ ਦੇ ਵਿੱਚ ਜਿਹੜਾ ਕਿ ਪ੍ਰੋਪਰ ਚੈਨਲ ਸਾਰੇ ਸੇਵਿਸ ਕੰਮ ਕਰਦੇ ਆਂ ਔਰ ਸਾਰੇ ਮਰੀਜ਼ਾਂ ਨੂੰ ਦੇਖਦੇ ਆਂ ਔਰ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੰਨਾ ਵੱਡਾ ਕੰਮ ਕਰਨ ਦੇ ਬਾਵਜੂਦ ਵੀ ਸਾਡੀ ਅਸੀਂ ਫੀਸ ਨਹੀਂ ਲੈਂਦੇ ਸੋ ਇਹ ਵੀ ਸਭ ਤੋਂ ਵੱਡੀ ਗੱਲ ਹੈ ਨਹੀਂ ਬੰਦਾ ਸੋਚਦਾ ਕਿ ਮੈਂ ਇੱਕ ਪ੍ਰੋਡਕਟ ਨੂੰ ਪਾਸ ਕਰਾਉਣ ਵਾਸਤੇ 15-15000 ਡਾਲਰ ਖਰਚੇ ਆਏ ਤੇ ਮੈਂ ਫੀਸ ਲਵਾਂ ਲੋਕੀ ਸਾਨੂੰ 5-500 ਡਾਲਰ ਫੀਸ ਦੇਣ ਤਿਆਰ ਪਹਿਲਾਂ ਮੈਂ ਦੇਖ ਲਓ ਪਰ ਅਸੀਂ ਹੱਥ ਜੋੜਦੇ ਆਂ ਕਿ ਭਾਈ 50 ਡਾਲਰ ਵੀ ਸਾਨੂੰ ਪਛਦੇ ਨਹੀਂ ਜੀਸਦੇ ਸੋ ਦਵਾਈ ਦੇ ਸੀ ਜਰੂਰ ਲੈਣੇ ਆ ਰੀਜ਼ਨੇਬਲ ਚਾਰਜਸ ਸਾਡੇ ਪਰ ਜਿਹੜੇ ਫੀਸ ਵਾਲੀ ਗੱਲ ਆ ਉਹ ਸਾਡੇ ਕਿਸੇ ਵੀ ਕਲੀਨਿਕ ਤੇ ਨਹੀਂ ਹੁੰਦੀ ਸੋ ਅਸੀਂ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸੇ ਵੀ ਕਿਸੇ ਵੀ ਕਲੀਨਿਕ ਦੇ ਉੱਤੇ ਤੁਸੀਂ ਫੀਸ ਨਹੀਂ ਲੈਣੀ ਤੇ ਸਟਾਰਟ ਕੀਤਾ ਸੀ ਪਹਿਲੇ ਕਿ ਓਵਰਟਾਰਨ ਜਿਹੜੇ ਹੈਗੇ ਆ ਕਿ ਤੁਸੀਂ 50 ਡਾਲਰ ਦਿਓ ਤੇ ਸਾਨੂੰ ਆ ਕੇ ਅੱਗੇ ਅੱਗੇ ਦੇਖ ਲਓ ਤੇ ਮੈਨੂੰ ਮੈਂ ਦੂਸਰੇ ਬੰਦੇ ਨੂੰ ਬੰਦ ਕਰਤਾ ਕਿਉਂਕਿ 50 50 ਡਾਲਰ ਦੇ ਨਾਲੇ ਸਾਰੇ ਹੋ ਗਏ ਤੇ ਮੈਂ ਕਿਹਾ ਦੂਜੇ ਬੰਦੇ ਤਾਂ ਲਾਈਨ 'ਤੇ ਉਦੇ ਰਹਿ ਗਏ ਸੋ ਉਹ ਜਿੰਨੇ ਪੈਸੇ ਮੈਨੂੰ ਬਣੇ ਇੱਕ ਦਿਨ ਦੇ ਵਿੱਚ 50 50 ਡਾਲਰ ਲੈ ਕੇ ਤੇ ਉਹਨੇ ਹੀ ਪੈਸੇ ਮੈਂ ਆਪਣੇ ਕੋਲੋਂ ਪਾ ਕੇ ਤੇ ਮੈਂ ਫਿਰ ਉਹ ਆਪਣਾ ਚੈਰੀਟੇਬਲ ਟਰਸਟ ਆ ਉਹਦੇ ਡਾਲਰ ਦੇ ਕੇ ਤੇ ਮੈਨੂੰ 500 ਡਾਲਰ ਦਾ ਨੁਕਸਾਨ ਮੇਰਾ ਹੋ ਗੱਲ ਹੈ ਸਾਡੇ ਬਜ਼ੁਰਗਾਂ ਨੇ ਕਿਹਾ ਇਹ ਇਹ ਨਹੀਂ ਹੋਣਾ ਸੋ ਅੱਜ ਵੀ ਮੈਂ ਲਾਈਨ ਅਪ ਦੇ ਵਿੱਚ ਹ ਤੁਸੀਂ ਦੇਖੋਗੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਮੇਰੇ ਕੋਲ ਕਿੰਨੀ ਲਾਈਨ ਅਪ ਹੈ 2 3 ਮਹੀਨੇ ਮੇਰੇ ਕੋਲ ਵਾਰੀ ਨਹੀਂ ਆ ਰਹੀ 2000 ਪਰਸਨ ਦੇ ਵੇਟਿੰਗ ਦੇ ਵਿੱਚ ਚੱਲ ਰਿਹਾ ਉਹ ਸਵਾਸ ਤੋਂ ਮਰੀ ਜਿਹੜਾ ਮੈਂ ਰੋਜ਼ ਦੇਖਦਾ ਸਵੇਰ ਤੋਂ ਸ਼ਾਮ ਤੱਕ ਤੇ ਫਿਰ ਵੀ ਲੋਕਾਂ ਦੀ ਜਿਹੜੀ ਵਾਰੀ ਆ ਪਬਲਿਕ ਦੀ ਨਹੀਂ ਆਉਂਦੀ ਪਰ ਮੇਰੀ ਤਾਂ ਹਮੇਸ਼ਾ ਹੀ ਖੁਆਇਸ਼ ਰਹਿੰਦੀ ਹੈ ਕਿ ਮੈਂ ਦਵਾਈ ਦੇ ਨਾਲ ਦੁਆ ਕਰਦਾ ਤੇ ਜਦੋਂ ਦੁਆ ਕਰਦਾ ਤੇ ਫਿਰ ਉਹ ਜ਼ਰੂਰ ਠੀਕ ਹੁੰਦਾ ਸਭ ਕੁਝ ਇਕੱਲੀਆਂ ਦਵਾਈਆਂ ਹੀ ਕੰਮ ਨਹੀਂ ਕਰਦੀਆਂ ਮੈਂ ਵੀ ਹਮੇਸ਼ਾ ਅਰਦਾਸ ਇਹ ਕਰਦਾ ਕਿ ਜੋ ਜੀ ਆਵੇ ਸੋ ਰਾਜੀ ਜਾਵੇ ਕਲਾ ਵਾਹਿਗੁਰੂ ਦੀ ਵਰਤ ਕੋ ਮੇਰੀ ਵੀ ਹੋਈ ਅਰਦਾਸਾਂ ਰਹਿੰਦੀਆਂ ਬਿਲਕੁਲ ਮੈਂ ਉਹਦੇ ਨਾਲ ਨਾਲ ਆਪਣੇ ਤਰੀਕੇ ਦੇ ਹੀ ਚੱਲੀਦਾ ਜੀ ਅੱਛਾ ਜੀ ਮੈਨੂੰ ਘਰ ਦੀ ਜਿਹੜੀ ਰਸੋਈ ਦੀ ਗੱਲ ਕੀਤੀ ਫਿਰ ਜਨਰਲ ਜੇ ਕਿਸੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਉਹਨੂੰ ਕੀ ਕਹਨੇ ਹੋਵੇ ਰਸੋਈ 'ਚ ਕੀ ਕੀ ਰੱਖੇ ਫਿਰੋ ਦੇਖੋ ਤੰਦਰੁਸਤ ਰਹਿਣ ਵਾਸਤੇ ਰਸੋਈ ਨੂੰ ਵੀ ਤੰਦਰੁਸਤ ਰੱਖਣਾ ਪਊ ਠੀਕ ਹੈ ਜੇ ਤੰਦਰੁਸਤ ਨਹੀਂ ਰਹਿਣਾ ਤੇ ਰਸੋਈ ਨੂੰ ਕੀ ਹੈ ਤੋੀ ਦੇ ਵੇਲੇ ਤੁਸੀਂ ਲਿਆ ਕੇ ਦੇਸੀ ਘੀਓ ਸਿੜਦੇ ਹੋ ਤੇ ਪਰੌਂਠੇ ਤਲ ਤਲ ਕੇ ਖਾਣੇ ਸ਼ੁਰੂ ਕਰਦੇ ਹੋ ਕਦੀ ਕਦੀ ਮਾਲੂਆ ਤੇ ਕਦੀ ਪਨੀਰ ਵਾਲੇ ਤੇ ਕਦੀ ਕੋਸਤੇ ਕਦੀ ਕੋਸ ਫਰਾਈ ਚੀਜ਼ਾਂ ਸ਼ੁਰੂ ਕਰਦੇ ਹੋ ਤੇ ਉਹਦੇ ਨਾਲ ਕੀ ਹੋਏਗਾ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਕਿ 10 ਕਿਲੋ weight ਵਧਾਣਾ ਹੋਵੇ ਤੇ 10 ਵਿਆਹ ਖਾ ਲਓ ਤੇ weight ਜਾਏਗਾ ਬਾਦ ਤੇ ਜੇ ਤੁਸੀਂ 1 ਕਿਲੋ ਘਟਾਣਾ ਹੈ ਤੇ 20 ਵਿਆਹ ਛੱਡਦੇ ਹੋ ਤਾਂ ਫਿਰ ਵੀ ਕਿਲੋ ਨਹੀਂ ਘਟਣਾ ਬਹੁਤ ਵੱਡੀ ਗੱਲ ਬੜੀ ਵੱਡੀ ਗੱਲ ਹੈ ਤੁਰ ਆਪਣੇ ਮੂੰਹ ਦੇ ਉੱਤੇ ਕੰਟਰੋਲ ਕਰਨਾ ਪੈਗਾ ਹੁਣ ਮੇਰੇ ਕੋਲ ਬਹੁਤ ਭੈਣ ਭਰਾ ਦੇਖੋ ਜੀ ਅਸੀਂ ਡਾਈਟ ਅਜਾ ਕੋਈ ਵੀ ਜੇ ਕਿਸੇ ਨੇ ਭਾਰ ਘਟਾਣਾ ਕਰਨ ਲੱਗ ਜਾਂਦੇ ਆ ਤੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਫੋਨ ਕਰ ਕਰਕੇ ਦੱਸਦੇ ਆ ਜੀ ਮੈਂ ਡਾਈਟ ਤੇ ਆ ਅੱਜ ਕਣ ਮੈਂ ਬਹੁਤ ਡਾਈਟ ਕਰ ਰਿਹਾ ਜਾਂ ਕਰ ਰਹੀ ਹਾਂ ਤੇ ਮੈਂ ਡਾਈਟ ਤੇ ਆ ਜੀ ਬਸ ਹੁਣ ਕੁਝ ਨਹੀਂ ਜੇ ਕਿਸੇ ਦੇ ਘਰ ਜਾਣਾ ਮੈਂ ਡਾਈਟ ਤੇ ਆ ਜੀ ਤੇ 7 ਨਾਲ ਕੁਕੀਆਂ ਖਾਈ ਜਾਂਦੀਆਂ ਡਾਈਟ ਦੇ ਅੰਝੀ ਮੈਂ ਤੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ 15-20 ਦਿਨ ਮਹੀਨਾ ਡਾਈਟ ਕਰ ਲੰਨੇ ਆ ਤੇ ਫਿਰ ਹੁਣ ਬਹੁਤ ਬੰਨ ਭਰਾ ਮੇਰੇ ਕੋਲ ਆਉਂਦੇ ਆ ਉਹ ਕਹਿੰਦੇ ਕਿ weight ਨਹੀਂ ਘਟਦਾ ਪੇਟ ਨਹੀਂ ਘਟਦਾ ਪੇਟ ਵਿਚਾਰਾ ਕੀ ਕਰੇ ਕਿ ਜੇ ਪੇਟ ਦੇ ਵਿੱਚ ਅਸੀਂ ਸਿੱਟੀ ਜਾਣਾ ਸਭ ਕੁਝ ਪੇਟ ਨੂੰ ਸਾਹ ਹੀ ਨਹੀਂ ਆਣ ਦੇਣਾ ਸਾਰਾ ਦਿਨ ਤੇ ਉਹ ਪੇਟ ਵਿਚਾਰਾ ਕੀ ਕਰੇ ਤੇ ਪੇਟ ਤੇ weight ਨੂੰ ਘਟਾਉਣ ਵਾਸਤੇ ਸਾਨੂੰ ਜੀਵ ਤੇ ਕੰਟਰੋਲ ਕਰਨਾ ਪਏਗਾ ਆਪਾਂ ਜੀਣ ਲਈ ਨਹੀਂ ਖਾਣਾ ਬਿਲਕੁਲ ਖਾਣ ਲਈ ਜੀਣਾ ਬਿਲਕੁਲ ਠੀਕ ਹੈ ਸੋ ਇਹ ਇਹ ਤਰੀਕਾ ਦੀ ਜਿਹੜੀਆਂ ਖਾਣ ਵਾਸਤੇ ਹੀ ਜਿੰਨੇ ਆ ਅਸੀਂ ਇੰਨਾ ਕੁ ਖਾਈਏ ਜਿੰਨਾ ਕਿ ਸਾਨੂੰ ਜ਼ਰੂਰਤ ਹੈ ਸਾਡੀ ਬੋਡੀ ਜਿੰਨਾ ਕੁ ਮੰਗਦੀ ਹੈ ਸੋ ਸਾਨੂੰ ਜੋ ਚਾਹੀਦਾ ਉਹਨਾਂ ਕ ਅਸੀਂ ਖਾਈਏ ਨਾ ਕਿ ਬਹੁਤ ਜਮਾਲ ਦਿਖਾ ਲਈਏ ਫਿਰ ਕੇ ਹজমਣਾ ਹੋਵੇ ਹੁਣ ਆਉਂ ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਤੇ ਜਾਂਦਾ ਤੇ ਦੂਜੇ ਤਾਂ ਸਾਰੇ ਢਕਾਰ ਹੀ ਮਾਰਦੇ ਰਹਿੰਦੇ ਰਾਤ ਬੁਰਾ ਹਾਲ ਹੋ ਜਾਂਦਾ ਐਸਡ ਪੇਟ ਆਪਣਾ ਹੀ ਆ ਉੱਥੇ ਧਾ ਕੇ ਤੁਸੀਂ ਉੱਥੇ ਖਲਾਦ ਵੀ ਪਈ ਆ ਉਥੇ ਹੋਰ ਚੀਜ਼ਾਂ ਵੀ ਪਈਆਂ ਤੁਸੀਂ ਉਹ ਖਾ ਲਓ ਬਿਲਕੁਲ ਜਿਉਂ ਹੀ ਚੀਜ਼ਾਂ ਜਿਹੜੀਆਂ ਖਾਣ ਫਿਰ ਜਿਹੜੇ दारू ਦੇ ਸ਼ਕੀਨ ਆ ਉਹ दारू ਪੀ ਜਾਂਦੇ ਉਤੋਂ ਮੀਟ ਖਾਈ ਜਾਂਦੇ ਤੇ ਫਿਰ ਕਹਿੰਦੇ ਜੀ ਕੋਲੇਸਟ੍ਰੋਲ ਵੱਧ ਗਿਆ ਡਾਕਟਰ ਕੋਲ ਗਏ ਸੀਗੇ ਜੇ ਡਾਕਟਰ ਨੇ ਕਿਹਾ ਤਾਂ ਕੋਲੇਸਟ੍ਰੋਲ ਤੇ ਫਿਰ ਕੋਲੇਸਟ੍ਰੋਲ ਦੀ ਗੋਲੀ ਰਾਨਲੀਪੀਟਰ ਠੀਕ ਤੇ ਜੇ ਕੋਲੇਸਟ੍ਰੋਲ ਦੀ ਗੋਲੀ ਸ਼ੁਰੂ ਹੋ ਗਈ ਤੇ ਥੋੜੇ ਦਿਨ ਖਾਦੀ ਦੇ ਉਹਦੇ ਨਾਲ ਗੈਸ ਬਣਨ ਲੱਗ ਜਾਨੀਆ ਫਿਰ ਡਾਕਟਰ ਆ ਸਵੇਰੇ ਖਾਲੀ ਪੇਟ ਸੁੱਚੇ ਮੂੰਹ ਹੈ ਨਾ ਗੈਸ ਦਾ ਕੈਪਸੂਲ ਖਾ ਲਿਆਗਾ ਗੈਸ ਲੀਵਰ ਫੈਟੀ ਹੋਣਾ ਸ਼ੁਰੂ ਹੋ ਗਿਆ ਡਾਈਜੈਸਟ ਸਿਸਟਮ ਅਫਸੈਟ ਹੋਣਾ ਸ਼ੁਰੂ ਹੋ ਗਿਆ ਫਿਰ ਉਹਦੇ ਨਾਲ ਕੀ ਹੋਇਆ ਕਿ ਕੋਲੇਸਟ੍ਰੋਲ ਜਦੋਂ ਬਣਨਾ ਸ਼ੁਰੂ ਹੋ ਗਿਆ ਫਿਰ ਹਾਰਦੀਆਂ ਨਾੜਾਂ ਬਲੌਕ ਹੋਣੀਆਂ ਸ਼ੁਰੂ ਹੋ ਗਈਆਂ ਅੱਗੇ ਤੋਂ ਅੱਗੇ ਬਿਮਾਰੀਆਂ ਫਿਰ ਇੱਕ ਨਾਲ ਇੱਕ ਫ੍ਰੀ ਹੋਣੀ ਸ਼ੁਰੂ ਹੋ ਗਈ ਤੇ ਅਜੇ ਡਾਕਟਰ ਕੋਲ ਦੋ ਚਾਰ ਵਾਰੀ ਗਏ ਤੇ ਤੇ ਤੇ ਉਤੋਂ ਬਾਅਦ ਡਾਕਟਰ ਵਿਚਾਰਾ ਪਰੇਸ਼ਾਨ ਅਗਲਾ ਤੇ ਟਰੀਟਮੈਂਟ ਐ ਲੈ ਉਹਨਾਂ ਸਟ੍ਰੈਸ ਟੈਨਸ਼ਨ ਹੋ ਗਈ ਏ ਤੇ ਤੈਨੂੰ ਸਟ੍ਰੈਸ ਦੀ ਦਵਾਈ ਦੇਣੀ ਪੈਣੀ ਉਹ ਮਰੀਜ਼ ਵਿਚਾਰੇ ਨੂੰ ਬਾਕੀ ਗੱਲਾਂ ਤਾਂ ਭੁੱਲੀ ਜਾਂਦੀਆਂ ਗੈਸ ਨੂੰ ਤੇ ਜਾਂਦਾ ਤੇ ਬਸ ਫਿਰ ਉਹ ਜਦੋਂ ਸਟ੍ਰੈਸ ਦੀ ਗੋਲੀ ਲੱਗ ਗਈ ਤੇ ਫਿਰ ਸਟ੍ਰੈਸ ਦੇ ਚੱਕਰ ਦੀ ਉਹਨੇ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ ਲੀਵਰ ਵੀ ਫੈਟੀ ਤੇ ਵੀ ਫੈਟੀ ਪੇਟ ਵੀ ਫੈਟੀ ਤੇ ਵੇਟ ਵੀ ਫੈਟੀ ਕਮਾਲ ਹਾਂ ਸੋ ਹਮੈਂ ਹਮੇਸ਼ਾ ਹੀ ਕਹਿਣਾ ਹੈ ਕਿ ਜੇ ਤੁਸੀਂ ਖਾਓ ਤਰੀਕੇ ਨਾਲ ਖਾਓ ਹਮੇਸ਼ਾ ਹੀ ਬ੍ਰੇਕਫਾਸਟ ਮਹਾਰਾਜਿਆਂ ਵਾਲਾ ਕਰੋ ਹਮ ਬ੍ਰੇਕਫਾਸਟ ਜਿਹੜਾ ਰਾਜੇ ਮਹਾਰਾਜਿਆਂ ਵਾਲਾ ਕਰੋ ਤੇ ਜਿਹੜੀ ਦੁਪਹਿਰ ਦਾ ਲੰਚ ਹੈਗਾ ਉਹ ਤੁਸੀਂ ਮੀਡੀਅਮ ਆਮ ਵਾਂਗੂ ਕਰੋ ਤੇ ਰਾਤ ਦਾ ਖਾਣਾ ਗਰੀਬਾਂ ਵਾਲਾ ਖਾਓ ਤੇ ਤੇ ਜ਼ਿੰਦਗੀ ਰਹੂਗੀ ਵਧੀਆ ਅਜੀਬ ਹਾਲਤਾਂ ਕਰਦੇ ਆ ਕਿ ਰਾਤ ਨੂੰ ਖਾਣਾ ਜਿਵੇਂ ਮਹਾਰਾਜ ਅਲਾ ਕਾ ਜਾਣ ਖਾਣੇ ਬਿਲਕੁਲ ਸੋ ਉਹਦੇ ਨਾਲ ਕੀ ਹੁੰਦਾ ਕਿ ਪੇਟ ਵੀ ਵੱਜ ਜਾਂਦਾ ਸਲੀਪ ਐਪਰ ਪ੍ਰੋਬਲਮ ਇੱਕ ਦਿਨ ਸੌਂਦਾ ਸਾਰੇ ਰੰਗ ਬਹਿ ਕੇ ਮਾਰਦੇ ਆ ਉਹਦੇ ਹਾਲਾਤ ਦੇ ਵਜੋਂਦੇ ਕਿ ਟਿਨਰ ਕਿੱਦੋਂ ਚੱਲ ਰਹੀ ਐ ਇਹ ਨਹੀਂ ਪਤਾ ਲੱਗਦਾ ਵਾਰਕ ਸੁਨੇ ਲਾ तौर पे ਮੇਰੇ ਨਾਲ ਗੱਲਬਾਤ ਕਰਨ ਲਈ ਬੈਦ ਰੂਬਲ ਜਿਨ੍ਹਾਂ ਨੂੰ ਤੁਸੀਂ ਰੂਬਲ ਬੈਦ ਕਰਕੇ ਜਾਣਦੇ ਹੋ ਉਹ ਦੱਸ ਰਹੇ ਨੇ ਤੁਹਾਡੀ ਸਿਹਤ ਤੇ ਅੱਜ ਤੋਂ ਬਾਅਦ ਇੱਕ ਹਫਤਾ ਛੱਡ ਕੇ ਆਇਆ ਕਹਿੰਗੇ ਤੇ ਕੱਲੀ-ਕੱਲੀ ਬਿਮਾਰੀ ਨੂੰ ਘੋਖ ਕੇ ਤੇ ਉਹਦਾ ਇਲਾਜ ਉਹ ਦੱਸਣਗੇ ਅੱਜ ਪਹਿਲੇ ਦਿਨ ਉਹ ਆਏ ਸਨ ਆਏ ਨੇ ਤੇ ਦੱਸ ਰਹੇ ਨੇ ਕਿ ਆਪਣੀ ਬਾਡੀ ਕਿਵੇਂ ਠੀਕ ਰੱਖਣੀ ਹੈ ਬਹੁਤ ਜਿਹੜੀ ਨੂਟ ਦਾਨੀ ਹੁੰਸੀ ਉਹਦੇ ਵਿੱਚ ਲੋਨ ਦਾਨੀ 'ਚ ਬੜਾ ਵਧੀਆ ਸਮਾਨ ਹੁੰਦਾ ਸਾਡਾ ਅਸੀਂ ਛੜਤਾ ਸਾਰਾ ਕੁਝ ਉਹ ਛੜਣ ਤੋਂ ਬਾਅਦ ਅਸੀਂ ਬਿਮਾਰੀਆਂ ਚ ਪੈ ਇੱਥੇ ਫਾਰਮਾਸਿਟਿਕਲ ਜਿਹੜੇ 카rtel ਨੇ ਉਹ ਨਹੀਂ ਤੁਹਾਨੂੰ ਨਿਕਲ ਦਿੰਦੇ ਤੁਹਾਡੀ ਬਾਡੀ ਨੂੰ ਪ੍ਰਯੋਗਸ਼ਾਲਾ ਬਣਾ ਲੈਂਦੇ ਅੱਛਾ ਵੈ ਜੀ ਆਪਣੇ ਕੋਲ 5-6 ਮਿੰਟ ਹੋਰ ਨੇ ਮੈਨੂੰ ਇਹੋ ਦੱਸੋ ਕਿ ਜੇ ਕਿਸੇ ਨੇ ਅੱਜ ਇਸ ਪਾਸੇ ਨੂੰ ਆਪਣੀ ਸਿਹਤ ਠੀਕ ਰੱਖਣ ਲਈ ਸ਼ੁਰੂਆਤ ਕਰਨੀ ਹੋਵੇ ਉਹ ਕਿੱਥੋਂ ਸ਼ੁਰੂ ਕਰੇ ਜੀ ਪਹਿਲੇ ਤੇ ਸਭ ਤੋਂ ਇਹੋੀ ਗੱਲ ਹੈ ਜੀ ਕਿ ਖਾਣਾ ਪੀਣਾ ਜਿਹੜਾ ਹੈਗਾ ਉਹ ਆਪਣਾ ਕੰਟਰੋਲ ਕਰੇ ਜੀ ਸੋ ਕਿਸੇ ਨੂੰ ਪੇਟ ਦੀ ਬਿਮਾਰੀ ਹੈ ਕੋਲੇਸਟ੍ਰੋਲ ਦੀ ਬਿਮਾਰੀ ਹੈ ਸੋ ਉਹਨਾਂ ਨੂੰ ਇਹ ਚਾਹੀਦਾ ਕਿ ਆਪਣਾ ਖਾਣ ਪੀਣ ਦਾ ਸਿਸਟਮ ਕੰਟਰੋਲ ਕਰ ਲੈ ਖੜੇ ਹੋ ਕੇ ਪਾਣੀ ਨਹੀਂ ਪੀਣਾ ਰੋਟੀ ਨਾਲ ਪਾਣੀ ਨਹੀਂ ਪੀਣਾ ਸੌਣ ਲੱਗੇ ਦੁੱਧ ਨਹੀਂ ਪੀਣਾ ਰਾਤ ਨੂੰ ਦਹੀਂ ਨਹੀਂ ਖਾਣਾ ਇਹ ਤੇ ਪੱਕਾ ਹੀ ਧਿਆ ਕਿ ਜਿਨ੍ਹਾਂ ਨੂੰ ਕੋਲੇਸਟ੍ਰੋਲ ਹੈ ਥੋੜਾ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਉਹਦੇ ਨਾਲ ਜਿਹੜਾ ਹੈਗਾ ਸਿਸਟਮ ਠੀਕ ਹੋ ਜਾਂਦਾ ਜੇ ਤੁਹਾਨੂੰ ਕੋਲੇਸਟ੍ਰੋਲ ਬਾਰ-ਬਾਰ ਤੰਗ ਕਰਦਾ ਕੰਟਰੋਲ ਨਹੀਂ ਹੁੰਦਾ ਤੇ ਕਲਵੰਜੀ ਕੋਨਿਅਨ ਸੀਡ ਜਿਹਨੂੰ ਆਪਾਂ ਕਲਵੰਜੀ ਕਹਿੰਨੇ ਕਾਲੀ ਜੀ ਹੁੰਦੀ ਹੈ ਸੋ ਅੱਧਾ ਚਮਚ ਟੀस्पून ਜਿਹੜਾ হাফ ਟੀस्पून ਅਲਦੀ ਹੁੰਦੀ ਮਾਰਨਿੰਗ ਐਮਪਟੀ ਸਟੋਮੈਕ ਖਾਲੀ ਪੇਟ ਉਹ ਤੁਸੀਂ 40 ਦਿਨ ਲੈ ਲਓ ਤੇ ਤੁਹਾਡਾ ਕੋਲੇਸਟ੍ਰੋਲ ਜਿਹੜਾ ਕੰਟਰੋਲ ਚ ਹੋ ਜਾਏਗਾ ਘਟਨਾ ਸ਼ੁਰੂ ਹੋਏਗਾ ਸੋ ਕਲਵੰਜੀ ਜਿਹੜੀ ਹੈ ਬੜੀ ਵਧੀਆ ਚੀਜ਼ ਹੈ ਅਸੀਂ ਜਿਹੜੀਆਂ ਕੋਲੇਸਟ੍ਰੋਲ ਦੀਆਂ ਗੋਲੀਆਂ ਤੇ ਚੀਜ਼ਾਂ ਬਣਾਉਣੇ ਉਹਦੇ ਵਿੱਚ ਕਲਵੰਜੀ ਦਾ ਐਕਸਟ੍ਰੈਕਟ ਪਾਉਨੇ ਆ ਸੋ ਗੰਢਿਆਂ ਦਾ ਵੀ ਤੁਹਾਡੇ ਘਰ ਦੇ ਵਿੱਚ ਹੀ ਸਭ ਕੁਝ ਹੈ ਸੋ ਇਹਨੂੰ ਜ਼ਰੂਰ ਯੂਜ਼ ਕਰਕੇ ਦੇਖਿਆ ਕਰੋ ਕਿ ਤੁਸੀਂ ਘਰ ਦੇ ਨੁਕਸੇ ਤੁਹਾਨੂੰ ਦੱਸਿਆ ਕਰਾਂਗਾ ਕਿ ਜਿਹੜਾ ਤੁਸੀਂ ਘਰ ਬੈਠੇ ਹੀ ਆਪਣਾ ਇਲਾਜ ਕਰ ਸਕਦੇ ਆ ਕਿਸੇ ਵੈਦ ਕੋਲ ਹਕੀਮ ਕੋਲ ਜਾਣ ਦੀ ਲੋੜ ਹੀ ਨਹੀਂ ਘਰ ਦਾ ਵੈਦ ਹੀ ਹੈ ਕਿਚਨ ਦੇ ਵਿੱਚ ਤੁਹਾਡਾ ਤੁਹਾਡੀਆਂ ਚੀਜ਼ਾਂ ਪਈਆਂ ਸੋ ਸੌਫ ਕੀ ਕਰਦੀ ਹੈ ਜਵੈਣ ਕੀ ਕਰਦੀ ਹੈ ਹਲਦੀ ਕੀ ਕਰਦੀ ਹੈ ਇਹਦੇ ਬਾਰੇ ਆਪਾਂ ਬਾਰੀ-ਬਾਰੀ ਸਾਰੀਆਂ ਗੱਲਾਂ ਜ਼ਰੂਰ ਕਰਦੇ ਰਿਹਾ ਕਰਾਂਗੇ ਕਿਉਂਕਿ ਤੁਹਾਡੇ ਕਿਚਨ ਦੇ ਵਿੱਚ ਹੀ ਸਾਰਾ ਸਮਾਨ ਪਿਆ ਤੁਸੀਂ ਟ੍ਰੀਟਮੈਂਟ ਕਰ ਸਕਦੇ ਆ ਜੇ ਕੋਈ ਬਹੁਤੀ ਤੁਹਾਨੂੰ ਲਾ ਲਾਜ਼ ਬਿਮਾਰੀ ਹੋ ਗਈ ਹੈ ਜਿਵੇਂ ਕੋਈ ਬਲੱਡ ਕੈਂਸਰ ਹੋ ਗਿਆ ਕਿਡਨੀਆਂ ਫੇਲ ਹੋ ਰਹੀਆਂ ਕਿਡਨੀਆਂ ਡਾਊਨ ਜਾ ਰਹੀਆਂ ਦਿਨੋਂ ਦਿਨ ਉਹਦੇ ਵਾਸਤੇ ਤੁਸੀਂ ਸਾdna ਸਲਾਹ مشورہ ضرور ਕਰ ਲਓ ਕਿਉਂਕਿ ਉਹਦੇ ਵਾਸਤੇ ਥੋੜਾ ਜਿਹਾ ਸਲਾਹ مشورہ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਵੀ ਅਸੀਂ ਤੁਹਾਨੂੰ ਆਪਣਾ ਰਸਤਾ ਦੱਸ ਦਿੰਨੇ ਆ ਕਿ ਐਸੇ ਰਸਤੇ ਚੱਲੋ ਸ਼ਾਇਦ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਵੇ ਸੋ ਬਹੁਤ ਮਰੀਜ਼ ਮੇਰੇ ਕੋਲ ਇਹੋ ਜਿਹੇ ਜਿਹੜੇ ਕਿਡਨੀਆਂ ਦੇ ਟ੍ਰੀਟਮੈਂਟ ਕਰਾ ਰਹੇ ਆ ਜਿਨ੍ਹਾਂ ਦੇ ਜਿਹੜੇ ਡਾਇਲਿਸਿਸ ਤੇ ਚਲੇ ਗਈ ਸੀ ਉਹ ਡਾਇਲਿਸਿਸ ਤੋਂ ਵਾਪਸ ਠੀਕ ਹੋ ਰਹੇ ਆ ਕੈਂਸਰ ਬੋਨ ਕੈਂਸਰ ਦੇ ਪੇਸ਼ੈਂਟ ਲਿਵਰ ਕੈਂਸਰ ਦੇ ਪੇਸ਼ੈਂਟ ਬਲੱਡ ਕੈਂਸਰ ਦੇ ਪੇਸ਼ੈਂਟ ਬ੍ਰੇਨ ਟਿਮਰ ਕੈਂਸਰ ਦੇ ਪੇਸ਼ੈਂਟ ਜਿਹੜੇ ਆ ਉਹ ਦੇਸੀ ਜੜੀਆਂ ਬੂਟੀਆਂ ਦੇ ਨਾਲ ਠੀਕ ਹੋ ਰਹੇ ਆ ਜੋ ਕੁਦਰਤ ਨੇ ਸਾਨੂੰ ਦਿੱਤੀਆਂ ਸਾਡੇ ਵਿਰਸੇ ਦੇ ਵਿੱਚ ਕੈਂਸਰ ਵੀ ਠੀਕ ਹੋ ਰਿਹਾ ਹਾਂਜੀ ਸੋ ਇਹ ਚੀਜ਼ਾਂ ਮੇਰੇ ਕੋਲ ਔਨ ਦ ਕਾਰਡ ਹੈ ਕਿਉਂਕਿ ਗੱਲਾਂ ਨਾਲ ਨਹੀਂ ਉਹ ਪੇਸ਼ੈਂਟ ਬਿਲਕੁਲ ਅਮਰੀਕਾ ਦੇ ਵਿੱਚੋਂ ਤੇ ਦੇਖੋ ਇੱਥੇ ਤੇ ਪੇਸ਼ੈਂਟ ਮੇਰੇ ਕੋਲ ਆਉਂਦੇ ਹੀ ਆਉਂਦੇ ਆ। ਸੋ ਅਮਰੀਕਾ ਦੇ ਵਿੱਚੋਂ ਜਾਂ ਆਸਟ੍ਰੇਲੀਆ ਦੇ ਵਿੱਚੋਂ ਜਾਂ ਇੱਥੋਂ ਇੰਗਲੈਂਡ ਦੇ ਵਿੱਚੋਂ ਪੇਸ਼ੈਂਟ ਜਿਹੜੇ ਆ ਟ੍ਰੀਟਮੈਂਟ ਆਉਂਦੇ ਆ ਉਹ ਸਾਡੀਆਂ ਸਾਰੀਆਂ ਲੋਕੇਸ਼ਨਾਂ ਤੇ ਜਾਂਦੇ ਆ। ਟ੍ਰਾਂਟੋ ਵਾਲੀ ਲੋਕੇਸ਼ਨ ਤੇ ਜਾਂਦੇ ਆ। ਸੋ ਇੱਥੇ ਵਾਲੀਆਂ ਲੋਕੇਸ਼ਨਾਂ ਤੇ ਆਉਂਦੇ ਆ। ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਕਿਉਂਕਿ ਜਿੱਥੇ ਸਾਡਾ ਇਹ ਵਿਰਸਾ ਚੱਲ ਰਿਹਾ ਜਿੱਥੋਂ ਅਸੀਂ ਇਹ ਲੈ ਕੇ ਆ ਰਹੇ ਆ। ਅਸੀਂ ਆਪਣੇ ਸਾਡੀ ਜਿਹੜੀ ਕੰਪਨੀ ਹੈ ਜੀਐਮਪੀ ਸਰਟੀਫਾਈਡ ਕੰਪਨੀ ਇੰਡੀਆ ਦੇ ਵਿੱਚ ਆਰ ਹੈਲਥ ਕੈਨੇਡਾ ਦੇ ਨਾਲ ਰਿਲੇਟਡ ਹੈ ਜਿੰਨਾ ਵੀ ਅਸੀਂ ਸਮਾਨ ਬਣਾਨੇ ਆ ਉਹ ਸਾਰਾ ਮਰੀਜ਼ਾਂ ਨੂੰ ਦੁਖੀਆਂ ਨੂੰ ਠੀਕ ਕਰਨ ਵਾਸਤੇ ਬਣਾਨੇ ਆ ਨਾ ਕਿ ਵੇਚਣ ਵਾਸਤੇ ਬਣਾਨੇ ਆ ਹਰ ਚੀਜ਼ ਨੂੰ ਘੂਕ ਪੜਤਾਲ ਕੇ ਪ੍ਰੋਪਰ ਤਰੀਕੇ ਦੇ ਨਾਲ ਉਹਦਾ ਡਾਇਗਨੋਸ ਕਰਕੇ ਫਿਰ ਅਸੀਂ ਜਿਹੜੀਆਂ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਉਹਨਾਂ ਦੇ ਕੰਬੀਨੇਸ਼ਨ ਸਿੰਗਲ ਹਰਬ ਦੇ ਵਿੱਚੋਂ ਤਿਆਰ ਕਰਦੇ ਆ ਸੋ ਇੱਥੇ ਲੈ ਕੇ ਆਉਂਦੇ ਆ ਸੋ ਸਾਡੀਆਂ ਸਿੰਗਲ ਹਰਬ ਦੇ ਵਿੱਚ ਕੱਲੀਆਂ-ਕੱਲੀਆਂ ਜੜੀਆਂ ਬੂਟੀਆਂ ਵੀ ਕੰਮ ਕਰਦੀਆਂ ਜਿਵੇਂ ਹਲਦੀ ਹੈ, ਨੀਮ ਹੈ, ਗਲੋ ਹੈ, ਤુલਸੀ ਹੈ, ਗੋਖੂਸ਼ਰਾ ਪਖੜਾ ਜਿਹੜਾ ਜਿਹਨੂੰ ਕਹਿੰਦੇ ਆ ਪੁਨਰਵਾਜੇ ਨੂੰ 66 ਬੂਟੀ ਕਹਿੰਦੇ ਆ ਜਾਂ ਇਹੋ ਜੀਆਂ ਹਜ਼ਾਰਾਂ ਹੀ ਜੜੀਆਂ ਬੂਟੀਆਂ ਟਕਮਲ, ਅਸ਼ੋਕਾ ਟਰੀ ਦੇ ਪੱਤੇ ਆ ਜਿਹੜੇ ਕਿ ਬੜੇ ਲੇਡੀਜ਼ ਵਾਸਤੇ ਬੜੀ ਕਾਮਯਾਬ ਚੀਜ਼ ਹੈ। ਇੱਕ ਕਹਿੰਦੇ ਹਾਰ ਸ਼ਿੰਗਾਰ ਬਹੁਤ ਵਧੀਆ ਹਾਰ ਸ਼ਿੰਗਾਰ ਜਿਹੜੇ ਲੇਡੀਜ਼ ਵਾਸਤੇ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਇਹਦੀਆਂ ਹਜ਼ਾਰਾਂ ਹੀ ਜੜੀਆਂ ਬੂਟੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਸਾਨੂੰ ਪਛਾਣ ਹੈ। ਕਿ ਹਜ਼ਾਰਾਂ ਹੀ ਜੜੀਆਂ ਬੂਟੀਆਂ ਜਿਹਨਾਂ ਤੁਹਾਨੂੰ ਪਤਾ ਆ ਤੁਹਾਡੇ ਘਰ ਦੇ ਵਿੱਚ ਹੀ ਲਗੀਆਂ ਪਰ ਇਹ ਨਹੀਂ ਪਤਾ ਹੁਣ ਤુલਸੀ ਦੇਖੋ ਘਰ ਦੇ ਵਿੱਚ ਲੱਗੀ ਹੁੰਦੀ ਹੈ ਇੱਕ ਤુલਸੀ ਪੱਦਾ ਪੱਤਾ ਹਮੇਸ਼ਾ ਖਾਣ ਦੇ ਨਾਲ ਕਦੀ ਬੰਦੇ ਨੂੰ ਕੈਂਸਰ ਨਹੀਂ ਹੁੰਦਾ ਸੋ ਦੇਖੋ ਹਾਂ ਸੋ ਇਹ ਕੁਦਰਤੀਆਂ ਦਿੱਤੀਆਂ ਹਰ ਨੂੰ ਇਸੇ ਕਰਕੇ ਪੂਜਿਆ ਜਾਂਦਾ ਮੰਦਰਾਂ ਦੇ ਵਿੱਚ ਲਗਾਇਆ ਜਾਂਦਾ ਸੀ ਕਿ ਜਦੋਂ ਕਿਚਕ ਦੀ ਬਿਮਾਰੀ ਜਾਂ ਨਮੂਨੀਆਂ ਦੀ ਬਿਮਾਰੀ ਹੋ ਜਾਂਦੀ ਹੈ ਤુલਸੀ ਵਾਲ ਕੇ ਪੀ ਲੋ ਦੋ ਚਾਰ ਵਾਰੀ ਨਮੂਨੀਆਂ ਨਮਾਨੀਆਂ ਗਿਆ ਜਾਂਦਾ ਹੀ ਨਹੀਂ ਲੱਭਦਾ ਤੁਹਾਡਾ ਇਮਿਊਨ ਸਿਸਟਮ ਵੀ ਸਟਰੋਂਗ ਹੁੰਦਾ। ਹੋਣ ਤੁਸੀਂ ਐਲੋਪੈਥੀ ਇਮੂਨੀਆਂ ਨਮੂਨੀਆਂ ਜੇ ਦਵਾਈ ਖਾਓ ਤੇ ਉਹਨਾਂ ਤੁਹਾਡਾ ਇਮਿਊਨ ਸਿਸਟਮ ਹੀ ਵੀਕ ਹੋ ਜਾਂਦਾ, ਹਮੇਸ਼ਾ ਹੀ ਜਿਹੜੀਆਂ ਚੀਜ਼ਾਂ ਮੈਂ ਦੱਸਦਾ ਇਹਨਾਂ ਨੂੰ ਤੁਸੀਂ ਸੁਣਿਆ ਕਰੋ, ਸੁਣ ਕੇ ਤੇ ਜਿਹੜੀਆਂ ਆਪਾਂ ਅੱਗੋਂ ਗੱਲਾਂ ਦੱਸਿਆ ਕਰਾਂਗੇ ਉਹਨਾਂ ਨੂੰ ਲਿਖ ਲਿਆ ਕਰੋ। ਤਾਂ ਮੈਂ ਜਨਰਲ ਨੌਲੇਜ ਦੀਆਂ ਗੱਲਾਂ, ਤੁਹਾਡੇ ਘਰ ਦੇ ਵਿੱਚ ਕਾਮਾਂ ਨਾਲੀਆਂ ਚੀਜ਼ਾਂ ਦੀਆਂ ਗੱਲਾਂ ਹੈਗੀਆਂ। ਸੋ ਇਹ ਜਿੰਨੀਆਂ ਅਸੀਂ ਦੱਸਦੇ ਆ, ਜੜੀਆਂ ਬੂਟੀਆਂ ਦੱਸਦੇ ਆ, ਸੋ ਇਹਨਾਂ ਦੇ ਬਹੁਤ ਫਾਇਦੇ ਆ। ਅਸੀਂ ਕੋਈ ਵੀ ਸਮਾਨ ਜਿਹੜਾ ਹੈਗਾ ਉਹ ਇਦਾਂ ਨਹੀਂ ਦਿੰਦੇ ਕਿ ਸਾਡੇ ਕਾਊਂਟਰ ਤੋਂ ਆ ਕੇ ਤੁਸੀਂ ਲੈ ਜਾਓ ਜੀ ਸੋ ਅਸੀਂ ਬੀਜ ਨੂੰ ਦੇਖ ਕੇ ਦੁਖੀ ਨੂੰ ਦੇਖ ਕੇ ਫਿਰ ਉਹਦਾ ਡਾਇਗਨੋਸ ਕਰਕੇ ਉਹਨੂੰ ਪੂਰੀ ਗੱਲਬਾਤ ਪੁੱਛ ਕੇ ਉਹਨੂੰ ਦੱਸ ਕੇ ਫਿਰ ਅਸੀਂ ਤਿਆਰ ਕਰਦੇ ਇਹ ਸਾਡਾ ਮੇਨ ਮਨੋਰਥ ਇਹ ਨਹੀਂ ਹੈ ਕਿ ਅਸੀਂ ਸਾਡੇ ਕੋਲ ਚੀਜ਼ਾਂ ਹੀ ਰਜਿਸਟਰਡ ਕਰਾ ਲਈਆਂ ਤੇ ਅਸੀਂ ਤੁਹਾਡੇ ਤੇ ਵੇਚਣੀ ਆਈਆਂ ਸੋ ਜੇ ਕੋਈ ਵੇਚਣ ਵਾਲੀ ਗੱਲ ਆ ਜਾਂਦੀ ਹੈ ਤੇ ਫਿਰ ਬੜੀ ਲੰਬੀ ਗੱਲ ਹੋ ਜਾਂਦੀ ਹੈ ਫਿਰ ਉਹਦੇ ਵਿੱਚ ਕੁਝ ਨਹੀਂ ਰਹਿੰਦਾ ਬਿਲਕੁਲ ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਕਿ ਠੀਕ ਕਰਨ ਵਾਸਤੇ ਹੁਣ ਸਪੋਜ ਕਰ ਲਓ ਚਮਚਾ ਚਮਚਾ ਸੁਵੇਰੇ ਸ਼ਾਮ ਖਾਣੇ ਹੁਣ 300 ਰੁਪਏ ਕਿਲੋ ਚਾਵਲ ਪ੍ਰਾਸ਼ ਇੰਡੀਆ 'ਚ ਮਿਲਦਾ ਹੋਸਟੇਲ ਦੇ ਵਿੱਚ 250 ਰੁਪਏ ਕਿਲੋ ਹੂੰ ਸੋ ਰੁਪਏ ਕਿਲੋ ਦੇ ਵਿੱਚ ਉਹਦੇ 'ਚ 30 ਰੁਪਏ ਕਿਲੋ ਦਾ ਸਾਮਾਨ ਰਹਿ ਜਾਂਦਾ ਬਾਕੀ ਸਾਰਾ ਉਹਦੇ ਵਿੱਚ ਪ੍ਰਾਫਿਟ ਚਲੇ ਜਾਂਦਾ ਸਾਰਾ ਕੰਪਨੀਆਂ ਨੂੰ ਕੱਲੀ-ਕੱਲੀ ਗੱਲ ਮੈਂ ਗਿਣੀ ਹੈ ਕਿ 50 ਰੁਪਏ ਉਹਦੇ ਦੇ ਟਰਾਂਸਪੋਰਟੇਸ਼ਨ ਖਰਚ ਹੈ 50 ਰੁਪਏ ਡੱਬੇ ਦਾ ਖਰਚ ਹੈ ਦਾ ਖਰਚ ਹੈ ਰੁਪਏ ਉਹਦੇ ਤੇ ਟੈਕਸ ਪੈ ਜਾਂਦੇ ਆ ਤੇ ਬਾਕੀ ਉਹਦੇ ਕੰਪਨੀ ਦਾ ਪ੍ਰਾਫਿਟ ਹੋਲ ਦਾ ਪ੍ਰਾਫਿਟ ਰਿਟੇਲਰ ਦਾ ਪ੍ਰਾਫਿਟ ਸਾਰਾ ਖਰਚ ਜਿਹੜੇ ਰੁਪਏ ਦਾ ਮਿਲਦਾ ਜਾਂਦਾ ਤੇ 30 ਰੁਪਏ ਕਿਲੋ ਖੰਡ ਨਹੀਂ ਮਿਲਦੀ ਤੇ ਵਿੱਚ ਤੁਸੀਂ ਕੀ ਖਾਓਗੇ ਜਿਹੜਾ ਫੋਕ ਅਸੀਂ ਆਮਲੇ ਦਾ ਰਸ ਕੱਢ ਕੇ ਦੇਣਦੇ ਆ ਉਹਨੂੰ ਪਾ ਦਿੰਦੇ ਆ ਉਹ ਕੰਪਨੀਆਂ 5 ਰੁਪਏ ਕਿਲੋ ਸਾਡੇ ਕੋਲੋਂ ਖਰੀਦ ਕੇ ਉਹਦੇ ਵਿੱਚ ਖੰਡ ਪਤਾ ਨਹੀਂ ਕੀ ਪਾਉਂਦੇ ਆ ਜੇ ਤੁਸੀਂ ਚਾਵਲ ਪਰਾਠ ਘਰ ਬਣਾਓ ਤੇ ਤੁਹਾਨੂੰ 4000 ਰੁਪਏ ਕਿਲੋ ਘਰ ਪਏਗਾ ਤੇ ਮਿਹਨਤ ਨਹੀਂ ਉਹਦੇ ਚਾਵਲ ਪਰਾਠ ਦਾ ਸੋ ਅਸੀਂ ਚੀਜ਼ਾਂ ਵੇਚਣ ਵਾਸਤੇ ਨਹੀਂ ਬਣਾਉਂਦੇ ਸੋ ਹਾਂਜੀ ਹਾਂਜੀ ਪੂਰਾ ਕਰ ਲੋ ਤੇ ਫੋਨ ਨੰਬਰ ਦੇ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਅਸੀਂ ਬਣਾਨੇ ਆ ਉਹ ਸਾਰੀਆਂ ਦੁਖੀਆਂ ਨੂੰ ਠੀਕ ਕਰਨ ਵਾਸਤੇ ਬਣਾਨੇ ਆ ਭੈਣ ਭਰਾਵਾਂ ਨੂੰ ਠੀਕ ਕਰਨ ਵਾਸਤੇ ਬਣਾਨੇ ਆ ਸੋ ਜੇ ਕਿਸੇ ਨੇ ਸਾਡੇ ਨਾਲ ਕੋਈ ਸਲਾਹ مشورہ ਕਰਨਾ ਹੋਵੇ ਸਾਨੂੰ ਮਿਲਣਾ ਹੋਵੇ ਤੇ ਮਿਲਣ ਵਾਸਤੇ ਮੈਂ ਹਮੇਸ਼ਾ ਹੀ ਕਹਿਣਾ ਕਿ ਸਾਡਾ ਇਲਾਜ ਦੇਸੀ ਹੈ ਪ੍ਰਭਲ ਆਯੁਰਵੈਦਿਕ ਹੈ ਸਲੋ ਹੈ ਤੇ ਪਰਮਾਨੈਂਟ ਹੈ ਜੀ ਪਰ ਜਦੋਂ ਵੀ ਸਾਡੇ ਕੋਲ ਆਣਾ ਤੇ ਠੰਡੇ ਤੇ ਅਰੀਜਨਲ ਆਣਾ ਪੈਣਾ ਪਹਿਲੇ ਤਾਂ ਫਿਰ ਜਨਲ ਵੇਟ ਕਰਨੀ ਪੈਣੀ ਹੈ ਤੇ ਫਿਰ ਤੁਹਾਡਾ ਇਲਾਜ ਵੀ ਠੰਡੇ ਜਨਲ ਨਾਲ ਹੀ ਹੋਣਾ ਰੈਡੀ ਹੋਣਾ ਹਾਂ ਦਿਮਾਗ ਤੇ ਰੈਡੀ ਹੋਣਾ ਤੇ ਇਲਾਜ ਵੀ ਲੰਬਾ ਚੱਲੇਗਾ ਜੇ ਤੁਸੀਂ 10-20 ਸਾਲ ਦੀ ਬਿਮਾਰੀ ਜੜੋ ਗਵਾਣੀ ਹੈ ਤੇ ਫਿਰ ਤੁਹਾਨੂੰ ਜਰੂਰ ਠੰਡੇ ਜਿਹਰੇ ਨਾਲ ਸਾਡੇ ਕੋਲ ਆਣਾ ਪਏਗਾ ਸਾਡਾ ਜਿਹੜਾ ਕਲੀਨਿਕ ਹੈ ਏਵਲ ਹਰਬਲ ਆਯੁਰਵੈਦਿਕ ਕਲੀਨਿਕ ਜਿਹੜਾ ਕੈਨੇਡਾ ਦੇ ਵਿੱਚ ਰਜਿਸਟਰਡ ਤੇ 604 445 470 ਉਹਦਾ ਤੁਸੀਂ ਸਾਡਾ ਨਲਬਾਟ ਕਰ ਸਕਦੇ ਆ 905 874 333 ਬ੍ਰਮਦੰਗਾ ਨੰਬਰ ਜਿਹੜੀਆਂ ਬੁੱਧ ਤੇ ਵੀਰਵਾਰ ਵਾਲੇ ਦਿਨ ਅਸੀਂ ਬੰਦ ਹੁੰਨੇ ਹਮੇਸ਼ਾ ਹੀ ਜੀ ਤੇ ਜੇ ਤੁਸੀਂ ਸਾਡੀ ਬਹੁਤੀ ਇਨਫੋਰਮੇਸ਼ਨ ਲੈਣੀ ਹੈ ea1herbal.ca ਤੇ ਜਾ ਕੇ ਤੁਸੀਂ ਆਪਣੀ ਬਿਮਾਰੀ ਆਪ ਹੀ ਸੁਣ ਸਕਦੇ ਆ ਆਪ ਹੀ ਲੱਭ ਸਕਦੇ ਤੇ ਉਹਦਾ ਟਰੀਟਮੈਂਟ ਵੀ ਸਾਨੂੰ ਪੁੱਛ ਸਕਦੇ ਆ ਪ੍ਰੋਪਰ ਚੈਨਲ ਹੈ ਇੱਕ ਉਦੇ ਉੱਤੇ ਤੁਸੀਂ ਵੀਡੀਓ ਤੇ ਕਲਿੱਕ ਕਰੋਗੇ ਤੇ ਤੁਹਾਨੂੰ ਸਾਰੀਆਂ ਬਿਮਾਰੀਆਂ ਜਿਹੜੀਆਂ ਬੜੇ ਸਰਲ ਦੇ ਜਿਹੜੀਆਂ ਕੀਤੀਆਂ ਸਾਡੀ ਫੈਕਟਰੀ ਵੀ ਤੁਹਾਨੂੰ ਕਿੱਦਾਂ ਜੰਗਲਾਂ ਚੋਂ ਲਿਆਉਂਦੇ ਆ ਤੁਸੀਂ ਉਹ ਵੀ ਦੇਖ ਸਕਦੇ ਸੋ ਉਹ ਸਾਰੀਆਂ ਇਨਫਰਮੇਸ਼ਨ ਜਿਹੜੀ ਸਾਡੀ ਵੈਬਸਾਈਟ ਦੇ ਉੱਤੇ ਪੂਰੀ ਹੈਗੀ ਐ ਸੋ ਕਿਸੇ ਵੇਲੇ ਵੀ ਤੁਸੀਂ ਸਾਡੇ ਨਾਲ ਕੋਈ ਪ੍ਰੋਬਲਮ ਖੜੀ ਹੁੰਦੀ ਹੈ ਘਰ ਬੈਠਿਆਂ ਤੁਹਾਡਾ ਇਲਾਜ ਨਹੀਂ ਹੁੰਦਾ ਤੇ ਤੁਸੀਂ ਸਾਡੇ ਕੋਲ ਆ ਕੇ ਅਪਾਇੰਟਮੈਂਟ ਬਣਾ ਕੇ ਤੇ ਸਾਡੇ ਨਾਲ ਜ਼ਰੂਰ ਰਾਤ ਕਾਇਮ ਕਰ ਸਕਦੇ ਆ ਤੇ ਅਸੀਂ ਤੁਹਾਡੀ ਦੇਵਾ ਦੇ ਵਿੱਚ ਹਾਜ਼ਰ ਦੁਆਇਆਂ ਦੇ ਨਾਲ ਦੁਆਮ ਕਰਦੇ ਆ ਕਿ ਤੁਸੀਂ ਤੰਦਰੁਸਤ ਰਹੋ ਪਰਮਾਤਮਾ ਕੋ ਇਹੋ ਜਿਹੇ ਅਰਦਾਸਾਂ ਕਰਦੇ ਆ ਕਿ ਤੁਸੀਂ ਤੰਦਰੁਸਤ ਰਹੋ ਹਮੇਸ਼ਾ ਹੀ ਚੰਗਾ ਖਾਓ ਦੇਸੀ ਖਾਓ ਰੋਗ ਭਜਾਓ ਤੇ ਤੰਦਰੁਸਤੀ ਪਾਓ ਦੇ ਨਾਰੇ ਦੇ ਨਾਲ ਹੀ ਜੇ ਕੋਈ ਵੱਧਕੱਟ ਗੱਲ ਬੋਲੀ ਗਈ ਹੋਵੇ ਤੇ ਖਿਮਾ ਦੇ ਜਾਚੇਗਾ ਮਾਫੀ ਦੇਣਾ ਸੋ ਜ਼ਿਆਦਾ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੱਲਬਾਤ ਕਰਕੇ ਗਏ ਦੇ ਇਕ ਵੀਰਵਾਰ ਛੱਡ ਕੇ ਆਇਆ ਕਰਨਗੇ ਅਗਲੇ ਵੀਰਵਾਰ ਨੂੰ ਇੱਕ ਕਿਸੇ ਖਾਸ ਬਿਮਾਰੀ ਬਾਰੇ ਪੂਰਾ ਜਿਹੜਾ ਅੱਧਾ ਘੰਟਾ 35 ਮਿੰਟ ਉਹ ਪੂਰੀ ਉਸ ਬਿਮਾਰੀ ਬਾਰੇ ਗੱਲਬਾਤ ਕਰਾਂਗੇ ਧੰਨਵਾਦੀ ਤੁਹਾਡਾ ਥੈਂਕ ਯੂ ਸੋ ਸਤਿ ਸ਼੍ਰੀ ਅਕਾਲ ਤੁਸੀਂ ਬਦਰੂਪ ਬਲੌਣਾ ਨਾਲ ਗੱਲਬਾਤ ਕਰਕੇ ਹਟਿਓਂ ਪਹਿਲਾਂ ਪਲੇਠਾ ਪ੍ਰੋਗਰਾਮ 'ਚ ਜਨਰਲ ਗੱਲ ਕੀਤੀ ਹੈ ਤੇ ਆਉਣ ਵਾਲੇ ਇੱਕ ਵੀਕ ਛੱਡ ਕੇ ਹਰ ਥਰਸਡੇ ਨੂੰ ਇੱਕ ਖਾਸ-ਖਾਸ ਬਿਮਾਰੀ ਬਾਰੇ ਖੁੱਲ ਕੇ ਗੱਲਬਾਤ ਹੋਏਗੀ ਇਹ ਬਿਮਾਰੀਆਂ ਕੀ ਨੇ ਤੇ ਇਹਨਾਂ ਦੇ ਇਲਾਜ ਕੀ ਨੇ ਵੇਖੋ ਜਿਹੜੇ ਉਹ ਜੇਸੀ ਇਲਾਜ ਦੀ ਤੁਹਾਨੂੰ ਗੱਲ ਕਰਦੇ ਆ ਉਹ ਇਲਾਜ ਨੇ ਜਿਹੜੇ ਉਹਨਾਂ ਨੂੰ ਸਮਾਂ ਲੱਗਦਾ ਸਮੇਂ ਤੋਂ ਬਾਅਦ ਫਿਰ ਉਹ ਇਲਾਜ ਕੰਮ ਕਰ ਸਕਦੇ ਨੇ ਇਹ ਬਹੁਤ ਵੱਡਾ ਇੱਕ ਵਿਸ਼ਾ ਹੈ ਕਿਉਂਕਿ ਲੋਕ ਆਯੁਰਵੇਦ ਤੋਂ ਭੱਜੇ ਤਾਂ ਕਿ ਆਯੁਰਵੇਦ ਦੇ ਵਿੱਚ ਪੰਜਾਬ ਦੇ ਵਿੱਚ ਬੈਠੇ ਨੀਯਮ ਹਕੀਮਾਂ ਨੇ ਪੀ ਪੀ ਕੇ ਦਵਾਈਆਂ ਦਾ ਸੱਤਿਆਦਾਸ ਕਰ ਦਿੱਤਾ ਤੇ ਲੋਕਾਂ ਲੋਕ ਲੈ ਕੇ ਪੂਰੀ ਪਹਮੀਰੀਆਂ ਨੂੰ ਨੱਚਦੇ ਫਿਰਦੇ ਤੇ ਫਿਰ ਡਾਊਨ ਹੋ ਜਾਂਦੇ ਸਰੀਰ ਤੇ ਉਹਦੇ ਕਰਕੇ ਇਹ ਮੁਸ਼ਕਲਾਂ ਆਈਆਂ ਤੇ ਲੋਕ ਇਸ ਚੀਜ਼ ਤੋਂ ਪਰਾ ਹਟ ਗਏ ਪਰ ਪੁਰਾਣੇ ਵੈਰ ਜਿਹੜੇ ਪੀੜੀ ਦਰ ਪੀੜੀ ਤੁਰੇ ਆਉਂਦੇ ਐ ਉਹਨਾਂ ਨੂੰ ਹਾਲੇ ਵੀ ਜਾਣਕਾਰੀ ਐ ਤੇ ਉਹ ਹਾਲੇ ਵੀ ਤੁਹਾਨੂੰ ਤਕੜੇ ਕਰਦੇ ਤੇ ਬਹੁਤ ਲੋਕ ਠੀਕ ਹੋ ਰਹੇ ਨੇ ਇਹ ਇੱਕ ਦਿਹਾੜੀ ਦਾ ਕੰਮ ਨਹੀਂ ਇਹ ਸਿੱਖਣ ਨੂੰ ਵਕਤ ਲੱਗਦਾ ਨਵਜ ਨਬਜ਼ ਵੇਖਣ ਤੋਂ ਫਿਰ ਤੁਹਾਡੇ ਰੋਗ ਜਿਹੜੇ ਨੇ ਤੁਹਾਨੂੰ ਦੱਸ ਕੇ ਸਾਹੀ ਤਿੰਨ ਤਿੰਨ ਮਹੀਨੇ ਦੀ ਵੇਟ ਆ ਪਲੀਜ਼ ਤੁਸੀਂ ਤੁਹਾਡੇ ਹੁਣ ਫੋਨ ਬਹੁਤ ਆ ਰਹੇ ਨੇ ਅਪਾਇੰਟਮੈਂਟ ਲੈਣ ਲਈ ਵੇਖੋ ਉਹਨਾਂ ਦੇ ਦਫ਼ਤਰੀ ਕੰਮ ਦੇ ਵਿੱਚ ਮੈਂ ਦਖਲਅੰਦਾਜ਼ੀ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇਸ ਸ਼ੋਭਾ ਨਹੀਂ ਦਿੰਦਾ ਮੈਂ ਨਹੀਂ ਕਹਿ ਸਕਦਾ ਵੀ ਕਿਸੇ ਦੀ ਵਾਰੀ ਕੱਟ ਕੇ ਤੁਸੀਂ ਇਹਨੂੰ ਅੱਗੇ ਕਰਦੇ ਹੋ ਉਹ ਹੈ ਸਿਸਟਮ ਦੇ ਰਾਹੀਂ ਉਹ ਤੁਹਾਨੂੰ ਜਾਣਾ ਪੈਣਾ ਆ ਪਲੀਜ਼ ਮੈਨੂੰ ਉੱਥੇ ਨਾ ਖੜਾਓ ਹੁਣ ਮੈਂ ਤੁਹਾਨੂੰ ਨਾ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਕੋਈ 3 ਮਹੀਨੇ ਦੀ ਦੋ ਦੀ ਵੇਟ ਕਰ ਰਿਹਾ ਉਦੋਂ ਅੱਗੇ ਮੈਂ ਤੁਹਾਨੂੰ ਨਹੀਂ ਖੜਾ ਸਕਦਾ ਆਪਣੇ ਤੌਰ ਤੇ ਕੋਸ਼ਿਸ਼ ਕਰ ਲਓ ਛੇਤੀ ਤੁਹਾਨੂੰ ਵਰਦੀ ਜਿਹੜੀ ਵਾਰੀ ਦੇ ਨਾਲ ਹੀ ਪਹਿਲਾਂ ਉਹ ਨੰਬਰ ਦਿੰਦੇ ਸੀ ਨੰਬਰ ਕਰਕੇ ਇਕੱਠੇ ਹੋਣ ਲੱਗ ਗਿਆ ਸਕਾਟ ਰੋਡ ਤੇ ਲੋਕਾਂ ਨੂੰ ਬੈਹਿਣ ਨੂੰ ਔਖਾ ਹੋਣਾ ਹੋ ਗਿਆ ਸ਼ੁਰੂ ਹੋ ਗਿਆ ਵੇਟ ਕਰਦੇ ਸੀ ਹੁਣ ਅਪਾਇੰਟਮੈਂਟ ਦੇ ਹਿਸਾਬ ਦੇ ਨਾਲ ਤੁਸੀਂ ਉਹਨਾਂ ਨੂੰ ਵੇਖ ਸਕਦੇ ਲੋਕ ਠੀਕ ਹੋ ਰਹੇ ਨੇ ਟੈਸਟੀਮੋਨੀਜ਼ ਇੱਕ ਜਗ੍ਹਾ ਨਹੀਂ ਬਹੁਤ ਲੋਕਾਂ ਨੇ ਦੱਸਿਆ ਕਿ ਅਸੀਂ ਠੀਕ ਹੋ ਰਹੇ ਹਾਂ ਜ਼ਿੰਦਗੀ ਦਾ ਜਿਹੜਾ ਦੁੱਖ ਹੈ ਉਹ ਬਹੁਤ ਔਖਾ ਹੈ ਦੁੱਖ ਤੋਂ ਜੇ ਬਾਹਰ ਨਿਕਲੋਗੇ ਤਾਂ ਚੀਜ਼ਾਂ ਠੀਕ ਨੇ ਹੁਣ ਸਰਦ ਗੁਰਿੰਦਰ ਸਿੰਘ ਖਾਲੀ ਮੇਰੇ ਨਾਲ ਕਲਕੱਤਾ ਤੋਂ ਉਹਨਾਂ ਦਾ ਪਿਛੋਕੜ ਆ ਰਹਿੰਦੇ ਇੰਗਲੈਂਡ ਦੇ ਵਿੱਚ ਨੇ ਪਿਛਲੇ ਦਿਨਾਂ ਦਾ ਉਹਨਾਂ ਦਾ ਨਾਂ ਬਹੁਤ ਚਰਚਾ ਦੇ ਵਿੱਚ ਹੈ ਸਿਰਫ ਤੇ ਸਿਰਫ ਉਹਨਾਂ ਦੀ ਕੋਠੀ ਦੇ ਵਿੱਚ ਕੇਸਰੀਵਾਲ ਰਾਤ ਰਹਿ ਗਿਆ ਇੱਕ ਤੇ ਉੱਥੋਂ ਰੌਲਾ ਪੈ ਗਿਆ ਕੈਪਟਨ ਹੋੜੀ ਤੇ ਅਕਾਲੀ ਦਲ ਸਿੱਧਾ ਸ਼ਬਦੀ ਹਮਲੇ ਅਤਵਾਦੀਆਂ ਦੇ ਘਰੇ ਰਹਿ ਗਿਆ ਜੀ ਖਾਲਸਤਾਨ ਕਮਾਂਡੋ ਫੋਰਸ ਤੇ ਅਸਲ ਚ ਕਹਾਣੀ ਕੀ ਹੈ ਇਹਦੇ ਲਈ ਗੁਰਿੰਦਰ ਸਿੰਘ ਖਾਲੀ ਮੇਰੇ ਨਾਲ ਗੱਲਬਾਤ ਕਰਨਗੇ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਦੇ ਲਈ ਆਥਣ ਦਾ ਕੰਮ ਹੈ ਬੰਦੇ ਥੱਕੇ ਹੁੰਦੇ ਘਰੇ ਪਹੁੰਚਦੇ ਪਰ ਮੈਨੂੰ ਇਸ ਦੇ ਲਈ ਗੱਲ ਤੁਹਾਡੇ ਨਾਲ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਇਹ ਗੱਲ ਬਹੁਤ ਤੇਰੀ ਦੇ ਨਾਲ ਉੱਥੇ ਮੰਗੀ ਹੋਈ ਹੈ ਮੈਨੂੰ ਵੋਟਾਂ ਪੈ ਜਾਣੀਆਂ ਨੇ ਚਾਰ ਫਾਰਮੀਆਂ ਨੂੰ ਗੱਲ ਮੁੱਕ ਜਾਣੀਆਂ ਭਾਈ ਸਾਹਿਬ ਪਰ ਜਿਹੜੀਆਂ ਚੀਜ਼ਾਂ ਬਾਹਰ ਆ ਰਹੀਆਂ ਨੇ ਉਸ ਚੀਜ਼ ਦੇ ਕਈ ਵਾਰ ਦੁੱਖ ਪੈ ਜਾਂਦਾ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਤੁਹਾਨੂੰ ਮੁਰਮੁਰ ਕੇ ਕੁਝ ਨਾ ਕੁਝ ਗਰਦਾਨ ਰਹੇ ਨੇ ਉਹ ਕਲੀਅਰ ਕਰਨੀ ਮੈਂ ਚਾਹੁੰਦਾ ਪਹਿਲਾਂ ਤਾਂ ਆਪਣਾ ਪਿਸ਼ੋਕਰ ਦੱਸੋ ਜੀ ਪਿੰਡ ਆਪਣਾ ਕਿਹੜਾ ਤੇ ਉਹ ਕੋਠੀ ਕਿੱਥੇ ਹੈ ਜਿਹਦਾ ਰੌਲਾ ਪੈ ਰਿਹਾ ਹਾਂ ਜੀ ਮੇਰਾ ਪਿੰਡ ਜੇ ਪਿਛਲਾ ਪਿੰਡ ਹੈ ਜੀ ਮੋਗੇ ਦੇ ਨਾਲ ਹੀ ਆ ਬਿਲਕੁਲ ਜਦੀ ਸਾਡਾ ਪਿੰਡ ਦੂਜਾ ਘੱਲ ਕਲਰ ਔਰ ਸਾਡੀ ਜ਼ਮੀਨ ਪਿੰਡ ਧਰਮ ਸਿੰਘ ਵਾਲਾ ਤਹਿਸੀਲ ਧਰਮਕੋਟ ਦੇ ਵਿੱਚ ਹੈਗਾ ਜੀ ਤੇ ਕੋਠੀ ਮੇਰੀ ਟੀਚਰ ਕਲੋਨੀ ਮੋਗਾ ਦੇ ਵਿੱਚ ਹੈ ਜੀ ਅੱਛਾ ਜੀ ਹਾਂ ਜੀ ਮੈਨੂੰ 1990 ਦਾ ਮੈਂ ਬਾਹਰ ਆਇਆ 1991 ਦੇ ਵਿੱਚ ਮੈਂ ਇੰਗਲੈਂਡ ਆਇਆ ਜੀ ਮੇਰਾ ਇੱਥੋਂ ਦਾ ਮੈਂ ਬ੍ਰਿਟਿਸ਼ ਆਪਣਾ ਸਿਟੀਜ਼ਨ ਆ ਤੇ ਮੇਰਾ ਕਿ ਅੱਜ ਤੱਕ ਕਿਸੇ ਵੀ ਐਂਟੀ ਸੋਸ਼ਲ ਐਕਟੀਵਿਟੀ ਨਾਲ ਕਦੀ ਕੋਈ ਸਬੰਧ ਨਹੀਂ ਰਿਹਾ ਤੇ ਮੇਰੇ ਤੇ ਇਹਨਾਂ ਨੇ 1997 ਦੇ ਵਿੱਚ ਮੇਰੇ ਝੂਠਾ ਕੇਸ ਇਹਨਾਂ ਨੇ ਪਾਇਆ ਸੀਗਾ ਜਿਹਦੇ ਵਿੱਚ ਮੈਂ 7 ਸਾਲ ਪੀਓ ਰਿਆ ਸਰ ਉਸ ਤੋਂ 7 ਸਾਲ ਪੀਓ ਤੋਂ ਰਹਿਣ ਤੋਂ ਬਾਅਦ ਮੈਂ ਜਾ ਕੇ ਪੇਚ ਹੋਇਆ ਔਰ ਪੇਚ ਹੋ ਕੇ ਮੈਂ ਬਾਅਦ ਜੇ ਤੇ ਕੇਸ ਦੇ ਵਿੱਚੋਂ ਮੈਂ ਬਰੀ ਹੋਇਆ ਉਦੋਂ ਦਾ ਮੈਂ ਆਉਂਦਾ ਜਾਂਦਾ ਰਹਿਣਾ ਮੇਰੇ ਤੇ ਕਦੀ ਕੋਈ ਐਦਾਂ ਦੀ ਕਦੀ ਮੈਂ ਸੋਚ ਵੀ ਨਹੀਂ ਸਕਦਾ ਵੀ ਮੈਂ ਗਵਾਂ ਦੀਆਂ ਪੁੱਛਾਂ ਜਿਹੜਾ ਇਹ ਤਾਂ ਮਤਲਬ ਹਰ ਕੌਰ ਬੀਬੀ ਜੀ ਬੜੇ ਵੀ ਬੜੇ ਚਲਾ ਚਲਾ ਕੇ ਕਹਿ ਰਹੇ ਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜੋ ਸਾਡੇ ਮੂੰਹੋਂ ਵੀ ਨਹੀਂ ਨਿਕਲ ਸਕਦੇ ਤੇ ਅਸੀਂ ਉਹਨਾਂ ਦੀ ਬੇਅਦਬੀ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਜੇ ਅਸੀਂ ਕਰਨੀ ਤਾਂ ਇੱਕ ਵੱਖਰੀ ਗੱਲ ਆ ਔਰ ਮੇਰੇ ਤੇ ਕੋਈ ਵੀ ਇਦਾਂ ਦਾ ਕੋਈ ਕੇਸ ਨਹੀਂ ਕੋਈ ਐਫ ਆਈ ਆਰ ਨਹੀਂ ਸਿਰਫ ਗੱਲ ਇਹ ਹੋਈ ਆ ਜੀ ਵੀ ਇੱਥੇ ਟ੍ਰਾਂਟੋ ਤੋਂ ਮੇਰੇ ਦੋਸਤ ਸੀਗੇ ਸਰਦਾਰ ਸਦਨਾਰਨ ਸਿੰਘ ਜੀ ਉਹ ਤੇ ਹੈਗੇ ਆ ਐਨ ਆਰ ਆਈ ਮੇਰੇ ਕੋਲੇ ਆਉਂਦੇ ਜਾਂਦੇ ਰਹਿੰਦੇ ਜੀ ਉੱਥੇ ਉਹਨਾਂ ਨੇ ਆ ਕੇ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਜਿੰਨੇ ਐਨ ਆਰ ਆਈ ਉਹ ਆਪ ਆਲਿਆਂ ਨੂੰ ਸਪੋਰਟ ਕਰਦੇ ਆ ਹੋਰ ਕੋਈ ਫਰੰਟ ਉੱਥੇ ਦੱਸਦਾ ਨਹੀਂ ਸੀ ਜਿਹੜਾ ਕੋਈ ਸਾਡੇ ਪੰਜਾਬ ਨੂੰ ਵੀ ਜਿਹੜਾ ਕੋਈ ਅੱਗੇ ਅੱਗੇ ਲਿਜਾ ਸਕੇ ਐਨਆਰਆਈਆਂ ਨੇ ਇਸੇ ਕਰਕੇ ਸੀਗਾ ਵੀ ਅਸੀਂ ਪੰਜਾਬ ਨੂੰ ਪੰਜਾਬ ਬਣਾਈਏ ਉਹ ਉਹ ਆਪਣੀ ਕੋਠੀ ਦੇ ਵਿੱਚ ਰਹਿੰਦੇ ਸੀਗਾ ਜੀ ਉਹਨਾਂ ਸਾਹਿਬ ਨੂੰ ਉੱਥੇ ਕਹਿ ਦਿੱਤਾ ਵੀ ਜੇ ਤੁਸੀਂ ਰਾਤ ਰਹਿਣਾ ਤੇ ਇਸ ਕੋਠੀ ਦੇ ਵਿੱਚ ਰਹਿ ਪਵੋ ਉਹ ਰਹਿ ਗਏ ਨੇ ਉੱਥੇ ਰਹਿਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਬਵਾਲ ਖੜਾ ਕਰਤਾ ਵੀ ਇਹਦੇ ਤੇ ਬੰਬ ਕਾਣ ਦੇ ਕੇਸ ਆ ਜੀ ਇਹ ਇਹ ਤਾਂ ਇਥੇ ਮਤਲਬ ਗਉਆਂ ਦੀਆਂ ਪੂਛਾਂ ਤੋਂ 2008 ਦੇ ਵਿੱਚ ਸਿੱਟੀਆਂ ਜੀ ਇਹਨਾਂ ਦੇ ਦੂਜੇ ਬੰਬ ਕਾਣ ਦੇ ਹੋਰ ਕੇਸ ਆ ਜੀ ਇਹਨਾਂ ਦੇ ਮਤਲਬ ਐਦਾਂ ਦਾ ਬਹੁਤ ਕੂੜ ਪ੍ਰਚਾਰ ਕੀਤਾ ਜਿਹਦੇ ਨਾਲ ਮੇਰਾ ਦੂਰ ਦਾ ਵੀ ਸੀ ਹਾਂ ਜੇ ਮੇਰੇ ਤੇ ਕੋਈ ਕੇਸ ਉੱਤੇ ਹੋਊਗਾ ਮੇਰਾ ਜਾਤੀ ਕੋਈ ਪਰਿਵਾਰਕ ਮੇਰੇ ਤੇ ਕੋਈ ਹੋ ਸਕਦਾ ਪਰ ਐਂਟੀਜ਼ ਹੋ ਐਕਟੀਵਿਟੀ ਦਾ ਮੇਰਾ ਕਿਸੇ ਕਿਸੇ ਨਾਲ ਕੋਈ ਸਬੰਧ ਨਹੀਂ ਬਿਨਾ ਕਿਸੇ ਬਿਨਾ ਕੋਈ ਛਾਣ ਬੀਣ ਕੀਤਿਆਂ ਤੋਂ ਇਹਨਾਂ ਨੇ ਮੈਨੂੰ ਮੇਰੇ ਤੇ ਐਡਾ ਵੱਡਾ ਇਲਜ਼ਾਮ ਲਾਇਆ ਮੈਂ ਸੋਚ ਤੱਕ ਵੀ ਨਹੀਂ ਸਕਦਾ ਸੀਗਾ ਵੀ ਜਿਹੜੀ ਅੱਜ ਦੀ ਪੋਲਟਿਕਸ ਆ ਵੀ ਇੰਨੀ ਇੰਨੀ ਨੀਚੇ ਗਰਾਫੇ ਦਾ ਵੀ ਹੋੜ ਜਾਊਗਾ ਸਿਰਫ ਮੈਨੂੰ ਬਦਨਾਮ ਕਰਨ ਦਾ ਸਿਰਫ ਇੱਕੋ ਇੱਕ ਸੀਗਾ ਜੀ ਵੀ ਅਸੀਂ ਕੇਜਰੀਵਾਲ ਸਾਹਿਬ ਨੂੰ ਇਹਦੇ ذریعے ਬਦਨਾਮ ਕਰਨਾ ਹੋਰ ਉਹਦੇ ਤੇ ਲੱਭਦਾ ਕੁਝ ਨਹੀਂ ਸੀਗਾ ਜੀ ਨਾ ਬਾਕੀ ਮੈਂ ਤੁਹਾਨੂੰ ਆਪ ਜੀ ਨੂੰ ਇਹ ਸਪਸ਼ਟ ਕਰਨਾ ਚਾਹਣਾ ਵੀ ਮੇਰੇ ਕੋਲੇ ਅਕਾਲੀ ਵੀ ਉੱਥੇ ਆਉਂਦੇ ਮੇਰੇ ਕੋਲੇ ਕਾਂਗਰਸੀ ਵੀ ਆਉਂਦੇ ਆ ਮੇਰੇ ਦੇ ਆ ਸਿਵਲ ਸਰਵਿਸ ਦੇ ਅਫਸਰ ਉਹ ਮੇਰਾ ਸਾਰਿਆਂ ਦਾ ਮੇਲ ਮਲਾ ਪਿਆ ਮੇਰੇ ਕੋਲੇ ਆਉਂਦੇ ਜਾਂਦੇ ਰਹਿੰਦੇ ਜੀ ਉੱਥੇ ਅੱਛਾ ਬਾਈ ਜੀ ਮੈਨੂੰ ਐ ਦੱਸਿਓ ਜੇ ਤੁਸੀਂ 90ਵਿਆਂ ਦੇ ਵਿੱਚ ਬਲਾਇਟ ਆਗੇ ਤੇ 97 ਵਾਲਾ ਉਹ ਕੇਸ ਕਿਵੇਂ ਪੈ ਗਿਆ ਫਿਰ ਉਹ ਕੇਸ ਕਾਹਦਾ ਸੀ ਉਹ 97 ਦੇ ਵਿੱਚ ਕੇਸ ਇਹ ਸੀਗਾ ਜੀ ਵੀ ਕੋਈ ਬਾਹਰ ਇੱਥੇ ਮੁੰਡਾ ਕੋਈ ਭੁਪਿੰਦਰ ਸਿੰਘ ਪਿੰਦਾ ਰਹਿੰਦਾ ਸੀਗਾ ਜੀ ਹੂੰ ਬਾਹਰਲੇ ਮੁਲਕ ਦੇ ਵਿੱਚ ਉਹ ਬੰਦਾ ਇਹ ਇੰਡੀਆ ਦੇ ਵਿੱਚ ਗਿਆ 97 97 ਦੇ ਵਿੱਚ ਹੂੰ ਮੈਂ ਉਹਨੂੰ ਜਦੋਂ ਮਲੇਸ਼ੀਆ ਰਹਿੰਦਾ ਸੀ ਮੈਂ ਉਹਨੂੰ ਉਦੋਂ ਦਾ ਜਾਣਦਾ ਸੀਗਾ ਮਲੇਸ਼ੀਆ ਉਹ ਜਦੋਂ ਇੱਕ ਕੰਮਕਾਰ ਕਰਦਾ ਸੀਗਾ ਮਲੇਸ਼ੀਆ ਦੇ ਵਿੱਚ ਉਹ ਕੁਦਰਤੀ ਉਹ ਬਾਅਦ ਦੇ ਵਿੱਚ ਮੇਰਾ ਲਿੰਕ ਟੁੱਟ ਗਿਆ ਮੇਰਾ ਉਹਦੇ ਨਾਲ ਕਦੀ ਕੋਈ ਰਾਬਤਾ ਨਹੀਂ ਕਾਇਮ ਹੋਇਆ ਉਹ ਬੰਦਾ ਮੁੜ ਕੇ ਕਿਤੇ ਵਾਪਸ ਗਿਆ ਵੀ ਇੰਡੀਆ ਦੇ ਵਿੱਚ ਉਹਨੇ ਉੱਥੇ ਇਹ ਜੋ ਇਸ ਸੀਗਾ ਉਸ ਬੰਦੇ ਨੇ ਕੀਤਾ ਗਿਆ ਚੋਈ ਵੀ ਮੈਂ ਇੰਨਾ ਇੰਨਾ ਬੰਦਿਆਂ ਨੂੰ ਜਾਣਦਾ ਉਹ ਜਾਣਦਾ ਕਰਕੇ ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਵਿੱਚ ਇਨਵਾਲਵ ਕਰ ਲਿਆ 7 ਮਹੀਨੇ ਬਾਅਦ 8 ਮਹੀਨੇ ਬਾਅਦ ਜਿਹੜਾ ਕਿ ਇਹ ਕਾਂਡ ਆ ਇਹ ਹੋਇਆ 97 ਦੇ 7 ਨੌ ਤਰੀਕ ਨੂੰ ਜਲਾਈ ਦੇ ਵਿੱਚ ਇਹਨਾਂ ਨੇ ਉਦੋਂ ਬਾਅਦ ਦੇ ਵਿੱਚ 98 ਦੇ ਵਿੱਚ ਅਪ੍ਰੈਲ ਦੇ ਵਿੱਚ ਮੇਰੇ ਤੇ 161 ਦੇ ਬਿਆਨਾਂ ਤੇ ਇਹ ਪਰਚਾ ਦਰਜ ਕੀਤਾ 120 ਬੀ ਦਾ ਵੀ ਉਹਦੇ ਨਾਲ ਭਪਿੰਦਰ ਸਿੰਘ ਭਿੰਦਾ ਇਹਨੂੰ ਜਾਣਦਾ ਸੀਗਾ ਜੀ ਹੂੰ ਹੂੰ ਮੇਰਾ ਜਾਣਨ ਦਾ ਸਿਰਫ ਇੱਕੋ ਹੀ ਕਾਰਨ ਸੀਗਾ ਕਿਉਂਕਿ ਭਪਿੰਦਰ ਸਿੰਘ ਭਿੰਦੇ ਦਾ ਉੱਥੇ ਰਿਸ਼ਤੇਦਾਰ ਸੀਗਾ ਉਹ ਪੀ ਮੁੰਡਾ ਦਰਜੀ ਆ ਅੱਜ ਵੀ ਉਹਦੀ ਬਾਗ ਗਲੀ ਦੇ ਵਿੱਚ ਦੁਕਾਨ ਆ ਉਹਦਾ ਰਿਸ਼ਤੇਦਾਰ ਸੀਗਾ ਮੇਰਾ ਵੀ ਉਹ دوست ਸੀਗਾ ਉਹ ਸਿਰਫ ਰਿਸ਼ਤੇਦਾਰੀ ਨਾਲ ਉਹਦੇ ਨਾਲ ਜਾਣ ਪਛਾਣ ਕਰਕੇ ਉਹਨਾਂ ਨੇ ਮੈਨੂੰ ਐਨ ਆਰ ਆਈ ਹੋਣ ਦੇ ਕਰਕੇ ਤੇ ਮੈਨੂੰ ਉਹਨਾਂ ਨੇ ਚੱਕਰ ਦੇ ਵਿੱਚ ਇਨਵੋਲਵ ਕਰ ਲਿਆ ਅੱਛਾ ਤੇ ਫਿਰ ਜੱਕ ਜਦ ਪੇਸ਼ ਹੋਇਆ ਕੇਸ ਲੜਿਆ ਤੇ ਉਹਦੇ ਵਿੱਚ ਬੜੀ ਇੱਜ਼ਤ ਬਰੀ ਹੋਈ ਤੁਸੀਂ ਹਾਂਜੀ ਮੈਂ ਦੂਜਾ ਮੈਂ ਇੱਥੋਂ ਵਾਪਸ ਗਿਆ ਵਾਪਸ ਮੈਂ ਅਰੇਸਟਰ ਸੇ ਲੈ ਕੇ ਗਿਆ ਕੋਰਟ ਦਾ ਕੋਰਟ ਦੇ ਅਰੇਸਟਸ ਦੇ ਦੌਰਾਨ ਮੈਂ ਪੇਚ ਹੋਇਆ ਪੇਚ ਹੋ ਕੇ ਮੈਂ ਫਾਸਟ ਟਰੈਕ ਕੋਰਟ શ્રી ਮੋਕਸਰ ਸਾਹਿਬ ਦੇ ਵਿੱਚ ਹਰदयाल ਸਿੰਘ ਦੀ ਸਰਦਾਰ ਹਰदयाल ਸਿੰਘ ਦੀ ਕੋਰਟ ਦੇ ਵਿੱਚ ਮੈਂ ਪੇਚ ਹੋਇਆ ਉਹਨਾਂ ਨੇ ਮੈਨੂੰ ਉਹ ਬਾਇਜਤ ਬਰੀ ਕਰ ਦਿੱਤਾ ਜਿਹੜੀ ਪਹਿਲੀ ਏਪ੍ਰੈਲ 2005 ਨੂੰ ਜੀ ਅੱਛਾ ਜਾਂ ਉਸ ਤੋਂ ਪਹਿਲਾਂ ਮੇਰੇ ਤੇ ਕੋਈ ਵੀ ਤੇ ਕੋਈ ਵੀ ਕੇਸ ਹੈ ਨਹੀਂ ਹੈ। ਅੱਛਾ ਭਾਈ ਜੀ ਇੱਕ ਫੋਟੋ ਦੇ ਵਿੱਚ ਮੈਂ ਤਾਂ ਜਦ ਇਹ ਥੋੜਾ ਜਿਹਾ ਮੇਰੇ ਮਨ ਚ ਹੋਇਆ ਤੁਹਾਡੀ ਜਿਹੜੀ ਵੀਡੀਓ ਆਈ ਵੀਡੀਓ ਤੋਂ ਬਾਅਦ ਕੰਟੈਕਟਸ ਤੁਹਾਡੇ ਪਤਾ ਲਏ। ਅੱਛਾ ਮੇਰੇ ਇੱਕ ਫੋਟੋ ਤੁਹਾਡੀ ਬਾਦਲ ਸਾਹਿਬ ਨਾਲ ਵੀ ਕਿਤੇ ਤੁਸੀਂ ਖੜੇ ਹੋ ਮਿਲਿਓ ਤੁਸੀਂ? ਹਾਂਜੀ ਹਾਂਜੀ ਮੈਂ ਬਾਦਲ ਸਾਹਿਬ ਦੇ ਜਿੰਨੇ ਸਾਡੇ ਲੋਕਲ ਅਕਾਲੀ ਲੀਡਰ ਐ ਇੱਥੋਂ ਤੱਕ ਜਥੇਦਾਰ ਤੋਤਾ ਸਿੰਘ ਹੋਣੀ ਮੇਰੀ ਜਾਤੀ ਤੌਰ ਤੇ ਜਾਣਦੇ ਆ ਮੱਖਣ ਸਿੰਘ ਹੋਣੀ ਮੈਨੂੰ ਜਾਤੀ ਤੌਰ ਅਕਾਲੀ ਭਾਵੇਂ ਕਾਂਗਰਸੀ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਦੇ ਨਮینده ਹੈਗੇ ਨੇ ਜਾਂ ਜੈਨ ਸਾਹਿਬ ਸੀ ਜਿੰਨੇ ਵੀ ਮੈਨੂੰ ਜਾਤੀ ਤੌਰ ਤੇ ਸਾਰੇ ਜਾਣਦੇ ਜੀ ਉਹ ਸਾਡੇ ਐਨ ਆਰ ਆਈ ਉੱਥੇ ਕਨਵੈਨਸ਼ਨ ਹੋਈ ਸੀਗੀ ਉੱਥੇ ਮੋਗੇ ਦੇ ਵਿੱਚ ਉਸ ਕਨਵੈਨਸ਼ਨ ਦੇ ਵਿੱਚ ਮੈਂ ਗਿਆ ਔਰ ਮੈਂ ਉਥੇ ਵੀ ਪ੍ਰੋਪਰ ਕਾਰਡ ਬਣਾ ਕੇ ਗਿਆ ਅੰਦਰ ਜਾ ਕੇ ਸਾਡੀ ਮੀਟਿੰਗ ਹੋਈ ਆ ਉਹਨਾਂ ਨਾਲ ਅਸੀਂ ਆਪਦੀਆਂ ਮੁਸ਼ਕਲਾਂ ਦੀ ਵੀ ਆ ਆ ਮੁਸ਼ਕਲ ਆ ਪਹਿਲੀ ਗੱਲ ਤੇ ਹੈਗਾ ਵੀ ਉਥੇ ਜਿਹੜੀ ਬਾਦਲ ਸਾਹਿਬ ਨਾਲ ਜੈਟਪਲਾਸ ਸਿਕਿਉਰਟੀ ਹੁੰਦੀ ਆ ਇਹ ਕਾਰਡ ਡੀਸੀ ਸਾਹਿਬ ਦੇ ਬਣਦੇ ਆ ਇਹ ਉੱਥੇ ਪੁਲਿਸ ਹੁੰਦੀ ਉੱਥੇ ਸਾਰੇ ਹੁੰਦੇ ਬਿਲ ਉਦਾਂ ਦੇ ਬੰਦੇ ਦਾ ਕਿਸੇ ਦਾ ਕਾਰਡ ਬਾਣੀ ਨਹੀਂ ਦਵਾਦਾ ਜਿਹੜਾ ਗਲਤ ਬੰਦਾ ਹੋਵੇ ਬਿਲਕੁਲ ਹਾਂਜੀ ਅੰਦਰ अच्छा भाई जी इस ਦੇ ਨਾਲ ਹੁਣ ਜਦ ਇਹ ਦੁਨੀਆ ਦੇ ਵਿੱਚ ਧੂਆਂ ਰੋਲ ਹੋ ਗਿਆ ਦੋਨੇ ਪਾਰਟੀਆਂ ਤੁਹਾਨੂੰ ਚਿੰਬੜੀਆਂ ਹੋਈਆਂ ਨੇ ਹੁਣ ਕੀ ਮਹਿਸੂਸ ਕਰਦੇ ਹੋ ਤੁਸੀਂ ਠੱਗਿਆ ਠੱਗਿਆ ਲੱਗਦਾ ਜਾਂ ਤੁਹਾਨੂੰ ਮਾਣ ਲੱਗਦਾ ਵੀ ਕੇਸ ਮੇਰੇ ਘਰੇ ਰਹਿ ਗਿਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਨਹੀਂ ਜੀ ਮੈਨੂੰ ਕੋਈ ਮਾਣ ਵਾਲੀ ਗੱਲ ਇਦਾਂ ਦੀ ਕੋਈ ਹੈ ਨਹੀਂਗੀ ਜੀ ਔਰ ਮੈਨੂੰ ਤਾਂ ਇਹਨਾਂ ਨੇ ਮੇਰੀ ਹਾਲਤ ਦੁਨੀਆ ਦੇ ਵਿੱਚ ਇਹ ਬਣਾ ਦਿੱਤੀ ਵੀ ਜੇ ਕੋਈ ਮੇਰੇ ਨੇੜੇ ਦਾ ਕੋਈ ਰਿਸ਼ਤੇਦਾਰ ਜਾਂ ਮੇਰੇ ਨੇੜੇ ਦਾ ਕੋਈ ਦੋਸਤ ਉਹ ਵੀ ਮੇਰੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੇ ਵੀ ਇਹ ਜਿਹੜੇ ਇਹ ਜਿਹੜੇ ਬੰਦੇ ਹੈਗੇ ਐਂਟੀਸੋਸ਼ੀਅਲ ਆ ਇਹਨਾਂ ਨਾਲ ਹੀ ਮਿਲਵਰਤ ਕੇ ਕਿਤੇ ਸਾਡੇ ਤੇ ਕੋਈ ਕੇਸ ਜਾਂ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਨਾ ਫਸ ਸਾਨੂੰ ਤਾਂ ਇਹ ਹੈਗਾ ਵੀ ਸਾਨੂੰ ਤਾਂ ਕਾਹ ਵਾਸਤੇ ਆਪਦਾ ਪਰਿਵਾਰ ਚਲਾਉਣ ਵਾਸਤੇ ਵੀ ਸਾਨੂੰ ਇਹਨਾਂ ਨੇ ਮੁਸੀਬਤ ਘੜੀ ਕਰ ਦਿੱਤੀ ਹੈ ਜੀ ਤੇ ਫਿਰ ਹੁਣ ਇਹ ਇਹ ਇਹ ਜਿਹੜਾ ਖਮਿਆਜ਼ਾ ਹੁਣ ਇਹ ਲੀਡਰ ਲੜਦੇ ਤਾਂ ਆਪਸ ਵਿੱਚ ਹੈ ਜੀ ਖਮਿਆਜ਼ਾ ਤੇ ਇਹਨਾਂ ਦੀ ਪਾਰਟੀ ਦੇ ਵਿੱਚ ਜੇ ਹੁਣ ਮੈਂ ਉਹਨਾਂ ਨੂੰ ਇਉਂ ਨਹੀਂ ਕਹਿੰਦਾ ਉਹ ਵੀ ਬਾਇਜ਼ਤ ਬਰੀ ਹੋਇਆ ਵਿਰਸਾ ਬਲਟੋਆ ਉੱਥੇ ਆ ਉਸ ਤੋਂ ਬਾਅਦ ਦੂਜੇ ਬਣੇ ਹਰਮਿੰਦਰ ਗੈਲੋ ਉੱਥੇ ਆ ਮਨਜੀਤ ਸਿੰਘ ਉੱਥੇ ਆ ਮਹਿਤਾ ਉੱਥੇ ਆ ਚਾਵਲਾ ਉੱਥੇ ਆ ਗਰੇਵਾਲ ਉੱਥੇ ਆ ਇਹ ਸਾਰਿਆਂ ਦੇ ਸਾਰੇ ਬਰੀ ਹੋਏ ਨੇ ਇਹਨਾਂ ਨਾਲ ਸੰਬੰਧਤ ਆ ਤੇ ਤੁਸੀਂ ਇਹ ਵੇਖ ਲਓ ਚਲੋ ਬਾਕੀ ਛੱਡੋ ਤੁਸੀਂ ਭਾਈ ਮਨਜੀਤ ਸਿੰਘ ਹੋਣੀ ਹੂੰ ਅਸੀਂ ਜਿਹੜੇ ਭਾਈ ਅਮਰੀਕ ਸਿੰਘ ਦੇ ਛੋਟੇ ਭਰਾਤਾ ਉਹ ਜਿਨ੍ਹਾਂ ਨੇ ਫੈਡਰੇਸ਼ਨ ਚਲਾਈ ਆ ਉਸ ਫੈਡਰੇਸ਼ਨ ਦੇ ਅੰਦਰ ਹਜ਼ਾਰਾਂ ਸਿੰਘ ਹਜ਼ਾਰਾਂ ਮੁੰਡੇ ਸ਼ਹੀਦ ਹੋ ਚੁੱਕੇ ਆ ਉੱਥੇ ਉਹ ਵੀ ਇਹਨਾਂ ਦੇ ਇਸੇ ਅਕਾਲੀ ਦਲ ਦੇ ਅੰਦਰ ਪੇਡਾ ਦੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਚੇਅਰਮੈਨ ਆ ਉਹ ਤੇ ਪੇਡਾ ਦੇ ਭਾਈ ਮਨਜੀਤ ਸਿੰਘ ਹੁੜੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਤੇ ਕੋਈ ਜਸਵੀਰ ਸਿੰਘ ਰੋਡੇ ਚੋਂ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਭਤੀਜੇ ਆ ਉਹਨਾਂ ਨੂੰ ਇਹ ਰੋਜ਼ ਮਿਲਦੇ ਆ ਸੰਤ ਹਰਨਾਮ ਸਿੰਘ ਨੂੰ ਜਿਨ੍ਹਾਂ ਦੇ ਦਸਾਰਿਆਂ ਸੰਤ ਜਰਨੈਲ ਸਿੰਘ ਦੀ ਉਹਨਾਂ ਨੂੰ ਇਹ ਰੋਜ਼ ਮਿਲਦੇ ਆ ਤੇ ਸਾਡਾ ਸਾਡੇ ਤੇ ਇੱਕੋ ਕੇਸ ਉਹ ਵੀ 120 ਬੀਜਾ ਉਹ ਵੀ 8 ਮਹੀਨੇ ਬਾਅਦ ਜਿਹਦਾ ਕਿ ਮੈਂ ਬਹੁਤ ਜਿਆਦਾ ਮੈਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਸਬਰ ਕੀਤਾ ਉਹਨਾਂ ਨੂੰ ਇਹ ਰੋਜ਼ ਰੋਜ਼ ਮਿਲਦੇ ਆ ਉਹ ਇਹਨਾਂ ਨੂੰ ਟੈਰੋਰਿਸਟ ਨਹੀਂ ਦੱਸਦੇ ਮੈਂ ਇੱਕ ਸਿਰਫ ਐਨ ਆਰ ਆਈ ਹੋਣ ਖਾਤਰ ਤੇ ਸਿਰਫ ਕੇਜਰੀਵਾਲ ਸਾਹਿਬ ਆਪਣੇ ਘਰੇ ਰਹਿ ਕੇ ਕਰਕੇ ਮੈਂ ਬਹੁਤ ਵੱਡਾ ਟੈਰੋਰਿਸਟ ਹੈ ਜੀ ਤੇ ਬਾਈ ਜੀ ਹੁਣ ਫਿਰ ਗਾਂ ਇਹ ਤਾਂ ਇਹ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਕੱਲੇ ਕੱਲੇ ਬੰਦਿਆਂ ਨੂੰ ਬੰਦਾ ਕੋਈ 500 ਬੰਦਾ ਸਰਕਲ ਚ ਕੱਲੇ ਕੱਲੇ ਬੰਦਿਆਂ ਨੂੰ ਕਿਹਨੂੰ ਬੰਦਾ ਦੱਸਿਓ ਸੋਸ਼ਲ ਆਪਣੇ ਤੌਰ ਤੇ ਮੁਸ਼ਕਲ ਖੜੀ ਹੋ ਗਈ ਵੋਟਾਂ ਦੀ ਤਾਂ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਇਹ ਇਹ ਮੇਰਾ ਕੰਮ ਨਹੀਂ ਹੈਗਾ ਜੀ ਮੈਂ ਤੁਹਾਡੇ ਰੇਡੀਓ ਦੇ ਰਾਈ ਸਮੂਹ ਐਨ ਆਰ ਆਈ ਜਿੰਨੇ ਵੀ ਹੈਗੇ ਆ ਜੀ ਵੀ ਉਹ ਐਨ ਆਰ ਆਈ ਸਾਹਿਬ ਜਿਹੜੇ ਐਨ ਆਰ ਆਈ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਦੀ ਧਰਤੀ ਦੇ ਉੱਤੇ ਜੋ ਸਾਡਾ ਪਛੋਕੜ ਆ ਉਹਦੀ ਹੱਕਾਂ ਦੀ ਗੱਲ ਕਰਨਗੇ ਉਹ ਵੀ ਵੋਟਰ ਆਈ ਇਹਨਾਂ ਨੂੰ ਕੱਲਾ ਕੱਲਾ ਐਨ ਆਰ ਆਈ ਦੁਜੇ ਟੈਰੋਰਿਸਟ ਦੱਸਦਾ ਵੀ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਹੋਣਾ ਦੇ ਹਰ ਸਿਮਰਤ ਬਾਦਲ ਦੇ ਔਰ ਦੁਜੇ ਕੈਪਟਨ ਸਾਹਿਬ ਦੇ ਬਿਆਨ ਪੜ੍ਹਦੇ ਹੋਣੇ ਆ ਇਹ ਸਾਨੂੰ ਜੇ ਅਸੀਂ ਉੱਥੇ ਜਾ ਕੇ ਕਹਿੰਨੇ ਆ ਨਾ ਵੀ ਸਾਨੂੰ ਐਸ ਪਾਰਟੀ ਨਾਲ ਸਾਡਾ ਵਧੀਆ ਭੈਕਿਆ ਤੇ ਅਸੀਂ ਐਸ ਪਾਰਟੀ ਨਾਲ ਆਪਾਂ ਕੀ ਵੇਚ ਲਈਏ ਕਿਉਂਕਿ 70 ਸਾਲ ਹੋ ਗਏ ਆ ਸਾਡਾ ਇਹਨਾਂ ਨੇ ਬਹੁਤ ਜ਼ਿਆਦਾ ਸੋਚਨ ਕੀਤਾ ਪੰਜਾਬੀਆਂ ਦਾ ਪੰਜਾਬ ਦਾ ਮੁਲਕ ਦਾ ਸਾਰੇ ਦਾ ਵੀ ਜੇ ਸਾਨੂੰ ਕੁਝ ਚੰਗਾ ਉੱਜਲ ਪੁੱਖ ਦੱਸਦਾ ਤੇ ਅੱਜ ਐਸ ਪਾਰਟੀ ਦੇ ਵਿੱਚ ਹੈਗਾ ਚਲੋ ਅਸੀਂ ਦੇਖ ਲਈਏ 5 ਸਾਲ ਇਹਨਾਂ ਨੂੰ ਵੀ ਮੌਕਾ ਦੇ ਕੇ ਇਹ ਇਕੱਲੇ ਮੈਨੂੰ ਨਹੀਂ ਇਹ ਸਾਰੇ ਐਨਆਰਆਈਆਂ ਨੂੰ ਇਹ ਇਹ ਕਹਿੰਦੇ ਆ ਔਰ ਸਾਡੇ ਐਨਆਰਆਈਆਂ ਦਾ ਜਾ ਐਨਆਰਆਈਆਂ ਦੇ ਜਿੰਨੇ ਉੱਥੇ ਰਿਸ਼ਤੇਦਾਰ ਆ ਉਹਨਾਂ ਦਾ ਹੁਣ ਹੱਕ ਬਣਦਾ ਵੀ ਸਾਨੂੰ ਜੇ ਜੇ ਅਸੀਂ ਐਨ ਆਰ ਆਈ ਆ ਤੇ ਜਿਹੜੇ ਸਾਡੇ ਭੈਣ ਭਾਈ ਆ ਉਥੇ ਉਹ ਕੌਣ ਆ ਵੀ ਉਹ ਵੀ ਟੈਰੋਰਿਸਟ ਆ ਨਾ ਇਹਦਾ ਮਤਲਬ ਉਹਨਾਂ ਦਾ ਇਹ ਹੱਕ ਬਣਦਾ ਵੀ ਆਪਦੀ ਵੋਟ ਦਾ ਇਸਤੇਮਾਲ ਕਰਕੇ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਅੱਜ ਮੈਨੂੰ ਟੈਰੋਰਿਸਟ ਬਣਾਇਆ ਤੁਸੀਂ ਦੇਖਿਓ ਇਹ ਇਦਾਂ ਦੀ ਇਹ ਇਹ ਕਾਂਗਰਸ ਜਾਂ ਅਕਾਲੀ ਦਲ ਇਹ ਅਗਲੀ ਾਰ ਨੂੰ ਇਹ ਅਗਲੀ ਨੂੰ ਪਾਵਰ ਦੇ ਵਿੱਚ ਆਉਂਦੇ ਆ ਤੇ ਕੱਲਾ ਕੱਲਾ ਐਨ ਆਰ ਆਈ ਇਹਨਾਂ ਦੇ ਲਈ ਅਤਵਾਦੀ ਹੋਊਗਾ ਪੰਜਾਬ ਦੇ ਵਿੱਚ। ਲਖੀਰ ਜੀ ਤੁਸੀਂ ਜੀ ਹੋਰ ਵੀ ਜਿੰਨੇ ਉੱਥੇ ਐਨ ਆਰ ਆਈਆਂ ਦੇ ਪਰਿਵਾਰ ਰਹਿ ਆ ਉਹਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹ ਸਾਨੂੰ ਸਾਰਿਆਂ ਨੂੰ ਇਹ ਵੀ ਇਹ ਵੀ ਅਤਵਾਦੀ ਵੀ ਅਤਵਾਦੀ ਕਰਦਾ ਆਂਦੇ ਆ। ਠੀਕ ਹੈ ਭਾਈ ਜੀ ਤੁਸੀਂ ਸਮਾਂ ਕੱਢ ਕੇ ਆਪਣੀ ਗੱਲ ਕੀਤੀ ਆਪਣੀ ਗੱਲ ਕਲੀਅਰ ਕੀਤੀ ਤੁਹਾਡੀ ਵੀਡੀਓ ਵੀ ਲੋਕਾਂ ਨੇ ਸੁਣੀ ਰੇਡੀਓ ਤੇ ਜਿਨ੍ਹਾਂ ਨੇ ਮੈਨੂੰ ਆਪਣੇ ਰੇਡੀਓ ਤੇ ਲਿਆ ਕੇ ਮੈਨੂੰ ਮੌਕਾ ਦਿੱਤਾ ਆਪਣਾ ਆਪਣਾ ਸਪਾਸਟ ਕਰਨ ਦੇ ਇੰਦਾ ਬਾਕੀ ਨਾਲ ਧੰਨਵਾਦ ਭਾਈ ਜੀ ਇਹ ਕੱਲ ਮੈਂ ਦੱਸਣੀ ਆ ਮੈਂ ਜਰੂਰ ਹੀ ਮੈਂ ਐਂਡ ਆਫ ਮਾਰਚ ਦੇ ਵਿੱਚ ਮੈਂ ਵਾਪਸ ਜਾਣਾ ਔਰ ਮੈਂ ਜਾ ਕੇ ਇਹਨਾਂ ਲੋਕਾਂ ਦੇ ਡੈਪਹਾਮੇਸ਼ਨ ਦਾ ਕੇਸ ਉੱਥੇ ਵੀ ਉੱਥੇ ਪਾਉਣਾ ਹੀ ਪਾਉਣਾ ਧੰਨਵਾਦ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਸਵਾਗਰਿੰਦਰ ਸਿੰਘ ਕੱਲ ਕਲਾ ਵੱਡੀਆਂ ਕੱਲਾ ਛੋਟੀ ਤੇ ਵੱਡੀ ਕੱਲ ਮਹਿਰਾ ਨੇ ਜਾਂ ਜਾਣੇ ਆਪਾਂ ਬਾਬੇ ਪ੍ਰਾਣੇ ਨੂੰ ਮੋਗਿਓ ਉਹ ਕੱਲ ਕਲਾ ਪਿੰਡ ਹੈ ਤੇ ਉਥੋਂ یوں ਫਿਰ ਬੰਦੇ ਹੁਣ ਦੇਖੋ ਲੜਾਈ ਤਾਂ ਪਾਰਟੀਆਂ ਦੀ ਆ ਡੱਬੇ ਬੰਦੇ ਫਸ ਜਾਂਦੇ ਆ ਨਾ ਫਸਾਲੇ ਤੇ ਦੁਨੀਆ ਦੇ ਵਿੱਚ ਨੌਂ ਕੱਢਦਾ ਪਹਿਲੀ ਤਾਂ ਗੱਲ ਉਸ ਸਿਸਟਮ ਦਾ ਸ਼ਿਕਾਰ ਹੋਇਆ ਬੰਦਾ ਬਾਹਰ ਬੈਠਾ ਨੌਂ ਲੈਤਾ ਉੱਥੇ ਬਾਇਜ਼ਤ ਬਰੀ ਹੋਇਆ ਦੇਖੋ ਸੇਮ ਟੋਕਨ ਮੈਂ ਇਹ ਗੱਲ ਹੁਣ ਅਕਾਲੀ ਬਹੁਤ ਜ਼ੋਰ ਨਾਲ ਕਹਿੰਦੇ ਵੀ ਸਾਡੇ ਮਜੀਠੀਆ ਸਾਹਿਬ ਨੂੰ ਤੁਸੀਂ ਕਿਉਂ ਕਹਿੰਦੇ ਵੀ ਉਹਨੇ ਨਸ਼ਾ ਕੀਤਾ ਨਸ਼ਾ ਵੇਚਿਆ ਉਹਨੇ ਉਹ ਡਾਇਰੈਕਟੋਰੇਟ ਨੇ ਉਸ ਕੋਈ ਸਜ਼ਾ ਨਹੀਂ ਦਿੱਤੀ ਉਹਦੇ ਤੇ ਕੋਈ ਕੇਸ ਨਹੀਂ ਬਿਲਕੁਲ ਬਾਇਜ਼ਤੋ ਬਰੀ ਹੋਇਆ ਠੀਕ ਆ ਉਹਦੇ ਤੇ ਕੋਈ ਕੇਸ ਨਹੀਂ ਉਹਨੂੰ ਕਹਿਣਾ ਵੀ ਨੀ ਚਾਹੀਦਾ ਲੋਕ ਕਹਿੰਦੇ ਆ ਜੇ ਕਿਉਂਕਿ ਕੋਈ ਉਸ ਸਬੂਤ ਨਹੀਂ ਉਹ ਬਰੀ ਹੋਇਆ ਇਉਂ ਹੀ ਵਿਰਸਾ ਸਿੰਘ ਬਲਟੋਆ ਜਿਹੜਾ ਉਹ ਬਰੀ ਹੋ ਕੇ ਐਮਐਲਏ ਬਣਿਆ ਮਨਜੀਤ ਸਿੰਘ ਭਾਈ ਅਮਰੀਕ ਸਿੰਘ ਹੋਣੀ ਸੰਤਕਰਤਾ ਸਿੰਘ ਖਾਲਸਾ ਪਿੰਡਰਾਵਾਲਾ ਦੇ ਬੇਟੇ ਢੀਂਡਾਲੇ ਤੋਂ ਉਹ ਚੇਅਰਮੈਨ ਨੇ ਜਸਵੀਰ ਰੋਡੇ ਉੱਥੇ ਫਿਰਦਾ ਉਹ ਤੁਹਾਡੇ ਸਾਹਮਣੇ ਆ ਉਸ ਦੀ ਸਾਂਝ ਪਿਆਲੀ ਕਿੱਥੇ ਆ ਉਹ ਗਰਚਨ ਸਿੰਘ ਗਰੇਵਾਲ ਸਾਡੇ ਕਾਲਜ ਨਾਲ ਹੀ ਪੜ੍ਹਦੇ ਉੱਥੇ ਗਏ ਨੇ ਵਰੀ ਹੋ ਆਏ ਨੇ ਉਹ ਉੱਪਰਲੀ ਸਫਾ ਦੇ ਵਿੱਚ ਨੇ ਹਰਮਿੰਦਰ ਸਿੰਘ ਗਿੱਲ ਮਨਜੀਤ ਸਿੰਘ ਰਿਸ਼ਤੇਦਾਰ ਕਾਂਗਰਸ ਵਾਲੇ ਪਾਸੇ ਆ ਵਰੀ ਹੋਇਆ ਹੋਇਆ ਉਹਨਾਂ ਨੂੰ ਉਹ ਕਹਿੰਦੇ ਵੀ ਸਗੋਂ ਉਹ ਤਾਂ ਓਪਨਲੀ ਕਹਿੰਦੇ ਆ ਸਾਡੇ ਤੇ ਤਸ਼ੱਦਦ ਹੋਇਆ ਸੀ ਜੋਧਪੁਰ ਸਮਾਂ ਕੱਢਿਆ ਅਸੀਂ ਆਪਣੀ ਜ਼ਿੰਦਗੀ ਲਾਈ ਦੇਖੇ ਲਾਈ ਤੇ ਹੁਣ ਉਹ ਪੋਲਿਟੀਕਲ ਸਫਾਂ ਦੇ ਵਿੱਚ ਨੇ ਉਹਨਾਂ ਨੂੰ ਜਿਵੇਂ ਉਹਨਾਂ ਦਾ ਜੀਵਨ ਵਧੀਆ ਲੱਗਦਾ ਉਸ ਤਰ੍ਹਾਂ ਚਲਾ ਰਹੇ ਨੇ ਉਹ ਕੋਈ ਇਹਦੇ ਦੇ ਜੇ ਮੈਂ ਕਹਾਂ ਕੋਈ ਮਾੜੀ ਵੀ ਗੱਲ ਨਹੀਂ ਹੈ ਜੋ ਪੋਲਿਟਿਕਲੀ ਆ ਗਈ ਠੀਕ ਹੈ ਉਹਨਾਂ ਦਾ ਕਿਸੇ ਸਮੇਂ ਕੋਈ ਮਤ ਸੀ ਤੇ ਅੱਜ ਉਹ ਕਿਤੇ ਹੋਰ ਖੜੇ ਪਰ ਸੇਮ ਟੋਕਨ ਤੇ ਜਿਹੜੀ ਕਿਸੇ ਧਾਰਨੀ ਦੀ ਗਲਤ ਦੇ ਬੰਦੇ ਇੱਕ ਧਾਰ ਤੇ ਖੜੇ ਆ ਉਹ ਹਿੱਲੇ ਨਹੀਂ ਹਲੇ ਤੱਕ ਉਹ ਉਸ ਤਰ੍ਹਾਂ ਹੀ ਆ ਪਰ ਹਰ ਇੱਕ ਬੰਦੇ ਦਾ ਆਪਣਾ ਇਹ ਜ਼ਿੰਦਗੀ ਜੀਉਣ ਦਾ ਫਲਸਫਾ ਉਹ ਆ ਗਏ ਤੇ ਮਹਿਤਾ ਚਾਵਲਾ ਦੋਨੇ ਹੀ ਅੰਦਰ ਸੀ ਮੈਂ ਤਾਂ ਹੁਣ ਐਸਜੀਪੀਸੀ ਦੇ ਵਿੱਚ ਆ ਤੁਹਾਨੂੰ ਪਤਾ ਉੱਪਰਲੀ ਪੌੜੀ ਨੂੰ ਹੱਥ ਲਾਉਣ ਨੂੰ ਫਿਰਦਾ ਨਾਲ ਅ ਚਾਵਲਾ ਦੋਨੇ ਹੀ ਜੋੜੀ ਐ ਫੈਡਰੇਸ਼ਨਾਂ ਬਣਾ ਬਣਾ ਉਹ ਬਣਾ ਜੇ ਉਹ ਬੜੀ ਹੋ ਕੇ ਤੁਹਾਡੇ ਐਮਐਲਏ ਜਨਰਲ ਸੈਕਟਰੀ ਐਸਜੀਪੀਸੀ ਦੇ ਬਣ ਸਕਦੇ ਨੇ ਇੱਕ ਵਾਰ ਇੱਜ਼ਤ ਬੜੀ ਹੋਇਆ ਨਾਰੀ ਬੰਦਾ ਉਹਦੇ ਲਈ ਦੋਨੇ ਪਾਰਟੀਆਂ ਤੁਸੀਂ ਲਗਿਓ ਇਹ ਅੱਤਵਾਦੀ ਆ ਜੀ ਅੱਤਵਾਦੀ ਦੇ ਘਰੇ ਕੇਜਰੀਵਾਲ ਅੱਗ ਲਾ ਦੂ ਏ ਫੂਕ ਦੂ ਏ ਹੋਜੂ ਆ ਹੋਜੂ ਧੂਆਂ ਧਾਰ ਪ੍ਰਚਾਰ ਫਿਰ ਡਬਲ ਸਟੈਂਡਰਡ ਇਹ ਇੱਥੇ ਸਮਰਥਕ ਕਹਿੰਦੇ ਆ ਵੀ ਸਾਡੇ ਬਾਈਜ਼ਤ ਹੋਏ ਬਰੀ ਹੋਏ ਬੰਦਿਆਂ ਨੂੰ ਲੋਕ ਕਿਉਂ ਕਹਿੰਦੇ ਆ ਫਿਰ ਹਾਈ ਕਮਾਂਡ ਨੂੰ ਇਉਂ ਵੀ ਕਹੋ ਵੀ ਗੁਰਿੰਦਰ ਸਿੰਘ ਘਾਲੀ ਨੂੰ ਵੀ ਤੁਸੀਂ ਅਤਵਾਦੀ ਕਿਉਂ ਕਹਨੇ ਹੋ ਬਈ ਫਿਰ ਜੇ ਤੁਸੀਂ ਇੱਕ ਸਟੈਂਡਰਡ ਕਹਿੰਦੇ ਹੋ ਤਾਂ ਲੋਕਾਂ ਨੂੰ ਡਬਲ ਕਹਿੰਦੇ ਹੋ ਤਾਂ ਤੁਸੀਂ ਡਬਲ ਸਟੈਂਡਰਡ 'ਚ ਵੀ ਖੜੇ ਹੋ ਪਾਪ ਕਹੋ ਜਨਤਕ ਤੌਰ ਤੇ ਵੀ ਗੁਰਿੰਦਰ ਸਿੰਘ ਘਾਲੀ ਬਾਈਜ਼ਤ ਬਰੀ ਹੋਇਆ ਹੋਇਆ ਉਹਨੂੰ ਨਾ ਅਤਵਾਦੀ ਕਹੋ ਵੀ ਗੜ ਹਰਦੀਚ ਉਹਦੇ ਘਰੇ ਰਹਿ ਕੇ ਇੱਕ ਬੰਦਾ ਰਾਤ ਕੱਟ ਗਿਆ ਆਪੋਜੀਸ਼ਨ ਦਾ ਦੇ ਉਹਨੂੰ ਤੁਸੀਂ ਕਹਿ ਲੋ ਜਿਹੜਾ ਕੇਜਰੀਵਾਲ ਨੂੰ ਕਹਿਣਾ ਪਰ ਇੱਕ ਨਾਰਮਲ ਇਨੋਸੈਂਟ ਬੰਦਾ ਐਡੀ ਦੂਰ ਬੈਠਾ ਉਹ ਵਿੱਚ ਫਸਾ ਲਿਆ ਇਸ ਰੌਲੇ ਦੇ ਵਿੱਚ ਗਿਰਨੇ ਸਿੰਘ ਕਹਾਲੀ ਉਹਨਾਂ ਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਦੁੱਖ ਹੋਣਾ ਬਹੁਤ ਉਹਨਾਂ ਦਾ ਸੋਸ਼ਲ ਸਰਕਲ 'ਚ ਮੁਸ਼ਕਲ ਹੋਣੀ ਆ ਲੋਕਾਂ ਨੂੰ ਕੱਲੇ-ਕੱਲੇ ਨੂੰ ਤੁਸੀਂ ਸਫਾਈਆਂ ਨਹੀਂ ਦੇ ਸਕਦੇ ਇੱਥੇ ਤਾਂ ਇੱਥੇ ਧੂਆਂ ਰੋਲ ਹੋ ਜਾਂਦਾ ਅੱਥਣ ਤੱਕ ਜਾਂ ਨੂੰ ਕਿਹਨੂੰ ਫੋਨ-ਫੋਨ ਕਰਕੇ ਕਹੋਗੇ ਆਹ ਵੀਡੀਓ ਚਾਹ ਨਹੀਂ ਤੇ ਮੈਂ ਆਹ ਨਹੀਂ ਤੇ ਮੈਂ ਆਹ ਨਹੀਂ ਇੱਥੇ ਤਾਂ ਖਲਾਰਾ ਪਾਉਂਦੇ ਆ ਅੱਥਣ ਲੋਕ ਉਹ ਤੇਜ਼ੀ ਬਹੁਤ ਹੈ ਕੰਮ ਕੋਈ ਨਹੀਂ ਹਰ ਵਕਤ ਫੋਨ ਤੇ ਬਸ ਵੀਡੀਓ ਹੀ ਚੱਲਣੀਆਂ ਹੁਣ ਮੈਂ ਇੱਧਰ ਜਾ ਰਿਹਾ ਮੈਂ ਉੱਧਰ ਚਲਿਆ ਮੈਂ ਲਾਈਵ ਹੋ ਰਿਹਾ ਹੁਣ ਮੈਂ ਆ ਸੁਣੋ ਮੇਰੀ ਆ ਸੁਣੋ ਆ ਸੁਣੋ ਆ ਸੁਣੋ ਸਾਰੇ ਹੀ ਲੱਗੇ ਹੋਇਆ ਇੱਕ ਨਹੀਂ ਸਾਰੇ ਹੀ ਲੱਗੇ ਹੋਇਆ ਅਰੇ ਇਸ ਲੈਵਲ ਦੀ ਲੜਾਈ ਜਿਹੜੀ ਹੈ ਵੋਟਾਂ ਉੱਥੇ ਵਾਲਿਆਂ ਨੇ ਪਾਉਣੀਆਂ ਉਹ ਸਿਆਣੇ ਨੇ ਬਾਹਰ ਵਾਲਾ ਕੰਮ ਬਹੁਤ ਤੇਜ਼ ਚੱਲ ਰਿਹਾ ਹੈ ਨੂੰ ਥੋੜਾ ਜਿਹਾ ਠੰਡਾ ਕਰ ਲਈ ਆਪਾਂ ਠੀਕ ਕਰਾਂਗੇ ਗੁਰਿੰਦਰ ਸਿੰਘ ਕਾਲੀ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਆਪਣੀ ਪੋਜੀਸ਼ਨ ਕਲੀਅਰ ਕੀਤੀ ਆ ਵਿਪਾਰਕ ਤੋਂ ਬਾਅਦ ਕਿਉਂਕਿ ਗੱਲ ਫੇਰ ਪੰਜਾਬ ਤੇ ਖੜਨੀ ਆਪਣੇ ਕੋਲ 20-25 ਮਿੰਟ ਹੋਣਗੇ ਪੰਜਾਬ ਦੇ ਬਾਰੇ ਪੰਜਾਬ ਦੀ ਰਾਜਨੀਤੀ ਬਾਰੇ ਕਿੱਥੇ ਗੱਲ ਖੜੀ ਆ ਦਿਹਾੜੀ ਇੱਕ ਰਹਗੀ 3 ਤਰੀਕ ਸਵੇਰ ਹੋਗੀ ਆ ਉੱਥੇ ਚਾਰ ਨੂੰ ਵੋਟਾਂ ਪੈਣੀਆਂ ਨੇ ਸ਼ੁਕਰਵਾਰ ਦੀ ਸਵੇਰ ਆ ਕੱਲ ਦਾ ਦਿਨ ਸੁੱਖ ਦੇ ਨਾਲ ਲੰਘ ਜੇ ਚਾਰ ਨੂੰ ਲੋਕ ਆਪਣਾ ਬਟਨ ਨੱਪ ਲੈਣ ਤੇ ਕੋਈ ਗੱਲ ਬਣ ਜੇ ਕਿਸੇ ਦੀ ਜਿੱਧਰ ਵੀ ਉਹ ਲੋਕ ਬਣਾਉਣਾ ਚਾਹੁੰਦੇ ਵਿਪਾਰਕ ਸੰਹਿ ਤੁਸੀਂ ਵੈਬਸਾਈਟ ਬਾਰੇ ਪੁੱਛ ਰਹੇ ਹੋ ਜੀ a1herbal.ca a11herbal.ca ਬੈਰੂਬਲ ਹੋਣੀ ਜਿਹੜੇ ਦੱਸ ਕੇ ਗਏ ਨੇ ਤੇ ਇੱਕ ਖਬਰ ਹੋਰ ਤੁਹਾਨੂੰ ਦੇ ਦਿਆਂ ਜਿੰਨੇ ਵੀ ਤੁਸੀਂ ਯੂਐਸਐਸ ਸੁਣ ਰਹੇ ਹੋ ਪਲੀਜ਼ ਕੱਲ ਪੁਲਿਸ ਨੇ ਜਰਸੀ ਸ਼ਹਿਰ ਦੇ ਵਿੱਚ ਭਾਰਤੀ ਪਾਕਿਸਤਾਨੀ ਤੇ ਬੰਗਲਾਦੇਸ਼ੀ ਜਿੰਨੇ ਸਟੋਰ ਨੇ ਉਹ ਰੇਡ ਕੀਤੇ ਆ ਤੇ ਉੱਥੇ ਜਿੰਨੇ ਵੀ ਇਲਲੀਗਲ ਕੋਈ ਵੀ ਇਮਿਗਰੈਂਟ ਇਲੈਗਲ ਬੰਦਾ ਰਹਿ ਰਿਹਾ ਸੀ ਉਹ ਫੜ ਕੇ ਉਹਨਾਂ ਨੂੰ ਫੜ ਕੇ ਲੈ ਕੇ ਗਏ ਆ ਜੇਬ ਦੇ ਵਿੱਚ ਜਿਹੜੇ ਵੀ ਤੁਹਾਡੇ ਕਾਗਜ਼ ਪੱਤਰ ਨੇ ਲਾਇਸੈਂਸ ਆ ਗ੍ਰੀਨ ਕਾਰਡ ਆ ਉਹਨੂੰ ਜੇਬ ਦੇ ਵਿੱਚ ਰੱਖੋ ਇਹ ਹੁਣੇ ਇਨਫੋਰਮੇਸ਼ਨ ਮਿਲੀ ਆ ਤੇ ਇਹ ਗੱਲ ਹੋ ਰਹੀ ਹੈ ਇੰਡੀਅਨ ਬੰਗਾਲੀ ਤੇ ਪਾਕਿਸਤਾਨੀ ਸਟੋਰ ਜਿਹੜੇ ਉਹਨਾਂ ਨੇ ਰੇਡ ਕੀਤੀ ਕੱਲ ਜਸਸੀ ਸਿਟੀ ਤੇ 6 ਜਿਹੜੇ ਨੇ ਇਲੈਗਲ ਬੰਦੇ ਰਿਪੋਰਟ ਹੋਏ ਨੇ ਉਥੋਂ ਗ੍ਰੀਨ ਕਾਰਡ ਡਰਾਈਵਿੰਗ ਲਾਇਸੈਂਸ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਕੁਝ ਵੀ ਆਪਣੇ ਕੋਲ ਰੱਖੋ ਤੁਹਾਨੂੰ ਕਿਤੇ ਵੀ ਇਵਨ ਟੈਕਸਾਸ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਜਿਹੜਾ ਨਵਾਂ ਲਾ ਉੱਥੇ ਪਾਸ ਹੋ ਰਿਹਾ ਕਿ ਜਿਹੜੇ ਕਾਪਸ ਨੇ ਉਹ ਤੁਹਾਨੂੰ ਇਮੀਗ੍ਰੇਸ਼ਨ ਸਟੇਟਸ ਜਿਹੜਾ ਤੁਹਾਡਾ ਉਹ ਪੁੱਛ ਸਕਦੇ ਨੇ ਪੇਪਰ ਸੁਣ ਸਕਦੇ ਆ ਇਹ ਪਹਿਲੀ ਸਿਟੀ ਹੈ ਕਾਲਟਨ ਇਸ ਕਾਲਟਨ ਦੇ ਵਿੱਚ ਇਹ ਟੈਕਸਸ ਦੇ ਵਿੱਚ ਹਲਾ ਅੱਜ ਪਾਸ ਹੋਇਆ ਥੈਂਕ ਯੂ ਹਰਵੀਰ ਗਰੇਵਾਲ ਉਹਨਾਂ ਨੇ ਇਨਫੋਰਮੇਸ਼ਨ ਭੇਜੀ ਆ ਸਿੰਘ ਜੀ ਲਾਈਨ ਨੰਬਰ 2 ਵਾਇਗੁਰ ਜੀ ਖਾਲਸਾ ਵਾਇਗੁਰ ਜੀ ਫਤਿਹਾਂ ਤਾਂ ਪਹਿਲਾਂ ਤਾਂ ਜੀ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਪਹਿਲਾਂ ਤਾਂ ਜਿਹੜੀ ਖਬਰ ਤੁਸੀਂ ਦਿੱਤੀ ਹੈਗੀ ਆ ਦੇਖੋ ਜਰਮਨ ਤੇ ਕਹਿੰਦੇ ਸੀ ਕਿ ਜਦੋਂ ਤੇ ਜਾ ਕੇ ਨਾ ਉਹ ਕਾਮ ਨੂੰ ਫੜਨਾ ਹੈ ਸਾਰਾ ਪਿੰਡ ਕਹਿੰਦਾ ਸੀ ਕੋਈ ਗੱਲ ਨਹੀਂ ਕਾਮਰੇਡਾਂ ਲੈ ਆ ਜਦੋਂ ਪਿੱਛਾ ਜਿਹੜੇ ਹਾਰਡ ਕੋਰਟ ਜੂਸ ਤੇ ਉਹਨਾਂ ਨੂੰ ਪਾਣ ਆਏ ਤਾਂ ਕਹਿੰਦੇ ਚੱਲ ਕੋਈ ਨਹੀਂ ਉਹ ਕਰਦਿਆਂ ਕਰਾਉਂਦੇ ਸਾਰਾ ਪਿੰਡ ਫੜਿਆ ਗਿਆ ਤੇ ਜਦੋਂ ਜਿਹੜੇ ਗਵਰਨਮੈਂਟ سپورਟ ਕਰ ਰਹਾ ਸੀ ਉਹਨਾਂ ਨੂੰ ਪਾਣ ਆਏ ਤਾਂ ਉਸ ਵੇਲੇ ਉਹਨਾਂ ਦੇ ਦੁਆਲੇ ਕੋਈ سپورਟ ਕਰਨ ਵਾਲਾ ਨਹੀਂ ਸੀ ਸੋ ਆਵਾਜ਼ ਉਦੋਂ ਉਠਾਉਣੀ ਚਾਹੀਦੀ ਆ ਜਦੋਂ ਮੌਕਾ ਤੇ ਵਕਤੋਂ ਲੰਘਿਆ ਆਵਾਜ਼ ਉਠਾਉਂਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਘਾਲੀ ਸਾਹਿਬ ਆਏ ਸੀਗੇ ਉਹਨਾਂ ਗੱਲਬਾਤ ਕੀਤੀ ਹੈਗੀ ਆ ਦੇਖੋ ਇਸ ਤਰ੍ਹਾਂ ਅੱਜ ਉਸ ਸਰਕਾਰ ਨੇ ਆਪਣੇ ਆਪ ਨੂੰ ਵਿਜਾਕੇ ਨਾਲ ਲੋਕਾਂ ਵਿੱਚ ਭੈਅ ਫੈਲਾਉਣ ਲਈ ਇੱਕ ਟਾਈਟਲ ਲਾਤਾ ਵੀ ਜਿਹੜਾ ਆਮ ਆਦਮੀ ਆ ਜੀ ਅਸਤਵਾਦੀ ਆ ਜਿਸ ਤਰ੍ਹਾਂ ਬੈਟਿਆ ਪਬਲਿਸਿਟੀ ਦਾ ਸਟਾਂਟ ਹੈਗਾ ਆ ਉਹਨਾਂ ਨੂੰ ਡੀਪੇਮ ਕਰਨ ਦਾ ਪਰ ਤੁਝਾ ਹੁਣ ਇਥੇ ਅਹਿਸਾਸ ਹੋਣਾ ਚਾਹੀਦਾ ਉਹਨਾਂ ਮੇਰੇ ਭਰਾਵਾਂ ਨੂੰ ਮੈਨੂੰ ਪਤਾ ਆ ਉਹਨਾਂ ਦੇ ਦਿਲ 'ਚ ਇਹ ਹੈਗਾ ਆ ਉਹ ਵੀ ਪੰਜਾਬ ਦਾ ਭਲਾ ਹੀ ਚਾਹੁੰਦੇ ਆ ਅਸੀਂ ਵੀ ਪੰਜਾਬ ਦਾ ਭਲਾਈ ਚਾਹੁੰਨੇ ਆ ਜਦੋਂ ਅਸੀਂ ਪੰਜਾਬ ਦੇ ਭਲੇ ਦੀ ਗੱਲ ਸਾਡੇ ਭਰਾ ਕਰਦੇ ਸੀ ਤਾਂ ਸਾਡੇ ਭਰਾਵਾਂ 'ਤੇ ਟਾਈਟਲ ਲੱਗਦਾ ਸੀ ਰੈਡੀਕਲ ਆ ਹਾਰਡ ਕੋਰ ਆ ਇਹੋ ਤੇ ਜਾ ਕੇ ਨਾ ਗਰਮ ਖਿਆਲੀ ਆ ਹੁਣ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿਸ ਤਰ੍ਹਾਂ ਟਾਈਟਲ ਉਹਨੀਆਂ ਕਿਸ ਤਰ੍ਹਾਂ ਪ੍ਰੋਪਗੈਂਡਾ ਕਰਦੀਆਂ ਕਿਸ ਤਰ੍ਹਾਂ ਤੁਹਾਨੂੰ ਡੀਫੇਮ ਕਰਦੀਆਂ ਹੈਗੀਆਂ ਸੋ ਸਾਨੂੰ ਥੋੜਾ ਜਿਹਾ ਜਾ ਜਾ ਕੇ ਨਾ ਸਹੀ ਰਹਿ ਬਾਰੇ ਵੀ ਸੋਚਣਾ ਚਾਹੀਦਾ ਜਦੋਂ ਕਿਸੇ 'ਤੇ ਇਲਜ਼ਾਮ ਲੱਗਦਾ ਤੇ ਉਹ ਉਸ ਦੇਸ਼ ਦੀ ਕਰਪਟ ਗਵਰਨਮੈਂਟ ਜਿਸ ਤਰ੍ਹਾਂ ਤੁਹਾਨੂੰ ਡੀਫੈਂ ਕਰਦੀ ਆ ਬਾਕੀ ਇੱਕ ਆਪਣਾ ਫਰਜ਼ ਸਮਝਦਾ ਤੇ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਜਦੋਂ ਆਉਂਦੀ ਆਮ ਆਦਮੀ ਨੂੰ ਵੋਟ ਪਾਉਣੀ ਇਹ ਨਾ ਕਹਣ ਸਾਨੂੰ ਕਿਸੇ ਨੇ ਦੱਸਿਆ ਨਹੀਂ ਵਾਇਗੁਰਜੀ ਸਾਤਾ ਵਾਇਗੁਰਜੀ ਹਰਜੀਤ ਸਿੰਘ ਜੀ ਲਾਈਨ ਨੰਬਰ 4 ਹਾਂਜੀ ਭਾਈ ਜੀ ਸਸੀ ਕਾਲ ਹਰਜੀਤ ਸਿੰਘ ਸਸੀ ਕਾਲ ਜੀ ਜੀ ਸਿੰਘ ਮੇਰੇ ਕੋਲ ਤਿੰਨ ਚਾਰ ਪੰਜਾਬੀ ਚੈਨਲ ਵੱਧਦੀ ਆ ਉਹਦੇ ਸਾਰਿਆਂ ਦੇ ਇੱਕੋ ਹੀ ਖਬਰ ਦੇ ਵਿੱਚ ਕਿੰਨੇ ਬੰਦੇ ਆ ਜਿਹੜੇ ਇਸ ਲਹਿਰ ਨਾਲ ਸੰਬੰਧਤ ਰਹੇ ਆ ਉਹਨਾਂ ਦੀ ਗੱਲ ਨਹੀਂ ਕਰ ਰਹੇ ਇਹਨਾਂ ਬਾਰੇ ਗੱਲ ਕਰ ਰਹੇ ਆ ਤੇ ਦੂਜੇ ਪਾਸੇ ਇਹ ਸਾਰਾ ਕੰਮ ਹਿੰਦੂ ਵੋਟ ਨੂੰ ਡਰਾਉਣ ਦੀ ਖਾਤਰ ਕੀਤਾ ਜਾ ਰਿਹਾ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਹਾਂਜੀ ਭਾਈ ਰਜੇਸ਼ ਸਿੰਘ ਜੀ ਸਤਿਕਾਰ ਸਾਬ ਆਪ ਜੀ ਨੂੰ ਤੇ ਆਪ ਜੀ ਸਰੋਤੇ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਮਾਂ ਦੇਣ ਦਾ ਜੀ ਦੇਖੋ ਕਿ ਇਹ ਜੋ ਹੋ ਰਿਹਾ ਨਾ ਜਿਹੜੇ ਐਨ ਆਰ ਆਈ ਆ ਜਾਂ ਉਥੇ ਆ ਕੋਸ਼ਾ ਇਹ ਵੋ ਹੋ ਜੋ ਜੋ ਇਹ ਮੋਸਤਰੀ ਜਿਹੜਾ ਸ਼੍ਰੋਮਣੇ ਕਾਲੇਦਾਂ ਤੇ ਭਾਜਵਾ ਦਾ ਰਲੇਮਾ ਵਾ ਉਹ ਹਰਿਆਵਾ ਬਹੁਤ ਬੁਰੀ ਤਰ੍ਹਾਂ ਉਹਦੀ ਕੋਈ ਵੀ ਉਥੇ ਤੇ ਹੈ ਨਹੀਂ ਖਾਸ ਕਰਕੇ ਮਾਲਵੇ ਦੀ ਧਰਤੀ ਦੇ ਉੱਤੇ ਤੋ ਇਸ ਤਰ੍ਹਾਂ ਜਿਹੜੇ ਆ ਮਿਸਟਰ ਕੇਜਰੀਵਾਲ ਕਹਿ ਰਹੇ ਆ ਜੋ ਆ ਪੰਬ ਤਮਾਕਾ ਮਿਸਟਰ ਜੱਤੀ ਦੇ ਹੋਇਆ ਇਹ ਵੀ ਇੱਕ ਹਊਗਾ ਖੜਾ ਕਰਨ ਵਾਸਤੇ ਕਰਾਇਆ ਤੇ ਜਿਹੜੇ ਵਿਚਾਰੇ ਪੰਜਾ ਛਿਆਂ ਦੀ ਜਾਨ ਚਲ ਗਈ ਬੱਚਿਆਂ ਦੀ ਸਿਆਣਿਆਂ ਦੀ ਮਤਲਬ ਕਿ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਕਾਂਗਰਸ ਦਾ ਅਕਾਲੀ ਭਾਜਵਾ ਗੱਠ ਹੋ ਗਿਆ ਅੰਦਰੋਂ ਅੰਦਰੇ ਕਿ ਅਸੀਂ ਤਾਂ ਜਿੱਤਣਾ ਨਹੀਂ ਤੇ ਸਾਡੀ ਆਉਣੀ ਨਹੀਂ ਤੇ ਸਿਰਫ ਆਮ ਆਦਮੀ ਨੂੰ ਰੋਕਣ ਵਾਸਤੇ ਜਿਹੜੀ ਕਾਂਗਰਸ ਆ ਤੇ ਅਲਾਈਅੰਸ ਬਣਦਾ ਜਾਂਦਾ ਉਹ ਅੰਦਰੋਂ ਕਿਹੜੀ ਚਰਚਾ ਹੋ ਰਹੀ ਹੈ ਮੈਂ ਨਹੀਂ ਕਹਿ ਰਿਹਾ ਮਿਸਟਰ ਸਰਵਜੀਤ ਪੰਦੇਰ ਕਹਿ ਰਹੇ ਆ ਮਿਸਟਰ ਦੀਪਕ ਸ਼ਰਮਾ ਕਹਿ ਰਹੇ ਸੀਨੀਅਰ ਪੱਤਰਕਾਰ ਔਰ ਇੰਦਰਪ੍ਰੀਤ ਸਿੰਘ ਕਹਿ ਰਹੇ ਆ ਔਰ ਮਿਸਟਰ ਸਿੱਧੂ ਕਹਿ ਰਹੇ ਇਹ ਕਹਿ ਰਹੇ ਕਿ ਉਥੇ ਅਲਾਈਅੰਸ ਬਣਦਾ ਜਾਂਦਾ ਰਹੋਂਦਰੀ ਵੀ ਆਮ ਆਦਮੀ ਨਾਉਣਦੇ ਹੋ ਐ ਕਿ ਕਾਂਗਰਸ ਤੁਸੀਂ ਆ ਜਾਓ ਅਗਲੀ ਵਾਰ ਨੂੰ ਸਾਡੀ ਵਾਰੀ ਆ ਜਾਊਗੀ ਜੇ ਆਮ ਆਦਮੀ ਆ ਗਈ ਤੇ ਸਾਡੀ ਵਾਰੀ ਨਾ ਤੁਹਾਡੀ ਹੋਣੀ ਇਸ ਕਰਕੇ ਲੰਬੀ ਦੇ ਵਿੱਚ ਵੀ ਇਹੇ ਗੱਠ ਜੋੜਵਾ ਔਰ ਆਪਰੇ ਦੂਸਰਾ ਜਲਾਲਾਬਾਚ ਔਰ ਪੰਜਾਬ ਦੇ ਵਿੱਚ ਅੰਦਰੋਂ ਅੰਦਰ ਹੀ ਕਹਿ ਰਿਹਾ ਕਿ ਵੋਟ ਜਿੱਥੋਂ ਅਕਾਲੀ ਭਾਜਵਾ ਹਾਰ ਰਹੀ ਹੈ ਤੇ ਤੁਸੀਂ ਕਾਂਗਰਸ ਦੇ ਬੰਦੇ ਦੀ ਸਪੋਰਟ ਕਰਦੇ ਸਾਡਾ ਬੰਦਾ ਹਾਰ ਜਾਵੇ ਇਹ ਹਾਲਾਤ ਪੈਦਾ ਹੋਣ ਦੇ ਨਾਤੇ ਇਹ ਜੋ ਇਲਜ਼ਾਮ ਤਰਾਸ਼ੀ ਹੋ ਰਹੀ ਆ ਅਕਾਲੀ ਭਾਜਵਾ ਵੱਲੋਂ ਇਹ ਸਿਰਫ ਤੇ ਸਿਰਫ ਆ ਆਦਮੀ ਨੂੰ ਛਲ ਪਾਉਣ ਵਾਸਤੇ ਇਸ ਤਰ੍ਹਾਂ ਮਾਹੌਲ ਜਿਸਾ ਇੱਥੇ ਵੀ ਕੈਨੇਡਾ ਦੇ ਵਿੱਚ ਵੀ ਇੱਕ ਮਾਹੌਲ ਮਿਸਟਿਸ ਦੀ ਬਨਹਾਰ ਪਰ ਨੇ ਫੀਅਰ ਕੀਤਾ ਸੀ ਤੇ ਜਿਸ ਤਰ੍ਹਾਂ ਯੂਐਸ ਵਿੱਚ ਮਿਸਟਰ ਟਰੰਪ ਨੇ ਫੀਅਰ ਪਹਿਲਾਂ ਕੀਤਾ ਇਸ ਤਰ੍ਹਾਂ ਕਾਲੀ ਪਾ ਪੰਜਾਬ 'ਚ ਫੀਅਰ ਪਹਿਲਾਂ ਕਰਕੇ ਡਰਾ ਤਮਾਕਾ ਕੇ ਆਪਣਾ ਅੱਖ ਪਚਾਉਣਾ ਚਾਹੁੰਦੀ ਧੰਨਵਾਦ ਜੀ ਸਮਾਂ ਦੇਣ ਦਾ 11 ਵਜੇ ਕੇ ਬਿਆਰੀ ਬਿਟ ਹੋਇਆ ਜੀ ਧੰਨਵਾਦ ਤੁਸੀਂ ਗੱਲਬਾਤ ਆਪਣੀ ਕਰਕੇ ਗਏ ਹੋ ਪ੍ਰੋਗਰਾਮ ਦੇ ਸਪੌਂਸਰ ਗ੍ਰੈਂਡ ਤਾਜ ਸ੍ਰੀ ਦਾ ਤਾਜ ਕੁਲਤਾਰ ਸਿੰਘ ਥਿਆੜਾ ਹਰਪਾਲ ਸਿੰਘ ਸੂਤ ਤੇ ਸੁੱਚਾ ਸਿੰਘ ਪੱਡਾ 604 617 8484 604 592 4342 ਵੱਡੀ ਛੋਟੀ ਪਾਰਟੀ ਕੋਈ ਕਰਨੀਆਂ 84 ਤੇ 128 ਤੇ ਤੁਹਾਡੇ ਬਜਟ ਦੇ ਹਿਸਾਬ ਨਾਲ ਵਧੀਆ ਪਾਰਟੀ ਸ੍ਰੀ ਦੇ ਤਾਜ ਗ੍ਰੈਂਡ ਤਾਜ ਕੁਲਤਾਰ ਸਿੰਘ ਥਿਆੜਾ ਹਰਪਾਲ ਸਿੰਘ ਸੂਤ ਤੇ ਸੁੱਚਾ ਸਿੰਘ ਪੱਡਾ 604 617 8484 604 592 4342 ਸੇਵਾ ਪੂਰੀ ਕਦੇ ਵੀ ਇੱਕ ਵਾਰ ਤਾਰੀਖ ਦਾ ਪਤਾ ਕਰ ਲਿਓ ਜੇ ਤਾਰੀਖ ਮਿਲ ਗਈ ਫਿਰ ਫਿਕਰ ਕੋਈ ਨਹੀਂ ਗ੍ਰਹਨਤਾ ਅਸਰੀ ਦਾ ਤਾਜ ਧਾਮੀ ਨਾਰੰਗੈਨ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ 6048646131 ਸਦੀ ਟੇਰਪੋਰਟ ਦੇ ਦਫ਼ਤਰ ਆਈਸੀਬੀਸੀ ਦਾ ਕੇਸ ਲੜਦੇ ਆ ਤੇ ਜਿੱਤਦੇ ਆ ਅੱਠ ਵਕੀਲ ਨੇ ਤੇ ਦੋ ਦਸਤਰ ਨੇ 6048646131 ਅਮਰੀਕ ਨਾਰੰਗ ਤੇ ਰਾਜ ਧਾਮੀ ਜਿਨ੍ਹਾਂ ਨੇ ਕੰਪਨੀ ਸ਼ੁਰੂ ਕੀਤੀ ਹੁਣ 6 ਵਕੀਲ ਇਹਨਾਂ ਦੇ ਨਾਲ ਨੇ 6048646131 ਪਰਮਿੰਦਰ ਸਿੰਘ ਥਿੰਦ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਇੱਥੇ ਤੇ ਅਲਬਰਟਾ ਸਵਾਮਾ ਦਿੰਦੇ ਆ ਪਰਮਿੰਦਰ ਸਿੰਘ 604 828 7213 thinkinsurance.ca ਤੁਸੀਂ ਗੱਲਬਾਤ ਕਰਨੀ ਹੈ ਤਾਂ ਪਰਮਿੰਦਰ ਸਿੰਘ ਥਿੰਦ ਨਾਲ ਇੱਥੇ ਤੇ ਰਮਨਦੀਪ ਸਿੰਘ ਸੋਦ ਦੇ ਨਾਲ ਅਲਬਰਟਾ ਦੇ ਵਿੱਚ 604 828 7213 ਪਰਮਿੰਦਰ ਥਿੰਦ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨਸ ਮਾਰਗੇਜ ਤੇ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਲੈ ਸਕਦੇ ਹੋ ਫਰਮੈਂਟ 10 ਗ੍ਰੀਨ ਇੰਡੀਆ ਕੁਜ਼ੀਨ 6045033535 ਯੂਨਿਟ 112 125 688 ਐਵੈਨਿਊ ਤੇ ਪਲਾਜ਼ਾ ਜਿਹੜਾ ਵਾਲਮਾਰਟ ਦਾ ਉਹਦੇ ਵਿੱਚ ਇਹ ਇੰਨੀਆ ਰੈਸਟੋਰੈਂਟ ਨਵਾਂ ਬਣਾਇਆ ਮਨਜੀਤ ਸਿੰਘ ਹਣਾ ਨੇ ਬਹੁਤ ਵਧੀਆ ਰੈਸਟੋਰੈਂਟ ਹੈ ਖਾਣਾ ਬਹੁਤ ਵਧੀਆ ਪੀਜ਼ਾ ਤੇ ਮਠਿਆਈ ਇੱਥੇ ਬਣਾਈ ਜਾਂਦੀ ਹੈ 6045033535 ਉਹ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਬਹਿ ਕੇ ਖਾ ਪੀ ਸਕਦੇ ਹੋ 604 503 35 35 6 112 125 65 88 ਹੈ ਆਪਣੀ। ਵਪਾਰਕ ਸੰਦੇਸ਼। ਸਵਰਨ ਸਿੰਘ ਦਾਨੇਵਾਲੀਏ ਉਹਨਾਂ ਦੀ ਇੱਕ ਪੋਸਟ ਹੈ ਜਿੱਥੇ ਇੱਕ ਖਾਬਰ ਉਹਨੇ ਸਾਂਝੀ ਕੀਤੀ ਹੈ। ਅ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਸਪੁੱਤਰ ਮਨਵਿੰਦਰ ਪਾਲ ਸਿੰਘ ਰਾਜੂ ਮੱਕੜ ਅੱਜ ਰਾਤ ਦਿਲ ਦੀ ਧਰਖਰਕਤ ਬੰਦ ਹੋ ਜਾਣ ਕਰਕੇ ਕਾਲ ਚਲਾਣਾ ਕਰ ਗਿਆ ਅੰਤਮ ਸੰਸਕਾਰ ਕੱਲੂ ਸ਼ੁੱਕਰਵਾਰ ਨੂੰ ਦੁਪਹਿਰੇ 12 ਵਜੇ ਮਲਟਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿਖੇ ਇੱਕ ਘੰਟਾ ਪਹਿਲਾਂ ਉਹਨਾਂ ਨੇ ਇਹ ਪਾਈ ਹੈ ਤੇ ਬਾਕੀ ਹੋਰ ਕਿਤੇ ਖਬਰ ਨਹੀਂ ਲੱਭੀ ਸੱਚਾ ਜ ਮੈਨੂੰ ਲੱਗਦਾ ਉਹ ਪੱਤਰਕਾਰ ਨੇ ਇਸ ਤਰ੍ਹਾਂ ਨਹੀਂ ਪਾ ਸਕਦੇ ਇਹ ਗੱਲ ਹੋਈ ਹੋਈ ਹੈ ਫਿਰ ਵੀ ਕਿਸਦਾ ਜਵਾਨ ਪੁੱਤ ਨਾ ਮਰੇ ਇਹ ਦਾਤਾ ਮਹਿਰ ਕਰੇ ਹਰਪੀਰ ਸਿੰਘ ਲਾਈਨ ਨੰਬਰ 2 ਹਾਂਜੀ ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਜੀ ਗੱਲ ਸਾਹਿਬ ਦੇਖ ਲਓ ਮਲੂਕਿਆ ਸਾਹਿਬ ਨੇ ਕੁੜੀਆਂ ਨੂੰ ਕੁੱਟਿਆ ਸੀਗਾ ਵੀਡੀਓ ਕਿੰਨਾ ਟ੍ਰੈਂਡ ਕਰ ਰਹੀ ਆ سزا ਹੁਣੇ ਹੀ ਖਾ ਰਿਆ ਦਰਦ ਦਰ ਲੋਕੀ ਵੋਟਾਂ ਨਹੀਂ ਪੈਂਡ ਚ ਨਹੀਂ ਵੜਨ ਦਿੰਦੇ ਦੇਖ ਲਓ ਬਾਅਦ ਆ ਜੀ ਇਹ ਕੈਪਟਨ ਤੇ ਕੈਪਟਨ ਸਾਹਿਬ ਨੇ ਦੇਖੋ 5 ਸਾਲ ਬੜੇ ਕੁੱਟੇ ਆਪਣੇ ਬੰਦੇ ਦੋ ਕਹਿੰਦੇ 200 ਦਿਨ ਤੱਕ ਕਹਿੰਦੇ ਲਗਾਤਾਰ ਕਟਾਪਾ ਚੜਿਆ ਬੀਰੋਜਗਾਰਾਂ ਤੇ ਹੁਣ ਦੋਨੇ ਪਾਸਿਓਂ ਹਾਰ ਰਹੇ ਆ। ਹੂੰ ਪਟਿਆਲਾ ਛੱਡਿਆ ਸੀ ਪੁੱਤਰ ਵੀ ਨਹੀਂ ਰਿਹਾ ਘਾਟ ਜੋਗੇ ਤੇ ਆਪਣੇ ਲੰਬੀ ਤੋਂ ਵੀ ਉਹਨਾਂ ਨੂੰ ਤੀਜਾ ਨੰਬਰ ਆਪਣੀ ਉਹ ਮਜਾਇਬੀ ਦਿਖਾਈ ਉਹਤੇ ਪਰਚੇ ਤੇ ਪਰਚਾ ਦਰਜ ਕਰ ਰਹੇ ਆ ਦੇਖੋ ਹੁਣ ਸੈਕਿੰਡ ਚੱਲ ਰਹੇ ਆ ਇੱਕ ਨੰਬਰ ਤੇ ਸ਼ੇਅਰ ਗੱਲ ਐਮ ਸੰਘੇਰ ਗੱਲ। ਜੋਤਰਾਵ ਵਾਲੇ ਮਾਸਟਰ ਦਾ ਮੁੰਡਾ ਬਾਣੀ ਪਾਈ ਫਿਰਦਾ ਵਾ ਦੇਖ ਲਓ ਤੇ ਟੀਐਮ ਟੀਐਮ ਨੂੰ ਇਹ ਬਹੁਤ ਵਡੀਆਂ ਗੱਲਾਂ ਆ ਦੇਖੋ ਜੀ ਵੱਡੇ ਬਾਦਲ ਸਾਹਿਬ ਦੇਖੋ ਸਾਰੀ ਉਮਰ ਉਹਨਾਂ ਨੇ ਕਿਤੇ ਮਾਰਦਾ ਨਹੀਂ ਕੋਈ ਸ਼ਬਦ ਬੋਲਿਆ ਉਹ ਵਧੀਆ ਉਹਨਾਂ ਦੀ ਸਪੀਚ ਹੁੰਦੀ ਆ ਪਰ ਅੱਜ ਉਹ ਲੇਲੜੀਆਂ ਕੱਢ ਰਹੇ ਆ ਵੋਟਾਂ ਲਈ ਕੀ ਇਹਦਾ ਮਤਲਬ 10 ਸਾਲ ਉਹਨਾਂ ਨੇ ਕੁਝ ਕੰਮ ਨਹੀਂ ਕੀਤਾ ਇੱਕ ਸੀਐਮ ਹੋਵੇ ਉਹਨੂੰ ਹਲਕੇ ਤੇ ਜਾਣਾ ਹੀ ਨਾ ਪਵੇ ਆਪਦੀ ਵੋਟ ਮੰਗਣ ਜਿਨੇ 10 ਸਾਲ ਜਿਵੇਂ ਆਪਾਂ ਕਹੀਏ ਪਿਛਲੇ 20 ਸਾਲਾਂ ਚੋਂ 15 ਸਾਲ ਇਹਨੇ ਰਾਜ ਕੀਤਾ ਲੰਬੀ ਪੂਰੇ ਪੰਜਾਬ ਮੋਰਵਾਜ ਲੇਲਡੀਆਂ ਕਰਕੇ ਕਿਤੇ ਮਾੜੇ ਦਿਨ ਆ ਗਏ ਆ ਪੰਥਕ ਸਰਕਾਰ ਪੰਥਕ ਹੋਣ ਵਾਲੀ ਅੱਜ ਸਰਸੇ ਵਾਲੇ ਆ ਸਾਰੀ ਮੋਤਾਜ ਹੋਈ ਪਰਮਾਤਮਾ ਤੇ ਘਰ ਮੈਂ ਤਾਂ ਇਹ ਕਹਿੰਨਾ ਵਾਂ ਮਾੜੇ ਕੰਮ ਦੀ ਸਜ਼ਾ ਨਾਲ ਹੀ ਦੇ ਦਿੰਦਾ ਵਾ ਦੇਖ ਲਓ ਹੁਣ 11 ਤਰੀਕ ਨੂੰ ਜਮਾ ਕਲੀਅਰ ਹੋ ਜਾਣੀ ਆ ਆਪਾਂ ਰੇਡੀਓ ਤੇ ਗੱਲ ਕਰ ਲਾਂਗੇ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਾਈ ਜੀ ਥੈਂਕ ਯੂ ਮੰਗਤਾ ਜੀ ਲਾਈਨ ਨੰਬਰ 3 ਹੈਲੋ ਸਾਤਰੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂਜੀ ਦੇਖੋ ਜੀ ਜਿਹੜੇ ਆਹਾ ਗੱਲਬਾਤ ਆ ਰਹੀ ਨਾ ਵੀ ਅੱਤਵਾਦੀ ਏ ਤੇ ਕੇਸ਼ਰੀ ਪਾਜ ਤਾਬੇ ਘਰਿਆ ਤੇ ਉਹ ਜਿਹੜੀ ਸਰਕਾਰ ਹੀ ਤੌਰ ਦੇ ਉੱਤੇ ਸੰਵਿਧਾਨ ਦੇ ਵਿੱਚ ਤਾਂ ਉਹ ਗੱਲ ਠੁਕਦੀ ਆ ਵੀ ਅੱਤਵਾਦੀ ਆ ਜਿੱਦਾਂ ਭਗਤ ਸਿੰਘ ਨੂੰ ਇੰਗਲੈਂਡ ਦੀ ਸਰਕਾਰ ਕਹਿੰਦੀ ਸੀ ਭਗਤ ਸਿੰਘ ਨੂੰ ਵੀ ਅੱਤਵਾਦੀ ਆ ਕਿਉਂਕਿ ਜਿਹੜੇ ਸਰਕਾਰਾਂ ਦੇ ਖਿਲਾਫ ਲੜਦੇ ਆ ਨਾ ਆਪਣੇ ਮੋਲਕ ਲਈ ਲੜਦੇ ਉਹ ਸਰਕਾਰਾਂ ਉਹ ਕਹਿੰਦੀਆਂ ਹੁੰਦੀਆਂ ਹੁਣ ਇਹ ਤਾਂ ਧਾਰਮਿਕ ਜਥੇਬੰਦੀਆਂ ਨੂੰ ਸੋਚਣਾ ਪੈਣਾ ਨਾ ਕਿ ਉਹ ਕੇਸਰੀ ਵਾਲ ਦੇ ਨਾਲ ਖੜੀਆਂ ਜਿਹੜੀ ਦਾ ਆਮ ਪਾਰਟੀ ਕੋਈ ਸਬਧਾਨ ਨਹੀਂ ਉਹ ਜਿੱਦਾਂ ਕਹਿ ਲਓ ਵੀ ਕੋਈ ਧਾਰਮਿਕ ਤੌਰ ਤੇ ਵੀ ਜਿਹੜੇ ਸਿੱਖ ਆਪਣੀਆਂ ਪੱਗਾਂ ਦੇ ਉੱਤੇ ਆਮ ਪਾਰਟੀ ਦੀ ਪੱਟੀ ਬੰਨੀ ਜਾਂਦੇ ਆ ਕੇਸਰੀ ਲਮਕਾਈ ਜਾਂਦੇ ਨਾਲ ਝਾੜੂ ਲਮਕਾਈ ਜਾਂਦੇ ਆ ਉਹਦੇ ਵਿੱਚ ਉਹ ਮੈਂ ਕਹਿੰਦਾ ਪੱਗ ਦੀ ਬੇਇੱਜ਼ਤੀ ਆ ਦੇ ਵਿੱਚ ਜਿੱਦਾਂ ਕਹਿ ਲਓ ਵੀ ਉਹ ਉਹ ਕਹਿੰਦੇ ਵੀ ਖਰੇ ਸਾਡਾ ਹੀ ਅਸਲੀ ਘਰ ਆ ਨਾ ਜਿੱਦਾਂ ਹੁਣ ਇੱਥੇ ਆਪਾਂ ਬੇਸਮੈਂਟ ਚੋਂ ਮੂਵ ਹੋ ਕੇ ਜਦੋਂ ਨਵੇਂ ਘਰ ਚ ਜਾਂਦੇ ਆ ਤਾਂ ਬਣ ਗਿਆ ਚਾਹੇ ਕਰਜ਼ਾ ਹੀ ਲੈਨੇ ਆ ਉਹ ਜਿਹੜਾ ਹੁਣ ਆਪਣੇ ਘਰ ਦੀ ਜਿਹੜੀ ਲੜਾਈ ਆ ਪੰਜਾਬ ਦੀ ਉਹ ਇਹਨਾਂ ਤੋਂ ਭਾਲਦੇ ਆ ਵੀ ਆਮ ਪਾਰਟੀ ਸਾਨੂੰ ਲੈ ਕੇ ਦੇਦੋ ਖੁਦ ਹੀ ਮੁਖਤਿਆਰੀ ਜਾਂ ਕੋਈ ਮਤੇ ਹੈਗੇ ਪੰਜਾਬ ਦੇ ਵਿੱਚ ਇਹ ਦਾ ਨਹੀਂ ਹੋਣੀ ਆ ਸਿੱਖਾਂ ਨੂੰ ਇੱਕ ਦਿਨ ਆਪਣਾ ਘਰ ਦੇ ਵਿੱਚ ਮੁਵ ਹੋਣਾ ਪੈਣਾ ਜਿੱਦਾਂ ਕਹੋ ਅਤਵਾਦੀ ਕਹੀ ਜਾਂਰ ਜੋ ਮਰਜੀ ਕਹੀ ਜਾਂ ਤੇ ਜਿਹੜੇ ਸਿੱਖ ਜਥੇਬੰਦੀਆਂ ਆ ਉਹ ਮਤਲਬ ਅਖਾੜਕੂ ਆਪਾਂ ਕਹਿੰਦੇ ਆ ਉਹਨਾਂ ਨੂੰ ਜਿੱਦਾਂ ਵੀ ਲੈ ਕੇ ਦੇਣਾ ਹੁਣ ਭਗਵਾਨ ਤਮਾਨ ਆ ਉਹ ਵੀ ਤਬਾ ਉਹੀ ਰਾਜਨੀਤੀ ਕਰ ਰਿਹਾ ਨਾ ਉਹ ਉੱਥੇ ਲੰਬੀ ਹਲਕੇ ਦੇ ਵਿੱਚ ਅਕਿਹ ਗਰੀਬ ਦੇ ਘਰੋਂ ਰੋਟੀ ਖਾ ਲਈ ਸਾਗ ਨਾਲ ਮੈਨੂੰ ਰੋਟੀ ਬਹੁਤ ਸਵਾਦ ਲੱਗੀ ਤੇਰਾ ਮੁੰਡਾ ਮੈਂ ਅਫਸਰ ਬਣਾ ਦਊਗਾ ਕੁਝ ਨਹੀਂ ਉੱਥੇ ਹੋਣਾ ਜਿੱਦਾਂ ਕਹਿ ਲਓ ਵੀ ਉੱਦਾਂ ਹੀ ਰਹਿਣੀ ਆ ਉੱਦਾਂ ਹੀ ਲੁਧਿਆਣੇ ਦਾ ਨਾਲਾ ਰਹਿਣਾ ਉੱਦਾਂ ਹੀ ਸਾਰਾ ਕੁਝ ਰਹਿਣਾ ਉੱਦਾਂ ਹੀ ਸਿਸ਼ਟਮ ਰਹਿਣਾ ਕੁਛ ਨਹੀਂ ਹੋਣਾ। ਕੁਛ ਹੋ ਸਕਦਾ ਤਾਂ ਜਿਹੜਾ ਪ੍ਰਿੰਸੀਪਲ ਸਾਡਾ ਸਿੱਖਾਂ ਦਾ ਆ ਜਿਹੜਾ ਪੰਜ ਪਿਆਰਿਆਂ ਦਾ ਆਪਣਾ ਘਰ ਬਣਦਾ ਉਹਦੇ ਵਿੱਚ ਜੋ ਵੀ ਘਰ ਨੂੰ ਆਪਾਂ ਸਫਾਈ ਕਰਦੇ ਨਾ ਭਾਵੇਂ ਛੋਟਾ ਜਿਹਾ ਘਰ ਲੈ ਲਈਏ ਤਾਂ ਇੱਦਾਂ ਹੀ ਸਿੱਖਾਂ ਨੇ ਆਪਣਾ ਘਰ ਉਹ ਵਧੀਆ ਬਣਾ ਲੈਣਾ ਜੇ ਰਹਿਣਗੇ ਜੇ ਕਿਸੇ ਦਾ ਗੁਲਾਮੀ ਰਹਿਣੀ ਆ ਜਿਹਦਾ ਪ੍ਰਕਾਸ਼ ਸਿੰਘ ਬਾਦਲ ਨੂੰ ਗੁਲਾਮ ਉਹ ਨਹੀਂ ਬਣਾ ਲਿਆ ਸੀ। ਗੁਲਾਪਟਾ ਪਾ ਲਿਆ ਸੀ। ਉਸ ਤਰ੍ਹਾਂ ਆ ਜਿੱਦਾਂ ਪਾਕਿਸਤਾਨ ਨੂੰ ਪਾਕਿਸਤਾਨ ਮਿਲ ਗਿਆ ਇੰਡੀਆ ਨੂੰ ਹਿੰਦੂਆਂ ਨੇ ਆਪਣਾ ਮੁਲਕ ਬਣਾ ਲਿਆ ਉਹ ਦਬਾਅ ਦੀ ਰਾਜਨੀਤੀ ਕਰ ਰਹੇ ਉਹ ਕਹਿੰਦੇ ਕੋਈ ਵੀ ਪਾਰਟੀ ਆ ਸਾਨੂੰ ਨਹੀਂ ਸ਼ਾਂਤੀ ਰਹਿਣੀ ਚਾਹੀਦੀ ਆ ਇਹ ਤਾਂ ਸਿੱਖਾਂ ਨੂੰ ਚਾਹੀਦਾ ਨਾ ਵੀ ਤਿੰਨੇ ਪਾਰਟੀਆਂ ਸਾਡੇ ਹਿੱਤ ਦੇ ਵਿੱਚ ਨਹੀਂ ਧਾਰਮਿਕ ਤੌਰ ਦੇ ਉੱਤੇ ਇਸ ਕਰਕੇ ਆਜ਼ਾਦੀ ਲਈ ਜਿਹੜੇ ਆਜ਼ਾਦੀ ਦੇ ਪਰਵਾਨੇ ਸ਼ਹੀਦ ਹੁੰਦੇ ਆ ਉਹ ਮਤਲਬ ਉਹੋ ਹੀ ਕੁਝ ਕਰ ਸਕਦੇ ਆ ਤੇ ਇਸ ਕਰਕੇ ਜਿਹੜਾ ਸਾਨੂੰ ਬੜੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਵੀ ਇਹ ਪਾਰਟੀ ਆ ਤਾਂ ਸਾਡਾ ਬਹੁਤ ਧੰਨਵਾਦ ਇਹ ਵੀ ਹਰਮੰਦਰ ਸਾਹਿਬ ਤੇ ਟੈਗ ਕਰ ਸਕਦੀ ਆ ਜੀ ਸਤਿ ਸ੍ਰੀ ਅਕਾਲ ਧੰਨਵਾਦ ਥੈਂਕ ਯੂ ਚਾਰ ਦਾ ਸਤਿਕਾਰ ਮੈਂ ਆ ਦੋ ਗੱਲਾਂ ਕਰਨੀਆਂ ਜੀ ਇੱਕ ਤਾਂ ਪਹਿਲੀ ਗੱਲ ਜਿਹੜੀ ਜਿਹੜੇ ਵੀ ਜਿਹੜੇ ਆਪਣੇ ਕੇਜਰੀਵਾਲ ਸਾਹਿਬ ਰਹੇ ਸੀਗੇ ਇੱਕ ਤਾਂ ਜਿੱਤਾਈ ਚਲੋ ਜੇ ਪਾਰਟੀ ਬਣ ਜਾਂਦੀ ਆ ਫਾਰਮ ਕਰ ਜਾਂਦੀ ਹੈ ਸਰਕਾਰ ਆਪਣੀ ਤੇ ਉਹਨਾਂ ਨੂੰ ਉਹ ਵੀਰ ਜੀ ਨੂੰ ਨਾਲ ਖੜਾ ਕੇ ਪੂਰਾ ਉਹਨਾਂ ਦਾ ਕਲੀਫਿਕੇਸ਼ਨ ਜਦਾਂ ਖੋਦ ਖੜ ਕੇ ਅਸੀਂ ਇਹਨਾਂ ਦੇ ਅਸੀਂ ਐਨਆਰਆਈ ਤੱਕ ਪਹੁੰਚ ਗਏ ਅਸੀਂ ਇਹਨਾਂ ਦੇ ਅਸੀਂ ਵੀ ਇਹਨਾਂ ਦੇ ਪੂਰਾ ਕਰਾਂਗੇ ਪਰ ਹੁਣ ਇੱਥੇ ਵੀ ਇਹਨਾਂ ਦਾ ਮੌਕਾ ਪਣਦਾ ਹੈ ਹਨਾ ਜਾਨੀ ਉਹਨਾਂ ਨੂੰ ਜਿੱਦਾਂ ਹੀ ਮਤਲਬ ਆਪਣਾ ਉਹ ਵੀਰ ਜੀ ਉਸ ਇੰਡੀਆ ਜਾਂਦੇ ਆ ਉਹਨਾਂ ਨੂੰ ਨਾਲ ਲੈ ਕੇ ਪੂਰਾ ਜਿੱਦਾਂ ਸਾਰੇ মিডিਆ ਦੇ ਵਿੱਚ ਪੂਰਨਾਂ ਨੂੰ ਕਲੈਰੀਫਿਕੇਸ਼ਨ ਉਹਨਾਂ ਦੇਣਾ ਚਾਹੀਦਾ ਵੇਖੋ ਇਹ ਜਾਣਬੁੱਝ ਕੇ ਇਹਨਾਂ ਨੂੰ ਠੀਕ ਹੈ ਬਾਈ ਜੀ ਠੀਕ ਹੈ ਉਹ ਬਾਅਦ ਦੀ ਗੱਲ ਹੈ ਗੁਰਪ੍ਰੀਤ ਢਟਵਾਲ ਜੀ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਗੁਰਪ੍ਰੀਤ ਢਟਵਾਲ ਬੋਲਦਾ ਜੀ ਇੱਥੇ ਜੀ ਬਾਈ ਤੁਹਾਡਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ ਹੈ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਠੇਢ ਪੰਜਾਬੀ ਬੋਲੀ ਦੀ ਸ਼ੁੱਧ ਉਚਾਰਨ ਹੈ ਉਹ ਸੋਨੇ ਤੇ ਸੋਕਾ ਹੁੰਦਾ ਹਮੇਸ਼ਾ ਦੀ ਤਰ੍ਹਾਂ ਐਸੇ ਸੰਬੰਧ ਵਿੱਚ ਗੱਲ ਕਰਨੀ ਆ ਇਲੈਕਸ਼ਨ ਨੂੰ 2 ਦਿਨ ਰਹਿ ਗਏ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਨੁਮਾਇੰਦਿਆਂ ਤੇ ਕਿਸੇ ਦੇ ਮੂੰਹੋਂ ਮੈਂ ਪੰਜਾਬੀ ਬੋਲੀ ਦੇ ਭਾਵੇਂ ਇੱਕ ਸ਼ਬਦ ਨਹੀਂ ਸੁਣਿਆ ਨਾ ਹੀ ਜਿਹੜੇ ਸਰੋਤੇ ਆ ਉਹ ਸੇਰਦੇ ਆ ਜਿਹੜੀ ਉੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਕੀ ਭਾਸ਼ਾ ਬੋਲੀ ਜਾਂਦੀ ਆ ਪੰਜਾਬੀ ਬੋਲਣ ਵਾਲੇ ਨੂੰ ਫਾਈਨ ਹੁੰਦਾ ਆ ਉਹਦੀ ਕੋਈ ਗੱਲ ਨਹੀਂ ਕਰ ਰਿਆ ਉਹਦੇ ਬਾਰੇ ਕੀ ਕਰਾਂਗੇ ਇਹ ਸਾਡੀਆਂ ਜਣਾਵਡੀਆਂ ਜਾ ਰਹੀਆਂ ਜੇ ਬੋਲੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਕਲਚਰ ਸਭਿਆਚਾਰ ਕੌਮ ਜਿਉਂਦੀ ਰਹੂਗੀ ਇਹਦੇ ਬਾਰੇ ਜਿਹੜੇ ਅੱਜ ਤੁਹਾਡੀ ਕਹਾਣੀ ਸੀ ਜਿਹਦੇ ਪਿੱਛੇ ਹਮਕੋ ਸੀ ਉਹ ਸੁਣੀ ਉਹਨੂੰ ਹਾਸੇ ਚ ਚਾਲ ਦਿੱਤਾ ਜੇ ਉਹਦੀ ਗਹਿਰਾਈ ਚ ਦੇਖਿਆ ਜਾਏ ਤਾਂ ਇਹ ਸਾਡਾ ਭੂਇਕਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਹਮਕੋ ਤੋਂ ਕਰਦੇ ਦੇਖਾਂਗੇ ਇੱਕ ਇੱਕ ਦੀ ਬੀੜੀ ਸਾਰੀ ਗੱਲ ਆ ਪਰ ਇਹਦੇ ਬਾਰੇ ਕੋਈ ਸ਼ਹਿਰਦ ਨਹੀਂ ਨਾ ਕੋਈ ਗੱਲ ਕਰਨੀ ਚਾਹੁੰਦਾ ਆ ਜੀ ਜੀ ਬੈਰੋ ਜਿਹੜਾ ਠੀਕ ਹੈ ਬਾਈ ਜੀ ਸਮਾਂ ਸਮਾਂ ਖਤਮ ਹੋ ਗਿਆ ਥੀ थैंक यू ਧੰਨਵਾਦ ਤੁਹਾਡਾ ਤੌਖਲਾ ਸਹੀ ਆ ਕੱਲ ਨੂੰ 11:00 ਵਜੇ ਫੇਰ ਮਿਲਦੇ ਆ ਜੀ ਰੱਬ ਰੱਖਾ